ਕਾਹ ਬਖਾਨੀ ਆ ਉਹ ਉਹ ਕਿੱਥੇ ਬਸਈਆ ਜਿਹੜੇ ਭੋਰੇ ਪੱਟ ਕੇ ਰਹਿੰਦੇ ਨੇ ਨਾ ਅੰਦਰੇ ਉਹ ਕਹਿੰਦੇ ਨੇ ਭਈ ਚੰਦਰਮਾ ਵੀ ਸਾਡਾ ਸਰੀਰ ਨਾ ਦੇਖ ਲਵੇ ਰਾਤ ਉੱਧਰ ਰਹਿੰਦੇ ਨੇ ਢੇਰੇ ਚ ਨਿਕਲਦੇ ਨੇ ਉਹ ਮੁਕੇ ਬਸਈਆ ਸਮਝ ਲਓ ਉਹ ਜੋ ਇੱਕ بڑا ਚੂਹਾ ਹੁੰਦਾ ਉਹਨਾਂ ਨੂੰ ਕੀ ਇਸ ਕਹਿੰਦੇ ਨੇ ਉਹ ਬਾਹਰ ਬਹੁਤ ਘਟ ਨਿਕਲਦਾ ਹੈ ਅਜਿਹੇ ਹੁੰਦਾ ਉਹ ਤਾਂ ਉਹਨੂੰ ਕਹਿੰਦੇ ਹਨ ਤੁਲਨਾ ਕੀਤੀ ਹੋਇਆ ਬੁੱਧੀ ਨਾ ਦੀ ਜਾਨਵਰ ਵਾਲੀ ਆ ਵੀ ਤੁਸੀਂ ਆਦਮੀ ਹੋ ਤੁਸੀਂ ਕਿਉਂ ਕਰ ਬੈਠੇ ਹੋ ਅਸਲ ਜੀ ਗਿਆਨ ਤੋਂ ਸਖਣ ਦੇ ਲੋਕ ਇਹ ਬੜੇ ਬੈਠੇ ਨੇ ਗੁਰੂ ਕੋਈ ਸਵਾਲ ਨਾ ਕਰ ਦਵੇ ਆ ਕੇ ਦੇੜ ਨੂੰ ਬੱਲੇ ਬੱਲੇ ਕੁਛ ਆਦੀ ਇਹ ਕਰਕੇ ਲੋਗੇ ਬੈਠੇ ਰਹਿੰਦੇ ਲੋਕਾਂ ਨੂੰ ਵੀ ਬੱਲੇ ਬੱਲੇ ਬੜਾ ਵੇ ਤਪ ਕਰਦਾ ਹੈ ਉਹ ਬੱਲੇ ਬੱਲੇ ਥੱਲੇ ਬੈਠਣ ਦੀ ਬੱਲੇ ਬੱਲੇ ਹੋਰ ਕੁਛ ਨਹੀਂ ਉਹਨਾਂ ਦੇ ਪਰਦੇ ਫੁੱਲੇ ਕਿ ਜਾ ਕੇ ਬਿੜਦੇ ਰਹੇ ਉਹਨਾਂ ਨੂੰ ਗੱਲਾਂ ਬਾਤਾਂ ਕਰਦੇ ਰਹੇ ਉਹ ਵੀ ਪਤਾ ਹੀ ਆ ਆਪ ਲੋਕ ਕੰਨੀ ਸ਼ਰਦਾ ਹੁੰਦੀ ਹੈ ਇਹਨਾਂ ਤੇ ਉਹ ਚਿੜੀ ਕਿ ਜਈਆ ਕਹੈਂ ਨਭ ਕੇ ਉਟਈਆ ਸੋਚ ਰਈਆ ਕਹਿ ਬਖਾਨੀਆਂ ਜਿਹੜੇ ਆਕਾਸ਼ ਚੜਨ ਦੀਆਂ ਗੱਲਾਂ ਕਰਦੇ ਨੇ ਉਹ ਚਿੜੀਆਂ ਚਿੜੀਆ ਕਹਿੰਦੇ ਨਾ ਜਿਵੇਂ ਚਿੜੀਆਂ ਉੜਦੀਆਂ ਨੇ ਚਿੜੀਆ ਚਿੜੀਆਂ ਸਾਰਾ ਦਿਨ ਬਾਹਰ ਉੜਦੀਆਂ ਰਹਿੰਦੀਆਂ ਨੇ ਪੰਛੀ ਜਾਨਵਰ ਉਹਦੇ ਹੀ ਨੇ ਪੰਛੀਆਂ ਨੂੰ ਕਿਹਨਾ ਗਿਆਨ ਹੁੰਦਾ ਕਿੰਨੀ ਕਾਈ ਕਰਾਮਾਤ ਹੁੰਦੀ ਹੈ ਪੰਛੀਆਂ 'ਚ ਸਮਝਿਆ ਕੀ ਉਹਨਾਂ ਦੇ ਬਸ ਵਿੱਚ ਹੁੰਦਾ ਪੰਛੀ ਇਹਦੇ ਐ ਮੰਨ ਲਓ ਫਲ ਕੇ ਪਛਈਆ ਬਾਂਦਰੀ ਕੇ ਜਈਆ ਕਹੈਂ ਜਿਹੜੇ ਕੱਲੇ ਫਲ ਖਾਂਦੇ ਨੇ ਸਬਜ਼ੀਆਂ ਆ ਫਲ ਖਾਂਦੇ ਨੇ ਫਲੋ ਆਹਾਰੀ ਕਹਿੰਦੇ ਆ ਆਪਣੇ ਆਪ ਨੂੰ ਫਲੋ ਆਹਾਰੀ ਫਲ ਖਾਣੇ ਵਾਲੇ ਕੋਈ ਵਰਤ ਰੱਖ ਕੇ ਫਲ ਖਾਂਦੇ ਨੇ ਉਦੋਂ ਅੱਜ ਫਲੇ ਖਾਣਦੇ ਨਹੀਂ ਖਾਣ ਕਹਿੰਦੇ ਬਾਦਦਰ ਫਲੇ ਖਾਂਦੇ ਜੇ ਬੰਨ ਹੁੰਦੇ ਨੇ ਉਹ ਬਿਚਾਰੇ ਪੇੜਾਂ ਤੇ ਫਲ ਫਲ ਖਾ ਕੇ ਗੁਜ਼ਾਰਾ ਕਰਦੇ ਜਿਹੜੇ ਫਲ ਉਹਨੇ ਖਾ ਲਏ ਐ ਸਮਝ ਲਓ ਬਈ ਬਾਦਰੀ ਦੇ ਬੱਚੇ ਰਿਓ ਬਾਦਰੀ ਦੇ ਜਈਆ ਕਹਿੰ ਆ ਦਿਸ ਫਿਰਈਆ ਤੇ ਤੋਂ ਭੂਤ ਕੈ ਪਛਾਨੀਆਂ ਜਿਹੜੇ ਬਹੁਤ ਲੋਕ ਕੇ ਫਿਰਦੇ ਨੇ ਛੁਪ ਕਹਿੰਦੇ ਭੂਤ ਨੇ ਭੂਤ ਪ੍ਰੇਤ ਹੁੰਦੇ ਨੇ ਨਾ ਕੋਈ ਦੇਖ ਨਹੀਂ ਸਕਦਾ ਲੁਕਦੇ ਤਾਂ ਭੂਤ ਹੁੰਦੇ ਰੇ ਆਦਵੀਨੂਤ ਲੋਕਣ ਵਾਸਤੇ ਉਹਨੂੰ ਸ੍ਰੀ ਦਿੱਤਾ ਵੀ ਲੋਕੇ ਲੁਕੜ ਦੀ ਲੋੜ ਈ ਉਹ ਸਮਝ ਲਓ ਨੇ ਉਹ ਦਿਨ ਇਹਨਾਂ ਲੋਕਾਂ ਨੂੰ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜੱਗ ਜਿਹੜੇ ਜਲ ਦੇ ਵਿੱਚ ਤਰਦੇ ਨੇ ਬਹੁਤ ਵੀ ਅਸੀਂ ਡੁੱਬਦੇ ਹੀ ਨਹੀਂ ਇਹ ਜਲ ਦੇ ਉੱਤੇ ਕੀੜਾ ਉਹਨੂੰ ਜਲਾਹਾ ਕਹਿੰਦੇ ਜਲ ਦੇ ਉੱਤੇ ਹੁਣ ਛੋਟਾ ਜਿਹਾ ਕੀੜਾ ਹੁੰਦਾ ਬਹੁਤ ਤੇਜ਼ ਭਜਦਾ ਹੁੰਦਾ ਉਹ ਐ ਸਮਝ ਲਓ ਜਲ ਦੇ ਤਰਈਆ ਉਹ ਗੰਗੇਰੀ ਕਿਹੜਾ ਡੁੱਬਦਾ ਕਿੰਨਾ ਤੇਜ਼ ਭਜਦਾ ਇਹਨਾਂ ਤੇਜ਼ ਕਿਹੜਾ ਤਰਲੂ ਗੰਗੇਰੀ ਸੀ ਕਹਤ ਜਗ ਸਾਰੇ ਸੰਸਾਰ ਨੂੰ ਗੁਗੇਰੀ ਕਹਿੰਦੇ ਪਾਣੀ ਦੇ ਤਲ ਨਾਲ ਨੂੰ ਐ ਸਮਝ ਲੋ ਗੁਗੇਰੀ ਨਾ ਵੀ ਕਮਜ਼ੋਰ ਨੇ ਉਹਨਾਂ ਤੇਜ ਨਹੀਂ ਤਰ ਸਕਦੇ ਉਹ ਪਾਣੀ ਦੇ ਉੱਤੇ ਹੀ ਪਾਣੀ ਦੇ ਜਿਹੜੇ ਅੱਗ ਖਾ ਲੈਂਦੇ ਨੇ ਕਹਿੰਦੇ ਸੀ ਅੱਗ ਨਗਰ ਲੈਣੇ ਚ ਕੋਣ ਸੂਰਜ ਵੱਲ ਚੱਕਦੀ ਰਹਦੀ ਐ ਜਿੰਨਾ ਚਿਰ ਸੂਰਜ ਰਹਿੰਦਾ ਉਹ ਨਾ ਚਰ ਚੱਕਦੀ ਉਹ ਅੱਗ ਘਰ ਵਾਲੀ ਹੈ ਉਹਨੂੰ ਗਰਮੀ ਨਹੀਂ ਲੱਗਦੀ ਹੈ ਸੂਰਜ ਤੋ ਜਿੰਨਾ ਮਰਜੀ ਸੂਰਜ ਤਪਦਾ ਹੋਵੇ ਪਰ ਉਹ ਸੂਰਜ ਚਾਹੀਦਾ ਗਰਮੀ ਚਾਹੀਦੀ ਹੈ ਕਿ ਅੱਗ ਦੇ ਪਿਛੇ ਜਾਣਾ ਐ ਸਮਝੋ ਚਕੌਰ ਦੀ ਜੂਨ ਪਿਛਲੀ ਜੂਨ ਚ ਚਕੌਰ ਤੇ ਐ ਗੱਲ ਉਹ ਆਦਤ ਗਈ ਦੀ ਦਦੇ ਜੋ ਸੂਰਜ ਸਵਈਆ ਤਾਹੇ ਕੋਲ ਕੀ ਵਢਾਈ ਦੇਤ ਜਿਹੜੇ ਦੀ ਸੇਵਾ ਕਰਨ ਵਾਲੇ ਨੇ ਉਹ ਕਾਲ ਫੁੱਲ ਹੁੰਦਾ ਜਿਹੜਾ ਕਮਲ ਟੋਪਿਆਂ 'ਚ ਹੁੰਦਾ ਹੈ ਕਮਲ ਖਿੜਕਦਾ ਹੈ ਸੂਰਜ ਨੂੰ ਦੇਖ ਕੇ ਸੂਰਜ ਤੋਂ ਬਿਨਾ ਕਮਲ ਨਹੀਂ ਖਿੜਦਾ ਇਹ ਪੂਰੀ ਚਾਹੀਦੀ ਹੰਤੋਂ ਜਿਹੜੇ ਸੂਰਜ ਦੀ ਸੇਵਾ ਕਰਦੇ ਨੇ ਸੂਰਜ ਨੂੰ ਦੇਖ ਕੇ ਸਵੇਰੇ ਪਾਣੀ ਦਿੰਦੇ ਨੇ ਖੁਸ਼ ਹੁੰਦੇ ਨੇ ਉਹ ਸਮਝ ਲੋ ਕਮਲ ਵੀ ਇੱਕ ਬੂਟੀ ਹੋਈ ਹੈ ਉਤਪੋ ਜਾਏਗਾ ਥੱਲੇ ਦੀ ਜੁਡੀ ਹੈ ਬਹੁਤ ਘਟ ਜੇਤਨਾ ਵਾਲਾ ਇੰਨਾ ਅਗੇ ਉਹਨਾਂ ਦੇ ਅੰਦਰ ਸਮਝ ਲੋ ਬੁੱਧੀ ਦੇ ਵਿੱਚ ਜੀਵ ਆਤਮਾ ਦੀ ਬੁੱਧੀ ਹੁੰਦੀ ਹੈ ਐਡੀ ਉਹਨਾਂ ਨੂੰ ਖੋਸ਼ ਹੈ ਸੇਵਾ ਕਰਦੇ ਚੰਦਰ ਮੇਰੂ ਉਹ ਚੰਦਰਮਾ ਨਾਲੋਂ ਜ਼ਿਆਦਾ ਨੇ ਕਵਿਤਾ ਲਿਖਾਣੇ ਨਾ ਚੰਦਰਮਾ ਦੀ ਜ਼ਿਆਦਾ ਕਰਦੇ ਨੇ ਨਾਰਾਇਣ ਕਚਮਚ ਤਿੰਦੂਆ ਕਹੇ ਤਾਂ ਸਭ ਨਾਰਾਇਣ ਕਾਛੂ ਮੱਛੇ ਤਿੰਦੂਆ ਜਿਹੜਾ ਕਾਛੂ ਮੱਛਾ ਨੂੰ ਅ ਤੇ ਤਿੰਦੂਆ ਇਹਦਾ ਨਾਮ ਨਾਰਾਇਣ ਰੱਖਿਆ ਹੋਇਆ ਲੋਕਾਂ ਨੇ ਕਿਉ ਨਾਰਾਇਣ ਦਾ ਇਹ ਇਹ ਗੱਲ ਹੈ ਨਾਰਾਇਣ ਕਹਿੰਦੇ ਪਾਣੀ ਚ ਰਹਿੰਦਾ ਧਾਰਣ ਕਿੰਦਸ ਗਵਾਰੀ ਧਾਰਣ ਕਿੰਦਸ ਭੂਲੀ ਗਵਾਰੀ ਉਹ ਸਮੁੰਦਰ ਇਹ ਜਿਹੜਾ ਸਰੀਰ ਹੈ ਨਾ ਸਰੀਰ ਦੇ ਧਾਰੀ ਹੈ ਇਹ ਪਾਣੀ ਦਾ ਬੁਲਬੁਲਾ ਹੈ ਨਾ ਗਾਰੇਆਂ ਇਹਦੇ ਨਾਲ ਜੁੜਿਆ ਹੋਇਆ ਹੈ ਜਲ ਦੇ ਵਿੱਚ ਬਾਸ ਜੀਵਦਾ ਹੈ ਬਬੀਹਾ ਜਲ ਵਿੱਚ ਤੇਰਾ ਬਾਸ ਹੈ ਯਾ ਤਾਂ ਬਬੀਹਾ ਨੂੰ ਨਰਨ ਸੁਭਿ ਤੇ ਨਾ ਉਹਨਾਂ ਨੂੰ ਦਾਲ ਦਾ ਪਤਾ ਨਹੀਂ ਹੈ ਨਾ ਦਾ ਜਲ ਵਿੱਚ ਬਾਸ ਸੁਭਿ ਤੇ ਕਾਛੂ ਹੈ ਜਲ ਵਿੱਚ ਵਾਸ ਹੁੰਦਾ ਤੇ ਦੂਹੇ ਜਲ ਵਿੱਚ ਵਾਸ ਹੁੰਦਾ ਇਸ ਕਰਕੇ ਇਹਦਾ ਨਾਮ ਵੀ ਨਾਰਾਇਣ ਪਾ ਲਿਆ ਲੋਕਾਂ ਨੇ ਕਾਛ ਦਾ ਕਛੂ ਉਤਾਰਿਆ ਲੋ ਮਛੂ ਵੀ ਉਤਾਰਿਆ ਮੰਨਿਆ ਆ ਇਹਦਾ ਰੈਣ ਦੇ ਅਵਤਾਰ ਨੇ ਸਾਰੇ ਤੇ ਦੂਆ ਜਿਹੜਾ ਹੁੰਦਾ ਹਾਂ ਇਹਨੂੰ ਕਹਿੰਦੇ ਨਾਕਾ ਇਹ ਸਾਰੇ ਇਹਨੂੰ ਵੀ ਕਹਿੰਦੇ ਦਵਾਰਣ ਕਹਿੰਦੇ ਇਹਨੂੰ ਵੀ ਦਵਾਰਣ ਕਹਿੰਦੇ ਉਰਲਾ ਨਾਰਾਇਣ ਦਵਤ ਤੇ ਦੋਵ ਨਾਰਾਇਣ ਕਾਚਮਚ ਵੀ ਸ਼ਾਇਦ ਤਾਹੀ ਅਵਤਾਰ ਬੰਦੇ ਕੌਲ ਨਾਭ ਕੌਲ ਜਿਹੇ ਤਾਲਮੇ ਰਹਤ ਹੈ ਜੇ ਤੁਸੀਂ ਉਹਨੂੰ ਕਮਲ ਫੁੱਲ ਦਾ ਖਿਤਾਬ ਦਵੋ ਪਰਮੇਸ਼ਰ ਨੂੰ ਕੌਲ ਫੁੱਲ ਐ ਉਹ ਤਾਂ ਫਿਰ ਜਿਹੜੇ ਤੋਬੇ ਦੇ ਵਿੱਚ ਛੱਪੜ ਦੇ ਵਿੱਚ ਕਮਲ ਫੁੱਲ ਨੇ ਉਹ ਛੱਪੜ ਦਾ ਵੀ ਕੌਲ ਫੁੱਲ ਦਾ ਖਿਆਲ ਨਹੀਂ ਹੋ ਗਿਆ ਪੜਿਤੇ ਕਾਲ ਪੈਦਾ ਹੁੰਦੇ ਨੇ ਉਹ ਤਾਂ ਫਿਰ ਕਾਲ ਬੋਲਣ ਦਾ ਖਜ਼ਾਨਾ ਹੋ ਗਿਆ ਗੋਪੀਨਾਥ ਗੁਜਰ ਗੋਪਾਲ ਸਭੇ ਧੇਨਚਾਰੀ ਜਿਹੜੇ ਧੇਨਚਾਰੀ ਹੈ ਕ੍ਰਿਸ਼ਨ ਨੂੰ ਕਹਿੰਦੇ ਨੇ ਧੇਨਚਾਰੀ ਗੋਪਾਲ ਕੋਪੀਨਾਥ ਗੁਜਰ ਗੋਪਾਲ ਸਭੇ ਧੇਨਚਾਰੀ ਕੋਪੀਨਾਥ ਤੇ ਤਾਂ ਗੁਜਰ ਨੇ ਸਾਰੇ ਕੋਪੀਨਾਥ ਵੀ ਨੇ गोपीनाथ ਜਿਹੜਾ ਗਵਾਂ ਜਿਹੜਾ ਗਾਇਆਂ ਦਾ ਅਸਲ ਦੇ ਵਿੱਚ ਗਾਇਆਂ ਨੂੰ ਉਹਨਾਂ ਨੇ ਗੋਪੀ ਬਣਾ ਲਿਆ ਨਾ ਗੋਜਤ ਗਾਇਆਂ ਨੂੰ ਬਣਾ ਲਿਆ ਉਹ ਐਸੇ ਕਰਕੇ ਉਹਦੇ ਨਾਮ ਤੇ ਬਣਾ ਹੋਈ ਜਾਣਾ ਵੀ ਆਤਮਾ ਨੂੰ ਛੱਡ ਕੇ ਮੱਤਨੋਂ ਗਾਇਆਂ ਛੱਡ ਕੇ ਨਾ ਗੋਜ ਕੇ ਆ ਗੋ ਉਹਨੂੰ ਬਣਾ ਲਿਆ ਮੱਤਨ ਐ ਦੁੱਧ ਦੇਣਾ ਸੀ ਉਹਨਾਂ ਨੇ ਗੋ ਦਾ ਦੁੱਧ ਗਊ ਮਾਤਾ ਬਣਾ ਲਿਆ ਮਤਮਾਤਾ ਦੀ ਗਾ ਗਊ ਮਾਤਾ ਬਣ ਗਈ ਗੋਪੀਨਾਥ ਗੁੱਜਰ ਕਪਾਲ ਸਭ ਇਹ ਤਿੰਨ ਚਾਰੀ ਇਹ ਤਿੰਨ ਚਾਰੀ ਨੇ ਸਾਰੇ ਗਊਆਂ ਚਾਲਣ ਵਾਲੇ ਜੇ ਕ੍ਰਿਸ਼ਨ ਨੇ ਗਊਆਂ ਚਾਲ ਲੀਆਂ ਫਿਰ ਕੀ ਹੋ ਗਿਆ ਇਹ ਸਾਰੇ ਗਈਆਂ ਚਾਰਦੇ ਹੀ ਗੁੱਜਰ ਨੇ ਪੁਣਾ ਨੂੰ ਗੋਪੀਨਾਥ ਕਹਿੰਦੇ ਨੇ ਲੋਕ ਗੋਪਾਲ ਵੀ ਦੇ ਗੋ ਪਾਲਣ ਵਾਲੇ ਜਨਮ ਕਪਾਲ ਇਹ ਸਾਰੇ ਗਊਆਂ ਚਾਲਣ ਵਾਲੇ ਨੇ ਕ੍ਰਿਸ਼ਨ ਵੀ ਹੈ ਜਾਂ ਇਸੀ ਫਿਰ ਇਹ ਸਾਰੇ ਕ੍ਰਿਸ਼ਨ ਦੇ ਉਤਾਰ ਨੇ ਫਿਰ ਮਹੰਤ ਲਹੀ ਮਹੰਤ ਬੜੇ ਨੇਰਿਆਂ ਨੇ ਬੜੇ ਸੰਤ ਜਿਹੜੇ 1008 ਲਿਖਦੇ ਨੇ ਉਹ ਬਹੁਤ ਉਦਰੇ ਸੰਤ ਹੁੰਦੇ ਨੇ ਜਿਹੜੇ 108 ਵਾਲੇ ਸੰਤ 108 ਲ ਬਹੁਤ ਵੱਡੇ ਜਿਨ੍ਹਾਂ ਦੇ ਸੰਤ ਵੀ ਜਲੇ ਹੋਣ ਉਹ ਰਿਕੇਸ ਆਪਣੇ ਆਪ ਨੂੰ ਕਹਿੰਦੇ ਤੇ ਉਹ ਵੀ ਫਿਰ ਪਰਮੇਸ਼ਰ ਹੀ ਹੋਏ ਪਰਮੇਸ਼ਰ ਨਾਲ ਨਾ ਰਖਲੇ ਹੋਣਾ ਬਹੁਤ ਕਾਬ ਖਾਂਦੀ ਮਾਦਵ ਭਵਰ ਉਹ ਓਟੇਰੂ ਕੋ ਕਨਈਆ ਨਾਮ ਮਾਦਵ ਭਵਰ ਦਾ ਪਹੋਰਾ ਜਿਹੜਾ ਫੁੱਲਾਂ ਤੇ ਫਿਰਦਾ ਉਹਨੂੰ ਮਾਦਵ ਕਹਿੰਦੇ ਨੇ ਉਹ ਨੂੰ ਵੀ ਮਾਦਵ ਕਹਿੰਦੇ ਨੇ ਮਾਦਵ ਉਵੇਂ ਸੇ ਤੂੰ ਐਸਾ ਮਾਦਵ ਹੋਰੇ ਨੂੰ ਵਾਦੋ ਕਹਿੰਦੇ ਨੇ ਬੋਲੀ ਚ ਜੇ ਵਾਦੋ ਕਹੋਂਗੇ ਫਿਰ ਭੌਰਾ ਹੀ ਹੋਇਆ ਤੁਹਾਡਾ ਰੱਬ ਦਾ ਫਿਰ ਭੌਰਾ ਵੀ ਰੱਬੇ ਆ ਭਾਸ਼ਾ ਦੀ ਗੱਲ ਹੈ ਦੇਖੋ ਭਾਸ਼ਾ ਇੱਕ ਹੈ ਹੋਰੇ ਨੂੰ ਵੀ ਵਾਦੋ ਕਹਨੇ ਹੋ ਤੁਸੀਂ ਪਰਮੇਸ਼ਰ ਨੂੰ ਵੀ ਵਾਦੋ ਕਹਿੰਦੇ ਇੱਕੋ ਲੱਗਦਾ ਤੁਹਾਹਾਂ ਖਤਰ ਜੀ ਆ ਗਿਆ ਤੇ ਇਹਦਾ ਪਰਮੇਸ਼ਰ ਦੀ ਕੋਈ ਤੁਹਾਡੇ ਅੰਦਰ ਵੈਲਿਊ ਨਹੀਂ ਉਦੋਂ ਕਿ ਜਾਨਵਰ ਦਾ ਨਾਮ ਹੈ। ਸਮਝਦੇ ਨਹੀਂ। ਅਟੇਰੂ, ਮਾਦਵ ਭਵਰ ਉਹ ਅਟੇਰੂ ਕੋ ਕਨਈਆ ਨਾਮ। ਕਨਈਆ ਕਹਿੰਦੇ ਨੇ ਅਟੇਰੂ ਨੂੰ। ਅਟੇਰੂ ਉਹ ਬੜੇ ਓਟਾਂ ਵਾਲੀ ਮੱਕੜੀ ਹੁੰਦੀ ਹੈ ਨਾ। ਬੜੀਆਂ ਨੰਗਾਲੀ। ਉਹਨੂੰ ਅਟੇਰੂ ਕਹਿੰਦੇ। ਉਹ ਵਿੱਚੋਂ ਕਰਦਾ ਨਾ ਜਾਲ ਬਣਦਾ। ਜਾਲ ਬੁਣਦੀ ਹੈ ਨਾ ਉਹ ਅਟੇਰੂ ਦਾ ਕਹਿੰਦੇ ਨੇ। ਕੋਕਨਈਆ ਨਾਮ। ਕਨਈਆ ਇਹਨੂੰ ਕਹਿੰਦੇ ਨੇ। ਉਹ ਲੋਕ ਨੇ ਹੀ ਆਂ ਕਿੜੀ ਦਾ ਕਾਂਗਿਆਂ ਚੜੇ ਬੱਕਰੀ ਆਹੋ ਨਾ ਅਟੇਰੂ ਮਾਦਵਤਾ ਉਹ ਹੈ ਨਾ ਪਵਰ ਪਵਰਾ ਜਿਹੜਾ ਫੁੱਲਾਂ ਤੇ ਬਹਿਣ ਦਾ ਮਾਦਵ ਹੈ ਅਟੇਰੂ ਕਿ ਨਹੀਂ ਹੈ ਕੰਸ ਕੋ ਜਿਹੜਾ ਕੰਸ ਦਾ ਵਧਣ ਵਾਲਾ ਹੈ ਅਸਲ ਦਾ ਜਮਦੂਤ ਹੈ ਉਹ ਜੇ ਕ੍ਰਿਸ਼ਨ ਆ ਫੇ ਜਮਦੂਤ ਹੋਇਆ ਕ੍ਰਿਸ਼ਨ ਜੇ ਕ੍ਰਿਸ਼ਨ ਨੇ ਵਾਰਿਆ ਉਹ ਜਮਦੂਤ ਆ ਜਬਦੂਤ ਕ੍ਰਿਸ਼ਨਾ ਇਹ ਤਾਂ ਹੁਕਮ ਨੇ ਮਾਰੇ ਹੋ ਜਿ ਕ੍ਰਿਸ਼ਨ ਮਾਰੇ ਫਿਕ੍ਰਿਸ਼ਨ ਦੇ ਜਬਦੂਤ ਹੈ ਮੂੜ ਰੂੜ ਪੀਟਤ ਨਾ ਗੁੜ ਤਾਕੋ ਭੇਦ ਪਾਵੇਂ ਮੂੜ ਰੂੜ ਪੀਟਤ ਨਾ ਗੁੜ ਤਾਕੋ ਭੇਦ ਪਾਵੇਂ ਮੂਰਖ ਨੇ ਲੋਕ ਸਾਰੇ ਮੂਰਖ ਰੂੜੀਵਾਦੀ ਨੇ ਲਕੀਰ ਨੂੰ ਪਿਟੀ ਜਾਂਦੇ ਨੇ ਸਪਨਾਾਂਗੇ ਹਲਕੀ ਢੁਟੀ ਜਾਂਦੇ। ਗੋੜ ਤਾ ਨਹੀਂ ਜਾਣਦੇ ਗੱਲ ਦੀ ਗੋੜਤਾ ਕੀ ਹੈ? ਯਾਰ ਤੂੰ ਉਹ ਦੇਖਦੇ ਨਾ ਜੋਤ ਨੂੰ ਨਹੀਂ ਦੇਖਦੇ। ਜੋਤ ਤੇ ਨਹੀਂ ਜਾ ਸਕਦੇ ਜਾਂਤੇ ਹੀ ਖੜੇ ਨੇ। ਪੂਜਤ ਨਾ ਤਾਂ ਹੈ ਜਾ ਕੇ ਰਾਖੇ ਰਹੀਤ ਹੈ। ਉਹ ਨਹੀਂ ਪੂਜਾ ਨਹੀਂ ਕਰਦੇ। ਜਿਹੜਾ ਸਾਨੂੰ ਬਚਾਉਣ ਵਾਲਾ ਜਿਹਦੇ ਨਾਲ ਜੁੜ ਕੇ ਅਸੀਂ ਕਾਲ ਤੋਂ ਬਚ ਸਕਦੇ ਆਂ। ਜਿਹੜਾ ਸਾਨੂੰ ਜੱਬੜਾ ਨਾਲ ਦੇ ਗੇੜ ਚੋਂ ਬਚਾ ਸਕਦਾ ਹੈ ਉਹਦੇ ਨਾਲ ਜੁੜਦੇ ਉਹਦੀ ਪੂਜਾ ਨੀ ਕਰਦੇ ਵਿਸ਼ਵਪਾਲ ਜਗਤਕਾਲ ਦੀਨਦੇਵਾਲ ਬੈਰੀ ਸਾਲ ਸਦਾ ਬਰਤਪਾਲ ਜਮ ਜਾਲ ਤੇ ਰਹਤ ਹੈ ਵਿਸ਼ਵਪਾਲ ਜਗਤਕਾਲ ਦੀਨਦੇਵਾਲ ਬੈਰੀ ਸਾਲ ਜਿਹੜਾ ਵਿਸ਼ਵ ਦੀ ਪਾਲਣਾ ਕਰਨ ਵਾਲਾ ਹੈ ਸਾਰੇ ਜਗਤ ਦਾ ਕਾਲ ਉਹੀ ਹੈ। ਪਾਲਣਾ ਵੀ ਉਹੀ ਕਰਦਾ ਹੈ, ਕਾਲ ਵੀ ਉਹੀ ਕਰਦਾ ਹੈ। ਪਿੱਛੇ ਕਾਇ ਤਾਣਾ ਵੀ ਉਹ ਜਿਹੜਾ ਬਚਾਉਣ ਵਾਲਾ ਹੈ, ਉਹ ਵੀ ਪੂਜਾ ਨਹੀਂ ਕਰਦੇ। ਹੂੰ। ਪਿਛਲੀ ਪੰਗਤੀ ਤੇ ਛੱਡਿਆ ਸੀ। ਇਹ ਪੂਜੇ ਤਾਂ ਨਾ ਤਾਹੇ, ਜਾ ਕੇ ਰੱਖੇ ਰਹੀ ਹੈ ਤਹੇ। ਰੱਖੇ ਕਿਧਰ ਹੈ? ਕਿਧਰ ਕੋ ਰਖਣਾ ਕੀ ਦੇ ਨਾਲ ਜੁੜ ਕੇ ਅਸੀਂ ਕਿਹਦੀ ਪੂਜਾ ਕਰਕੇ ਅਸੀਂ ਬਚਾਂਗੇ ਜੰਮ ਦੇ ਜਾਲ ਚੋਂ ਵਿਸ਼ਵ ਪਾਲ ਜਿਹੜਾ ਵਿਸ਼ਵ ਪਾਲਣਾ ਕਰਦਾ ਵਿਸ਼ਵ ਨਹੀਂ ਪਾਲਣਾ ਕਰਨ ਵਾਲਾ ਹੀ ਕਹਾਲ ਹੈ ਜੇ ਉਹ ਸ਼ਰਨ ਕਿਲੇ ਜਾਵਾਂਗੇ ਫਿਰ ਫਿਰ ਵੀ ਕੁਝ ਕਹਿੰਦਾ ਉਹਦੀ ਜੇ ਸ਼ਰਨ ਨਹੀਂ ਜਾਵਾਂਗੇ ਫਿਰ ਮਾਰਦਾ ਸ਼ਰਨ ਆਏ ਉਹਨੇ ਕੋਈ ਕੁਝ ਕਹਿਣਾ ਰਾਜਾ ਜਿਹੜਾ ਉਹਦੇ ਉਹਦਾ ਵਿਰੋਧ ਕਰੂ ਉਸ ਨਾਲ ਲੜਾਈ ਆ ਉਸ ਨੂੰ ਕਰੂ ਜੇ ਉਹ ਦੀ ਛੱਟ ਤੇ ਲੈ ਗਿਆ ਫਿਰ ਉਹ ਕਰਦਾ ਜੇ ਨਹੀਂ ਵਿਰੋਧ ਕਰਦਾ ਫਿਰ ਦੀਨ ਦਿਆਲ ਹੈ ਜਿਹੜਾ ਉਹਦੇ ਹੋ ਗਿਆ ਉਹ ਤੇ ਹੋ ਜਾਂਦਾ ਤੇ ਨਾ ਲਾਉਦਾ ਜਗਤ ਕਾਲ ਦੀ ਵਿਰੋਧ ਕਰਦਾ ਹੁਕਮ ਵਿਸ਼ਪਾਲ ਹੈ ਉਹ ਹੁਕਮ ਬਿਸ਼ੁਪ ਆਲੇ ਬਿਸ਼ੁਪ ਦੀ ਪਾਲਣਾ ਕਰਦਾ ਜਿਹੜਾ ਹੁਕਮ ਦੀ ਵਿਰੋਧ ਨਾ ਕਰਦਾ ਉਹਦਾ ਹੁਕਮ ਕਾਲ ਹੈ ਕੋਈ ਹੁਕਮ ਦਾ ਕਾਲ ਹੈ ਜਿਹੜਾ ਉਹਦੇ ਅੱਗੇ ਸਲੈਂਡਰ ਹੋ ਜਵੇ ਹੁਕਮ ਤੇ ਪਾਲਣਾ ਮੰਨ ਲਵੇ ਸੱਚ ਕਾ ਦੇਵੇ ਉਹ ਤੇ ਉਹਦਾ ਧਿਆਲ ਹੈ ਉਹ ਦੀਦ ਤੇ ਧਿਆਲ ਹੈ ਜਿਹੜਾ ਦੀਦ ਹੋ ਜਵੇ ਧਿਆਲ ਹੈ ਜੇ ਗੁਰੂ ਸਾਹਮਣੇ ਬਣ ਕੇ ਖੜਾ ਹੋ ਜਵੇ ਫਿਰ ਧਿਆਲ ਲਈ ਜੋਦੇ ਸਾਹਮਣੇ ਬੜਾ ਬਣ ਕੇ ਗੁਰੂ ਤਾਂ ਆਪੇ ਗੁਰੂ ਤਾਂ ਸ਼ਬਦ ਗੁਰੂ ਹੈ ਹੁਕਮ ਆਪੇ ਗੁਰੂ ਹੈ ਜਿਹੋਦੇ ਸਾਹਮਣੇ ਗੁਰੂ ਬਣ ਕੇ ਖੜਾ ਹੋ ਜੂ ਉਹਦੀ ਬਖਸ਼ਿਸ਼ ਦੀ ਹੈ ਦੀਨ ਦੀ ਬਖਸ਼ਿਸ਼ ਹੈ ਦਿਨਨ ਬਰਤਪਾਲ ਕਰੇ ਦੀ ਬਰਤਪਾਲ ਕਰਦਾ ਦਿਨਨ ਕੇ ਬਰਤਪਾਲ ਕਰੇ ਤੇ ਉਬਾਰ ਗਨੇ ਵਣ ਵਿਰੋਧ ਕਰਦੇ ਨੇ ਉਹਦੇ ਬੰ ਉਹ ਦੁਨੀਆ ਨੂੰ ਤੰਗ ਕਰਨ ਵਾਲੇ ਨੇ ਦੁਨੀਆ ਤੇ ਰੋਬ ਝਾੜਨ ਵਾਲੇ ਨੇ ਪ੍ਰੈਸ਼ਰ ਆਪਣੇ ਹੁਕਮ ਚਲਾਉਣ ਵਾਲੇ ਨੇ ਲੋਕਾਂ ਨੂੰ ਉਹਨਾਂ ਨੂੰ ਗਰੀਬਾਂ ਨੂੰ ਘਾਹ ਦਿੰਦੇ ਸਰਕਾਰੀਆਂ ਨੂੰ ਨਾਸ ਕਰ ਦਿੰਦੇ ਉਹਨਾਂ ਨੂੰ ਗਰੀਬ ਸਾਲ ਜਿਹੜੇ ਦੀਨ ਦੇ ਹੈ ਜਿੱਥੇ ਤੇ ਜਿਹੜੇ ਦੀਨ ਦੇ ਉਹਦੇ ਅੱਗੇ ਉਹਨਾਂ ਦੇ ਜਾਂ ਧਿਆਲ ਹੁੰਦਾ ਉਹਨਾਂ ਦੇ ਜਿਹੜੇ ਦੁੱਖ ਨੇ ਉਹਨਾਂ ਦਾ ਦੁਸ਼ਮਣ ਬਣ ਜਾਂਦਾ ਸਾਲ ਦੁੱਖਾਂ ਦਾ ਨਾਸ ਕਰਨ ਵਾਲਾ ਬੈਰੀ ਸਾਲ ਸਾਲ ਉਹਦੇ ਦੁਖ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਸਦਾ ਜਮ ਜਾਲ ਤੇ ਰਹਤ ਸਦਾ ਪ੍ਰਤਪਾਲ ਕਰਦਾ ਫਿਰ ਉਹਨਾਂ ਦੀ ਔਰ ਜਬ ਜਾਲ ਪਿਛਲੇ ਸਵਾਲ ਦਾ ਜਵਾਬ ਆਇਆ ਪਿਛਲੀ ਪੰਕਤੀ ਦਾ ਜਿਹੜਾ ਆਖਰੀ ਸੀ ਨਾ ਪੂਛਤ ਨਾ ਜਾ ਸਵਾਲ ਦਾ ਉਹ ਜਿਹੜੀ ਗੱਲ ਸੀ ਉਹਦਾ ਜਵਾਬ ਆਇਆ ਅੱਗੇ ਆਕੇ ਜੋਗੀ ਜਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਜੋਗੀ ਜਟਾਧਾਰੀ ਜਿੰਨੇ ਨੇ ਜੋਗੀ ਨੇ ਜਟਾ ਵਾਲੇ ਨੇ ਵੱਡੇ ਵੱਡੇ ਸਤੀ ਸਾਚੇ ਵੱਡੇ ਬ੍ਰਹਮਚਾਰੀ ਸਤੀ ਵੀ ਨੇ ਜਿਹਨਾਂ ਦਾ ਸੱਚ ਦਾ ਉਹਨਾਂ ਨੂੰ ਗਿਆਨ ਹੈ ਜਿਹਨਾਂ ਕਹ ਸੱਚ ਦਾ ਉਹਨਾਂ ਨੂੰ ਸਮਝ ਆ ਗਿਆ ਸਮਝਿਆ ਉਹ ਜਿਹੜਾ ਚੱਲਦੇ ਵੀ ਨੇ ਜੋ ਕਹਿ ਤਾ ਕਹਿ ਤਾ ਵੱਡੇ ਬ੍ਰਹਮਚਾਰੀ ਵੱਡੇ ਇੱਕ ਵੱਡੇ ਵੱਡੇ ਬ੍ਰह्मਚਾਰੀ ਨੇ ਤਿੰਨ ਨੇ ਇਹਨਾਂ ਚ ਵੀ ਨੇ ਇੱਕ ਬ੍ਰह्मਚਾਰੀ ਹੋਰ ਨੇ ਇਹਨਾਂ ਜੋ ਬ੍ਰह्मਚਾਰੀ ਹੁੰਦੇ ਸਤਵਾਦੀ ਹੁੰਦੇ ਵੱਡੇ ਵੱਡੇ ਪਿਆਸ ਦੇ ਧਿਆਨ ਐਸਾ ਲਾਉਂਦੇ ਨੇ ਭੁੱਖ ਪਿਆਸ ਕਿੰਨੀ ਲੱਗੀ ਹੋਵੇ ਪ੍ਰਵਾਹ ਨਹੀਂ ਕਰਦੇ ਵਿਧਿਆਨ ਰਖਾਇਆ ਉਹਦੇ ਵਿੱਚ ਭੁੱਖ ਪਿਆਸ ਖਾਤਰ ਵੀ ਉੱਠ ਕੇ ਨਹੀਂ ਜਾਂਦੇ ਦੇਹ ਤੇ ਉਹ ਸਹਿਦੇ ਨੇ ਭੁੱਖ ਪਿਆਸ ਦਾ ਅਸਰ ਨੇਉਲੀ ਕਰਮ ਜਲ ਹੋਮ ਪਾਵਕ ਪਵਨ ਹੋਣ ਜਿਵੇਂ ਕਰਮ ਕਰਦੇ ਨੇ ਲੋਕ ਜਲ ਹੋਮ ਪਾਵਕ ਪਵਨ ਹੋ ਜਲ ਵਿੱਚ ਜਲ ਦਾ ਹੋਮ ਕਰਦੇ ਨੇ ਜਲ ਵਿੱਚੋਂ ਪੁੱਲਦੇ ਹੁੰਦੇ ਨੇ ਨਾ ਉਹਦੇ ਨਾਲ ਹਵਨ ਕਰਦੇ ਨੇ ਜਲ ਵਿੱਚ ਮਤਲਬ ਜਲਦਾ ਅਦੋ ਮੁਖ ਏਕ ਪਾਇ ਠੰਡੇ ਮੁਖ ਏਕ ਪਾਇ ਅਦੋ ਮੁਖ ਉੱਤੇ ਨੂੰ ਚੱਕ ਕੇ ਰੱਖਣਾ ਆਕਾਸ਼ ਵਿੱਚ ਨੂੰ ਇੱਕ ਟੰਗ ਭਾਰ ਖੜਨਾ ਏਕ ਪਾਇ ਇੱਕ ਟੰਗ ਭਾਰ ਖੜਨਾ ਦੂਈ ਲੱਖ ਇੱਥੇ ਗੋਲਡੇ ਤੋਂ ਉੱਪਰ ਲਾ ਕੇ ਰਖਣੀ ਏ ਨਾਲ ਉੱਪਰ ਨੂੰ ਮੁਖ ਰੱਖਣਾ ਆਕਾਸ਼ ਵਿੱਚ ਨੂੰ ਹਾੜੇ ਨਾ ਬਹਿ ਤਾ ਸਾੜੇ ਖੜੇ ਰਹਿਣੇ ਬਹਿਣਾ ਨਹੀਂ ਹੈ ਨਾ ਬਹਿ ਤਾ ਬਹਿਣ ਦੀ ਇਹ ਵੀ ਭਗਤੀ ਹੈ ਇੱਕ ਐਸੇ ਐਸੇ ਕੰਮ ਵੀ ਲੋਕ ਕਰਦੇ ਗੁਰਬਾਣੀ ਇਹ ਨੂੰ ਹੈ ਕਿਉਂਕਿ ਗਿਆਨ ਤੇ ਬਨੋ ਸਭ ਜੀ ਕੈਸੇ ਪਾਵੇ ਭਗਵੰਤ ਨੂੰ ਗਿਆਨ ਕੇ ਬਿਨ ਕੈਸੇ ਪਾਵੇ ਭਗਵੰਤ ਕਬੀਰ ਵੀ ਆਦਾ ਜਹਾਂ ਜਾਏ ਗਿਆਨ ਤਾਂ ਹੈ ਧਰਮ ਜੇ ਗਿਆਨ ਨਹੀਂ ਤਾਂ ਧਰਮ ਹੈ ਇਹ ਧਰਮ ਕਰਮ ਨਹੀਂ ਆਣੇ ਹੈ ਇਹ ਕਰਮ ਧਰਮ ਨੇ ਕਰਮ ਕਰਦੇ ਨੇ ਜੋ ਧਰਮ ਦਾ ਸਾਨੂੰ ਗਿਆਨ ਹੋ ਜਵੇ ਅਜੋ ਤਾਂ ਧਰਮ ਦਾ ਗਿਆਨ ਵੀ ਨਹੀਂ ਹੈ ਇਹਨਾਂ ਨੂੰ ਧਰਮ ਦੀ ਸਮਝ ਨਹੀਂ ਹੈ ਧਰਮ ਕੀ ਹੁੰਦਾ ਪਹਿਲਾਂ ਧਰਮ ਦੀ ਸਮਝ ਹੋਵੇ ਫਿਰ ਧਰਮ ਕਰੇ ਹੇਰੇ ਤੋਂ ਫੜ ਫੜਾ ਬੈਠੇ ਗੁਰਬਾਣੀ ਇਹਨਾਂ ਨੂੰ ਧਰਮ ਜੋ ਬਣਦੀ ਨਹੀਂ ਇਹ ਧਰਮਾਂ ਨੂੰ ਧਰਮ ਨਹੀਂ ਬਣਦੀ ਤਾਂ ਨੀ ਬਣਦੀ ਇਹ ਧਰਮ ਹੈ ਨਹੀਂ ਫਿਰ ਧਰਮ ਦੇ ਨਾਂ ਤੇ ਜਿਹੜੇ ਕੰਮ ਕਰਦੇ ਨੇ ਲੋਕ ਇਹਦਾ ਮਤਲਬ ਉਹਨੂੰ ਧਰਮ ਦੀ ਸੁਪਰੀ ਨਹੀਂ ਅਪੜੀ ਜਨਤਾ ਧਰਮੇ ਕਰਦੇ ਨੇ ਉਹ ਪਾਪ ਨਹੀਂ ਕਰਦੇ ਪਰ ਉਹ ਧਰਮ ਹੈ ਨਹੀਂ ਪਖੰਡ ਪਖੰਡ ਵੱਡੀ ਜੇ ਕੋਈ ਵੰਦਾਰੀਆਂ ਕਰਦਾ ਪਖਾਡ ਵੀ ਹੈ ਦੀ ਅਗਿਆਨਤਾ ਪਰਮ ਪਰਮ ਵੀ ਅਸੀਂ ਕਰਦੇ ਹਾਂ ਪਰਮੇ ਭੂਲਾ ਦਾ ਤਾਵੇ ਹੈ ਨਾ ਪੱਜਾ ਫਿਰਦਾ ਬਥੇਰਾ ਹੋ ਮਾਨਵ ਫਨਿੰਦ ਦੇਵਦਾਨ ਨਾ ਪਾਵੇਂ ਦੇਖੋ ਮਾਨਵ ਆਦਮੀ ਫਨਿੰਦ ਫਨਿੰਦ ਫਨਿੰਦੋ ਹੀ ਨੇ ਜਿਹੜੇ ਧੋਰਿਆਂ ਚ ਬੰਦੇ ਨੇ ਦੇਵਦਾਨ ਦੇਵਤਨਾਂ ਦਨੂ ਨੇ ਰੱਖੇ ਸੀ ਨਾ ਪਾਵੇਂ ਪੀਵ ਕਿਸੇ ਨੇ ਨੂੰ ਸਮਝੇ ਦੀ ਆਈ ਗੱਲ ਕਰਨ ਕੀ ਹੈ ਕਰਮ ਦਾ ਕਰਮ ਕੀਆ ਕਰਨਾ ਕੀ ਹੈ ਕਿਸੇ ਨੂੰ ਨੀਰ ਨਹੀਂ ਸਮ ਨਾ ਮਨ ਨੂੰ ਆਈ ਆ ਅੱਜ ਮੈਨੂੰ ਨਹੀਂ ਆਈ ਜਨਰਲ ਆ ਨੂੰ ਕੀ ਸਮਝ ਜਨਨ ਲਾਦ ਨੇ ਜਿਆਦਾ ਸਾਰਿਆਂ ਨੇ ਮਗਰੇ ਲੱਗਿਆ ਫਿਰਦਾ ਫਿਰਨਦਾ ਉਹ ਪੀਪੋਰੇ ਜੇ ਬੈਠਾਉਣਾ ਜੇ ਸਮਝਾਉਂਦੀ ਪੀਪੋਰੇ ਬੈਠਣ ਦੀ ਲੋੜ ਕੀ ਸੀ ਦਾਨਵਰ ਦੇਵ ਤੋਂ ਵੀ ਕਾਰੀ ਨੇ ਉਹਨਾਂ ਨੂੰ ਲੋੜੇ ਨਹੀਂ ਹੈ ਤਾਰਪ ਤਾਂ ਆਪੇ ਰੱਬ ਬਣੇ ਹੋਏ ਨੇ ਉਧਰ ਰੱਬ ਨੂੰ ਇਹ ਨਹੀਂ ਬੋਲਦੇ ਬੁਰ ਕਰਨੇ ਹੈ ਕਿਉਂ ਅਸਲੀ ਉਹਨਾਂ ਨੂੰ ਦੱਸਿਆ ਘਤਨੇ ਨਹੀਂ ਕਿ ਅਗਲੀ ਨੋਰਾ ਨੇ ਬਣਿਆ ਕੋਈ ਨਾ ਪਾਵੇਂ ਪੇਵ ਤੇ ਉਹ ਜਾਣਾਂ ਕਿਥੋਂ ਪਉਣਾ ਜੀ ਦੇਵਤਾਂ ਨੂੰ ਲੋੜ ਨਹੀਂ ਹੁੰਦੀ ਦੇਵਤਾਂ ਨੂੰ ਤਾਂ ਹੀ ਲੋੜ ਹੈ ਵੀ ਉਹਨਾਂ ਦਾ ਆਪਣੇ ਪੂਜਾ ਹੁੰਦੀ ਆ ਆਪ ਲੋਕ ਪੂਜਾ ਕਰਦੇ ਨੇ ਪੂਜਾ ਦਾ ਤਾਂ ਝਕੀ ਛਕਾਈ ਜਾਂਦੇ ਰਹਿੰਦੇ ਜਿਸ ਬਣੀ ਹੁੰਦੀ ਹੈ ਆ ਪੂਜਾ ਪਾਇਆ ਕਰੀ ਉਹੋ ਵੀ ਕਰੀ ਜਾਂਦੇ ਨੇ ਦਿਖਾਵੇ ਦੀ ਜਵੇ ਪੂਰਤੀ ਪੂਜਾ ਹੋ ਗਈ ਇਹ ਹੋ ਗਈ ਗੰਧਾ ਨੂੰ ਪੂਜ ਲਿਆ ਸੂਰਜ ਨੂੰ ਪੂਜ ਲਿਆ ਪਾਣੀ ਦੇ ਲਿਆ ਇਹ ਜਿਹਾ ਕੰਮ ਧਰਮ ਇਹਨਾਂ ਦੇਵਤਾਂ ਦੇ ਧਰਮ ਨੇ ਸਾਰੇ ਕਰੇ ਹੋਏ ਜਿਹੜੇ ਇਹ ਧਰਮ ਚਲਾਏ ਹੋਏ ਨੇ ਜਿਹਨਾਂ ਨੂੰ ਕਿਹਾ ਵੀ ਇਹ ਧਰਮ ਫੋਕਟ ਨਹੀਂ ਧਰਮ ਸਾਰੇ ਇਹ ਸਾਰੇ ਦੇਵਤਾਂ ਦੇ ਧਰਮ ਚਲਾਏ ਹੋਏ ਨੇ ਇਹ ਦੇਵਤਾਂ ਦਾ ਇਹਨੇ ਸਾਰੇ ਧਰਮ ਬੇਦੌਕ ਤੇ ਬੇਨਿਤ ਨੇਤ ਨੇਤ ਕਹਿ ਕਹਤ ਹੈ ਬੇਦੌਕ ਤੇ ਬੇਨਿਤ ਬੇਨਿਤ ਨੇ ਨੇਤ ਨੇਤ ਕਹਿ ਕਹਤਾਂ ਉਹ ਕਹਿੰਦੇ ਸਾਨੂੰ ਨਹੀਂ ਸਮਝ ਨਾਚ ਫਿਰ ਸਾਰੇ ਕਹਿੰਦੇ ਹੈ ਨਾਚ ਤਾ ਫਿਰ ਤਮੋਰ ਬਾਂਦਰ ਹੈ ਬਾਦਰ ਬਾਂਦਰ ਕਰਤਖੋਰ ਨਾ ਚ ਤਾਂ ਫਿਰ ਤਮੋਰ ਬਾਦਰ ਕਰਤ ਕੋਰ ਬੱਦਲ ਜਦੋਂ ਗੱਜਦਾ ਹੈ ਤਾਂ ਬੋਰ ਨੱਚਦਾ ਜਦੋਂ ਸੱਚ ਗਰਜਦਾ ਹੈ ਤਾਂ ਦੇ ਪਿਆਰ ਹੈ ਉਹ ਬੋਰ ਹੈ ਨਾ ਜੇ ਸੱਚ ਗਰਜਨ ਹੁੰਦੀ ਹੈ ਤਾਂ ਬੋਰ ਨੱਚਦਾ ਜਿਵੇਂ ਦਮਣੀ ਅਨੇਕ ਪਾਉ ਕਰਿਓ ਹੀ ਕਰਤਾ ਹੈ ਜਿਹੜੀ დამਣੀ ਬਿਜਲੀ ਆ ਉਹ ਵੀ ਇੰ데ਗਾ ਚਮਕਾ ਦਿਖਾਉਂਦੀ ਐ ਭੌਂ ਕਰਦੀ ਐ ਗਾ ਜਿੱਦਾਂ ਚਮਕਦੀ ਐ ਉਦਾਂ ਚਮਕਦੀ ਐ ਉਦਾਂ ਚਮਕਦੀ ਐ ਉਦਾਂ ਚਮਕਦੀ ਐ ਉਹ ਵੀ ਬਹੁਤ ਸਾਰੇ ਫਿਰ ਬਹੁਤ ਦਿਖਾਉਂਦੀ ਐ ਆਪਣੇ ਰੂਪ ਦਿਖਾਉਂਦੀ ਐ ਬਿਜਲੀ ਵੀ ਆਪਣੇ ਕਈ ਰੂਪ ਦਿਖਾਉਂਦੀ ਐ ਕਦੇ ਸਾੜ ਦਿੰਦੀ ਐ ਕਦੇ ਪੈ ਜਾਂਦੀ ਐ ਕਦੇ ਡਰਾ ਦਿੰਦੀ ਐ ਦੇਖੋ ਨਾ ਕਦੇ ਕਦੇ ਡਰ ਜਾਂਦਾ ਕਈ ਬਿਲਡਿੰਗਾਂ ਡਾਹ ਜਾਂਦੀਆਂ ਨੇ ਕਈ ਜਗ੍ਹਾ ਤਰਖਾ ਸੜ ਜਾਂਦੇ ਨੇ ਕਈ ਕਹਿੰਦੇ ਜੀ ਇਹ ਸੱਪ ਦੇ ਸੱਪ ਤੇ ਪੈ ਗਈ ਬਿਜਲੀ ਆਈਰੇ ਫੰਡੀਆਂ ਨੇ ਨਾ ਤੇ ਬਿਜਲੀ ਬਹੁਤ ਪੈਂਦੀ ਐ ਕਹੇ ਕਾਲਾ ਸ਼ੀਸ਼ਾ ਪਾਉਣਾ ਇੱਥੇ ਰੱਖ ਤੇ ਤਾਂ ਪਈ ਬਿਜਲੀ ਗੱਲ ਕੀ ਐ ਬਿਜਲੀ ਦਾ ਪੈਣੀ ਜਿਹੜਾ ਬੈਠਾ ਉਹ ਬਿਜਲੀ ਦੇ ਡੰਡਾ ਹੁੰਦੇ ਨੇ ਕੋਈ ਉਹ ਜਾਣਾ ਬੜਿਆ ਕਿਤੇ ਤੇ ਸ਼ੀਤਲ ਨਾ ਸੂਰਜ ਤੇ ਤਪਤ ਤੇਜ ਨਾਤਾ ਚੰਦਰਬਾਦੋਂ ਸੀਤਲੈ ਕੋਈ ਚੀਜ਼ ਨਾ ਸੂਰਜ ਤੋਂ ਕਰ ਮੈ ਕੋਈ ਚੀਜ਼ ਚੰਦਰਬਾਦ ਸੀਤਲ ਉਹ ਦਰ ਬਲਿਆ ਗਿਆ ਨਾ ਠੱਡਾ ਦੂਰੋਂ ਹੀ ਡੰਡਾ ਹੁੰਦੀ ਹੈ ਚੰਦਰਬਾਦ ਦੀ ਜਾਂ ਰਿਕਾਰਡ ਜੋ ਉਫੇ ਇੰਦਰ ਸੋ ਨਾ ਰਾਜਾ ਪਵ ਭੂਮ ਕੋ ਹੈ ਜਿਹੜੇ ਇੰਦਰ ਵਰਗਾ ਕਹਿੰਦੇ ਰਾਜਾ ਇੱਥੇ ਕੋਈ ਨਹੀਂ ਸਾਰੇ ਬੰਦੇ ਨੇ ਆਮ ਲੋਕ ਇਹੀ ਬੋਲਦੇ ਨੇ ਇੰਦਰ ਵਰਗਾ ਕੋਈ ਰਾਜਾ ਨਹੀਂ ਹੈ ਇਦਾਂ ਦੇਵਤਿਆਂ ਦਾ ਰਾਜਾ ਨਾ ਦੇਵਤੇ ਚੰਗਾ ਮੰਨਦੇ ਨੇ ਤਰੂੰ। ਔਰ ਰਾਖਸ਼ੀ ਨਹੀਂ ਮੰਨਦਾ ਚੰਗਾ। ਰਾਖਸ਼ਾਂ ਦੀ ਗੱਲ ਹੀ ਕੀ ਕਰੀ ਹੋਈ। ਤਰੂੰ ਦੇਵਤਿਆਂ ਦਾ ਹੁੰਦਾ। ਇਦਾਂ ਤੋਂ ਭੂਮ ਹੈ। ਭਵ ਭੂਮ ਕੋ ਭਰਤਾ ਨਾ। ਭਰ ਦਿੰਦਾ। ਭਰ ਕੇ ਰੱਖਦਾ ਲੋਕਾਂ ਵਾਸਤੇ। ਸ਼ਿਵ ਸੇ ਬਾਗ ਲੋਆ ਦੇਣੇ ਵੀ ਲੋਕ ਖਾਣਗੇ। ਸਮਝੇਂ? ਫਤਨਾ ਜ਼ਿਆਦਾ ਹੁੰ। ਲੋਕ ਉਹ ਖੇਨਾਵਰ ਨੇ ਫਿਰ ਇਲਾਜ ਕਰਨੇ ਲੋਕਾਂ ਦੇ ਬਿਮਾਰੀਆਂ ਦੇ ਵਿਵਰਣ ਘਟ ਆਪੇ ਭਰੀ ਜਾਣੀਆਂ ਪੂ ਬਹੁਤ ਦਾ ਜੇ ਜਦੋਂ ਬੱਚੇ ਦੀ ਛੋਟੀ ਉਮਰ ਜੇ ਮਰ ਜਾਂਦੇ ਨੇ ਜੇ ਉਹਨਾਂ ਦਾ ਇਲਾਜ ਦੇਖ ਹੋਵੇ ਤਾਂ ਪਰਜੂਗੀ ਭੂ ਜਿਹੜੇ ਚੰਗੇ ਰਾਜ ਪ੍ਰਬੰਧ ਹੁੰਦੇ ਨੇ ਇਦਾਂ ਦੀ ਇਹ ਗੱਲ शिव से तपस्वी आद ब्रह्मा से ना वेदचारी कने शिवर का तपस्वी कोई नहीं जेड़ा आद ब्रह्मा ओदे वर्गा वेदचारी कोई नहीं वेद मतलब वेदांदे व्याख्या करण वाला ਵਰਗਾ नहीं वेदचारी वेद वर्गा जाण ਗੱਲ ਸੰਤ कुमार सी तपस्या ना अनंत है जेड़ा संत कुमार है ओदे वर्गी तपस्या मुश्किल है करनी ਸਤਿਗੁਰ ਦੇ ਉੱਤੇ ਬ੍ਰਹਮਾ ਦਾ ਅਸਰ ਘੱਟ ਹੈ ਸ਼ਬਜੀ ਦਾ ਜ਼ਿਆਦਾ ਕੋਈ ਤਪੱਸਿਆ ਸ਼ਬਜੀ ਦੇ ਸੱਚਾਈ ਹੋਈ ਹੈ ਇਸ ਕਰਕੇ ਸੰਤ ਕਮਾਲ ਨੂੰ ਬਹੁਤੀ ਦਿੱਤੀ ਹਿਦਵਾਨੇ ਸਨਾਦਨ ਨੂੰ ਸਨਾਦਨ ਨੂੰ ਦਿੱਤੀ ਹੈ ਸਨਾਦਨ ਧਰਮ ਪਰਮਾਨਾ ਸਤਗੁਰ ਵਾਲਾ ਧਰਮ ਦੀ ਚੱਲਿਆ ਕਿਉਂ ਉਹਦੇ ਤੇ ਰੰਗ ਦੁਆ ਚੜਿਆ ਹੈ ਜੀ ਤਪੱਸਿਆ ਵਾਲਾ ਉਹ ਰਾਜ ਨੇ ਨੇ ਪਰਮਾਨਨ ਕੀਤਾ ਰਾਜ ਦਾ ਪਰਮਾਨਨ ਸਿਰਫ ਸ਼ਾਸਤਰਾਂ ਦੇ ਧਰਮ ਨੂੰ ਕਰਦਾ ਹੈ ਹੈ ਗਿਆਨ ਧਰਮ ਇਹ ਵੀ ਰਾਜਾ ਦਾ ਵੀ ਧਰਮ ਗਿਆਨ ਧਰਮ ਪਰ ਗਿਆਨ ਸਤਿ ਸਾਰੀ ਹੈ ਦੇਰਾਕਾਰੀ ਗਿਆਨ ਤੋਂ ਰਦੀ ਹੈ ਰਾਜੇ ਨੂੰ ਆਤਮ ਗਿਆਨ ਤੋਂ ਧਰਦੀ ਹੈ ਰਾਜੇ ਨੂੰ ਉਹ ਵੀ ਜਿਆਦਾ ਨਾਲ ਜਿਆਦਾ ਉਹਦੇ ਗੱਲ ਪੈਂਦਾ ਜਦੋਂ ਰਾਜੇ ਨੂੰ ਰਾਜਾ ਹੀ ਨਹੀਂ ਬੰਦਦਾ ਉਹਨਾਂ 'ਚ ਨਹੀਂ ਐਲਰਜੀ ਜਨਾਂ ਜਰ ਉੱਚੀਆਂ ਗੱਲਾਂ ਕਰਦਾ ਭਾਈ ਰਲ ਕੇ ਰਹੋ ਇਹ ਕਰੋ ਉਹ ਕਰੋ ਉਹਨਾਂ 'ਚ ਠੀਕ ਜਦੋਂ ਇਹ ਸਟੇਜ ਤੋਂ ਹਾਂ ਵੱਧਦਾ ਫਿਰ ਉਹਨੂੰ ਵੀ ਲੰਦੀ ਹੋ ਜਾਂਦੀ ਹੈ ਤਾਂ ਉਹ ਧਾਰੇ ਤਾਂ ਕਹਿੰਦੇ ਨੇ ਜਨਾਂ 'ਚ ਰਾਜੇ ਰੂਪ ਵਿੱਚ ਦਈ ਕੇ ਹੀ ਜਾਣ ਜੇ ਰਾਜੇ ਜਨ ਨੂੰ ਖਟੜਣ ਲੱਗ ਜਾਣਾ ਫਿਰ ਆ ਜਾ ਹੋ ਜਾਂਦਾ ਗਿਆਨ ਕੇ ਬਹੀਨ ਕਾਲ ਫਾਸ ਕੇ ਅਧੀਨ ਸਦਾ ਗਿਆਨ ਕੇ ਵਿਹਿੰਦੇ ਜਿਹੜੇ ਕਾਲ ਫਾਸ ਕੇ ਅਧਿਰ ਵੀ ਹੈ ਸਾਰੇ ਚਾਹੇ ਉਹ ਵਿਦ ਚਾਹੇ ਉਹ ਬ੍ਰਹਮਾ ਸਾਹਿਬ ਵਿਦਾਚਾਰੀ ਹੋਵੇ ਚਾਹੇ ਉਹ ਸ਼ਿਵ ਜੀ ਵਰਗਾ ਤਪਸਵੀ ਹੋਵੇ ਸਮਝਾ ਜੀ ਕੰਦਰਦਵ ਚਾਹੇ ਉਹ ਮਤਲਬ ਜਿਹੜਾ ਸੀਗਾ ਸਨਾਤਨ ਰਸਤ ਸਨਕਾ ਦੇ ਸਨਕ ਕੁਮਾਰ ਹੋਵੇ ਸਤ ਕਮ ਇਹ ਸਾਰੇ ਜਿਹੜੇ ਜੇ ਗਿਆਨ ਨਹੀਂ ਆ ਤੁਮ ਗਿਆਨ ਨਹੀਂ ਹੈ ਫਿਰ ਸਭ ਕੁਝ ਬੇਕਾਰ ਗਿਆਨ ਕੇ ਬਿਹਰ ਕਾਲ ਫਾਸ ਕੇ ਅਧੀਨ ਕਾਲ ਫਾਸ ਕੇ ਅਧੀਨ ਸਦਾ ਕਾਲ ਫਾਸ ਵਿੱਚ ਹੈ ਜਾਉਂਦੇ ਜਾਲ ਜੇ ਫਸਿਆ ਹੋਇਆ ਹੈ ਜਾਲ ਜੇ ਕਰ ਰਹੇ ਜੋ ਕੁਝ ਕਰ ਰਹੇ ਜਿਹੜਾ ਗਿਆਨ ਹੈ ਗਨ ਅਗਿਆਨਤਾ ਦੇ ਖਿਲਾਫ ਹੈ ਗਨ ਅਗਿਆਨਤਾ ਦੇ ਖਿਲਾਫ ਹੈ ਪਰਮ ਦੇ ਖਿਲਾਫ ਹੈ ਗੁਰਪ੍ਰਸਾਦ ਪਰਮ ਕਾਲ ਪਰਮ ਦਾ ਜਾਲ ਹੈ ਪਰਮ ਦਾ ਜਾਲ ਹੀ ਜੰਦਾ ਜਾਲ ਹੈ ਅਤਮ ਨੂੰ ਕੋਈ ਚੀਜ਼ ਨਹੀਂ ਘੇਰ ਸਕਦੀ ਬਗਾਨੇ ਰਹਤੇ ਚਾਨਣ ਨੂੰ ਕੋਈ ਜੀ ਨਹੀਂ ਡੱਕ ਸਕਦੀ ਦੇਦੇ ਰਹਤੇ ਨੇ ਰਾਈ ਗਿਆ ਜੱਲੂਰ ਕਿਹਦੇ ਨੇ ਮੇਰੇ ਦਾ ਚਰਨ ਦਾ ਮੁਕਾਬਲਾ ਲੋਸ਼ਿਦੀ ਤੇ ਉਹ ਟੀਜੀ ਕੀ ਹੈ 네ਰਾ ਸੂਰਜ ਗਾਇਬ ਹੋ ਜੂ ਤੇਰਾ ਜੂ ਸਾਜੂਗਾ ਸੂਰਜ ਜਰੂਰ ਮੇਰਾ ਇੱਕ ਨੂੰ ਵੱਡਾ ਵਿਰੋਧ ਇਹ ਦੋ ਦੇ ਕੇ ਜੁਕਣ ਕੀ ਚੌਕੜੀ ਫੜਾਈ ਫਿਰਤ ਹੈ ਜੁਗਨ ਦੀ ਚੌਕੜੀ ਇਹ ਚੌਕੜੀ ਹੈ ਜੋਗੀਆਂ ਦੀ ਜੁਗਨ ਦੀ ਯਾ ਹੀ ਰਹਦੇ ਨੇ ਜਾਰੇ ਯੁੱਗ ਦੇ ਜੈਵੀ ਜੈਨਾ ਦੀ ਚੌਕੜੀ ਵੀ ਜਲਦੀ ਰਹਿੰਦੀ ਹੈ ਚਾਰ ਪ੍ਰਕਾਰ ਦੇ ਦੱਸੇ ਨੇ ਉਹ ਜਿਪ ਜੀ ਹੋਇਆ ਵੈਜਾਚਾਰੀਆ ਹੋਇਆ ਤਪਸਵੀ ਹੋਇਆ ਸ਼ਿਵ ਦਾ ਹੋਰ ਤਰ੍ਹਾਂ ਦਾ ਤਪ ਇਹ ਜਾਰੇ ਯੁੱਗਾਂ ਦੇ ਵਿੱਚ ਘੁੰਮਦੇ ਹੀ ਰਹਿੰਦੇ ਰਹੇ ਜਈ ਕੁਝ ਰਿਲਦੇ ਚੱਲਦਾ ਹੀ ਰਹਿੰਦੇ ਇਹ ਜੁਗਨ ਕੀ ਚੌਕੜੀ ਹੈ ਜੋਗੀਾਂ ਦੀ ਜੋਣ ਵਾਲਿਆਂ ਦੀ ਚੌਕੜੀ ਹੈ ਜੁਗਨ ਹੋਣਾ ਹੈ ਪਰਮੇਸ਼ਰ ਦੀ ਖੋਜ ਕਰਨ ਦੇ ਜਿਹੜੇ ਜੁੜਨ ਦੀ ਇੱਛਾ ਰੱਖਦੇ ਨੇ ਉਹਨਾਂ ਦੀ ਜੋਗਰੀ ਜੁਗਾਂ ਦੀ ਜੋਗੜੀ ਨਹੀਂ ਹੁੰਦੀ ਹੈ ਜੁਗਚਾਰ ਹੈ ਦੀ ਜੇ ਹੈ ਤਾਂ ਇਹ ਜਿਹੜੀ ਤੀ ਆ ਗਿਆ ਇਦਾਂ ਨਹੀਂ ਹੁੰਦੇ ਹੁੰਦੇ ਸ਼ਿਵ ਭਾਏ ਗਏ ਇੱਕ ਫੇਰ ਭਾਏ ਇੱਕ ਸ਼ਿਵ ਭਾਏ ਇੱਕ ਤਾਂ ਕਹਿੰਦੇ ਸ਼ਿਵ ਜੰਮੇ ਆ ਚਲੋ ਸ਼ਿਵਜੀ ਦੀ ਉਪਾਧੀ ਮਿਲ ਗਈ ਭਗਤੀ ਕਰਦਾ ਰਿਹਾ ਕਰਦਾ ਰਿਹਾ ਕਹਿੰਦੇ ਮੈਂ ਹੁਣੇ ਸ਼ਿਵ ਹੋ ਗਿਆ ਸ਼ਿਵਜੀ ਦੀ 쿠ਸੀ ਤੇ ਬਹਿ ਗਿਆ ਪਰ ਬੈਠੇਗਾ ਤੇ ਜਦ ਇੱਕ ਵਰ ਗਿਆ ਪਹਿਲਾਂ ਇੱਕ ਸ਼ਿਵ ਭਏ ਇੱਕ ਗਏ ਇੱਕ ਗਏ ਉਹ ਜਾਊਗਾ ਤਾਂ ਹੀ ਦੂਰ ਸ਼ਿਵਜੀ ਦੀ ਮਿਲੂਗੀ ਤਲਕਾ ਇੱਕ ਫੇਰ ਭਏ ਇਹ ਵਾਰਿਆ ਫੇਰ ਦੂਆ ਫੇਰ ਪਿਆ ਇਥੇ ਜਲਦਾ ਹੀ ਰਹੂਗਾ ਜਿਹੜੀ ਕੁਰਸੀ ਖਾਲੀ ਉਹ ਤਾਂ ਇਹ ਰੂਹ ਬੈਠੂਗਾ ਉਹਨੇ ਹਰੂਣ ਸੇ ਬਣਾਉਂਦੇ ਨੇ ਫਿਰ ਨਵੀਂ ਹਰੂਣ ਤੂਸ਼ੇ ਬਿਬਸੇ ਜਹੇਦਾਰ ਬਣਾਉਂਦੇ ਨੇ ਉਹ ਮਰੇ ਤੇ ਬਣਾਉਂਦੇ ਸੇ ਕੁਰਸੀ ਛੱਡੀ ਬਾਅਦ ਚ ਸੰਤਾ ਦੇ ਮਰੇ ਤੇ ਬਾਅਦ ਉਹਨੂੰ ਦਿੰਦੇ ਨੇ ਇਥੇ ਜਹੇਦਾਰ ਜੁੰਦਾ ਹੀ ਬਣਾਉਂਦੇ ਨੇ ਇਹ ਤਾਂ ਚਲ ਉਹੀ ਆ ਇਹ ਕਿਹੜਾ ਲਾਹੋ ਬਈ ਟਿੱਕੇ ਹੋਈ ਨਹੀਂ ਤਾਂ ਉਹ ਗੱਲ ਹੋਰ ਸੀ ਇਹ ਤਾਂ ਹੋਰ ਆ ਤੇ ਜਿਹਨੂੰ ਮਰਜ਼ੀ ਬਣਾਉਂਦਾ ਉਹਦਾ ਕੀ ਆ ਉਹਦਾ ਕੁਝ ਪਰਖੇ ਹੁੰਦੇ ਉਹ ਪਰਖ ਕੇ ਬਣਾਉਂਦੇ ਸੀ ਇੱਥੇ ਬਿਨਾ ਪਰਖ ਤੇ ਚੱਲਦਾ ਖਾਂ ਕਿਦਾਂ ਜਿਹੜਾ ਉਹਨੂੰ ਚੱਲਦਾ ਵੀ ਸਾਡੇ ਹੱਥ 'ਚ ਰਹੂਗਾ ਵੀ ਚਿੱਠੀ ਅਸੀਂ ਫਿਰ ਲਿਖਤਾ ਸੀ ਦੇਣਾ ਫਰਵਾਨ ਸਾਈਂ ਇਹਨਾਂ ਦੇ ਕਰਾ ਲੈਣੇ ਇਹ ਬੋਲਣਾ ਅਸੀਂ ਆ ਲਿਖਣਾ ਇਹਨਾਂ ਦੇ ਨਾ ਇਹਨਾਂ ਦਾ ਬਜਣਾ ਹੈ ਪਰ ਇਹਾਂ ਨੀ ਕੋਈ ਨਹੀਂ ਲਿਖਣ ਜੈ ਤਾਂ ਇਹ ਜੈ ਨਾਲ ਨਹੀਂ ਲੱਗਿਆ रामचंद्र कृष्ण ਕੇ अवतार ਵੀ ਅਨੇਕ ਹਨ ਇੱਕ ਸ਼ਿਵ ਭਏ ਇੱਕ ਗਾਇਕ ਫੇਰ ਭਏ रामचंद्र कृष्ण के अवतार भी अनेक रामचंद्र कृष्ण भी ਵੀ ਕਰੀ रामचंद्र ਉਹਨਾਂ ਵਾਲਾ ਫਿਰ ਖਾਸ ਜਿਹੜਾ ਰਾਮਚੰਦਰ ਹੈ ਇਹ ਕ੍ਰਿਸ਼ਨ ਉਹ ਤਾਂ ਕਦਮ ਹੋ ਗਿਆ ਜਿਹੜੇ ਕ੍ਰਿਸ਼ਨ ਅਵਤਾਰ ਰਾਮਚੰਦਰ ਅਵਤਾਰ ਇਹਨਾਂ ਦੇ ਲਿਖੇ ਨੇ ਉਹ ਕੁਝ ਹੋਰ ਗੱਲ ਹੈ ਇਹ ਤਾਂ ਸਾਨੂੰ ਸੁਖੇ ਦੰਦੀਆਂ ਗੱਲ ਵੀ ਉਹ ਸਮਝਣ ਦੀ ਲੋੜ ਹੈ ਕੀ ਕਹਿ ਰਹੇ ਜੁੱਤੇ ਉਹਨਾਂ ਵਾਲੇ ਤਾਂ ਖੜਨਾ ਹੋ ਰਿਹਾ ਸਭ ਕੁਝ ਜਿਹੜਾ ਨਵਾਂ ਦੱਸਿਆ ਰਾਮ ਉਹ ਕੀ ਹੈ ਰਾਮ ਜੀ ਸਿਰਫ ਜਿਹੜਾ ਨਾ ਕਦੇ ਜਬਦਾ ਨਾ ਵਰਦਾ ਜਬਦਾ ਮਰਦਾ ਕ੍ਰਿਸ਼ਨ ਵੀ ਨਹੀਂ ਹੈ ਜਬਦਾ ਮਰਦਾ ਵੀ ਹੈ ਇਹ ਵੀ ਇਹ ਵੀ ਜਦ ਰਾਮ ਨੂੰ ਕਲਮ ਕਲਗ ਜਾਂਦਾ ਨਾ ਉਹਨਾਂ ਸਾਰਾ ਆਮ ਦਾ ਜਿਹਨਾਂ ਕਲਮ ਕੇ ਜਾਂਦਾ ਉਹਨੂੰ ਕ੍ਰਿਸ਼ਨ ਕਹਿੰਦੇ ਜਬ ਕਿਸੇ ਆਦਮੀ ਦੇ ਸਰੀਰ ਤੇ ਤਿਲ ਹੋਵੇ ਕੋਈ ਲਸਣ ਹੁੰਦਾ ਲਸਣ ਹੁੰਦਾ ਨਾ ਉਹਨਾਂ ਹੀ ਸੋ ਕਾਲਾ ਹੋਇਆ ਨਾ ਉਹ ਲੈ ਇਲਾਜ ਕਰਨਾ ਜਿਹਦੇ ਤੁਲਦੇ ਉਤੇ ਲਸਣ ਦੇ ਮੱਕੀ ਤਾਂ ਠੀਕ ਹੈ RAM اور KRISHNA ਦੋ ਰੀਕ ਕੋਈ ਹੈ ਤਾਂ ਹੀ ਮਿਸ਼ਰੂਨ અવਤਾਰ ਮੰਦਰ ਤੋਂ ਕੋਈ ਹੈ ਗੁਰਬਾਣੀ ਦੇ ਵਿੱਚ ਜਿਹੜੇ ਇੱਕ ਦੀ ਗੱਲ ਕੀਤੀ ਹੋਈ ਹੈ ਨਾ ਜਿੰਨਾ ਜਿੱਦ ਤਾਂ ਇੱਕ ਉਹਨਾਂ ਜਿੱਦ ਤਾਂ ਅਜੂਦੀ ਹੈ ਜਾਦੇ ਦਾਲ ਹੈ ਕ੍ਰਿਸ਼ਨ ਵੀ ਆਰਾਮ ਵੀ ਇਹੀ ਹੈ ਆਰਾਮ ਵੀ ਹੈ ਇਹ ਕ੍ਰਿਸ਼ਨ ਵੀ ਇਹੀ ਹੈ ਮਨ ਕਰਕੇ ਕ੍ਰਿਸ਼ਨ ਹੈ ਜਿਤ ਕਰਕੇ ਆਰਾਮ ਉਹ ਯਾਦ ਕਿਹਾ ਸੀ ਨਾ ਦਰਿਆਵੇ ਦਰਿਆਵੇ ਕੰਨੇ ਬਗਲਾ ਬਗਲਾ ਕੌਣ ਸੀ ਬਗਲਾ ਮਨ ਸੀ ਕਾਲਾ ਸੀ ਕ੍ਰਿਸ਼ਨ ਸੀ ਬੈਠਾ ਗੇਲ ਕਰੇ ਵਾਜ ਲੱਗਿਆ ਸੀ ਨਾ ਖੇਲ ਕਰ ਲੂ। ਖੇਲ ਕਰਨ ਦੇ ਹਜਰੂ। ਚਿੱਤੇ ਬਾਜ ਪਏ ਹੰਜ ਤਾਂ ਫਿਰ ਕ੍ਰਿਸ਼ਨ ਨੇ ਲਿਆ ਨਾ ਫਿਰ। ਉਹ ਤਾਂ ਬਗਲਾ ਕਾਲਾ ਸੀ। ਅਸਲ 'ਚ ਬਗਲਾ ਹੰਜ ਕੋਈ ਆ। ਖੇਲ ਕਰਨ ਦੇ ਹੰਜ ਨੂੰ ਚਿੱਤੇ ਬਾਜ ਪਏ। ਹੱਗ ਪਈਏ ਹਜਰੂ। ਖੇਲਾ ਕਰਦਾ ਬਗਲਾ। ਖੇਲਾ ਕਰਦਾ ਸੀ ਬਗਲਾ ਤੇ ਕੀ ਹੋਇਆ ਦੋਖ ਮੇ ਹੋਇ। ਇਹ ਗੱਲ ਸੀ ਵਿਚਾਰਨ ਵਾਲੀ ਪਰ ਵਿਚਾਰ ਦਾ ਕੌਣ ਬਿਜ ਬਣਾ ਕੋ ਤਾਂ ਬੁੱਧੀ ਹੀ ਨਹੀਂ ਹੁੰਦੀ ਵਿਚਾਰਨ ਵਾਲੀ ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹਾਂ ਜਿਹਨੂੰ ਆਵਾਜ਼ ਕਵੇ ਪੈ ਗਏ ਉੱਥੇ ਤਾਂ ਬਗਲਾ ਸੀ ਇਹ ਗੱਲ ਕੀ ਹੈ ਬੁੱਝਣ ਵਾਲੀ ਗੱਲ ਸੀ ਬਹੁਤ ਤਕੜੀ ਇਹ ਨਾਦੇ ਹੁੰਦੇ ਦੀ ਗੋਤੀ ਬਾਹਰ ਗਿਥਰੇ ਅੰਧਾਰੇ ਸਿਆ ਜਾਏ ਅੰਨੇ ਨਿਕਲੇ ਜਾਂਦੇ ਸੀ ਇਹਨੇ ਵਿਦਵਾਨ ਸਾਰੇ ਇਹਦੇ ਨਿਕਲ ਕੇ ਕੌਣ ਦੀ ਕੋਈ ਪਤਾ ਹੀ ਨਹੀਂ ਕੀ ਲਿਖਿਆ ਹੈ ਜੋਤ ਮਨਾ ਜਗਦੀਸ਼ ਕੀ ਜਗਤੋ ਲਗੇ ਜਾਏ ਕਿਉਂਕਿ ਜਗਦੀਸ਼ ਵਾਲੀ ਜੋਤ ਨਹੀਂ ਤਾਂ ਬੇਬੇਖ ਬੁੱਧੀ ਨਹੀਂ ਕੋਲ ਹੈ ਕੋਲ ਦੀ ਨੰਗੇ ਕੋਈ ਗੱਲ ਕੀ ਹੈ ਬਗਲਾ ਕਿੱਥੋਂ ਆ ਗਿਆ ਬਗਲ ਦੀ ਗਾਂਜ ਕਿਵੇਂ ਆ ਗਿਆ ਆਵਾਜ਼ ਹਾਂਜ ਨੂੰ ਪੈਂਦਾ ਸੀ ਬਗਲਾ ਕੀ ਬਗਲਾ ਇਹ ਹਾਂਜ ਬਣ ਗਿਆ ਇਹ ਕੋਈ ਆਰਾਮ ਗ੍ਰਿਸ਼ਨ ਦੌੜ ਨਹੀਂ ਸੁਣਦਾ ਦੋ ਹੋਏ ਹੋਏ ਨੇ। ਇਸ ਕਰਕੇ राम ਬੋਲ ਕੇ ਅਵਤਾਰ ਵੀ ਅਨੇਕ ਹੈ। ਸਾਰੇ राम-ਕ੍ਰਿਸ਼ਨ ਹਨ। ਮਾਨਾਰ ਤੇ ਜਿਨ੍ਹਾਂ ਨੇ ਖੋਲਣਾ ਸਭ राम-ਕ੍ਰਿਸ਼ਨ ਸਾਰੀਆਂ ਜੁਗਾਂ ਦੇ। ਕੁਰਬਾਨੀ ਵਾਲੇ ਰਾਮ-ਕ੍ਰਿਸ਼ਨ। ਕੁਰਬਾਨੀ ਰਾਮ-ਕ੍ਰਿਸ਼ਨ ਦੀ ਇਕੱਠੀ ਭਗਤੀ ਹੈ। ਜਦ ਤਨ ਵਿੱਚੋਂ ਮਨ ਖੋਜਣਾ। ਜਿੰਨਾ ਜਦ ਤਨ ਵਿੱਚੋਂ ਮਨ ਖੋਜਣਾ ਹੈ ਕ੍ਰਿਸ਼ਨ ਭਗਤੀ ਹੈ ਮਨ ਕਾਲਾ ਮੱਛ ਭਰਮਾ ਬਰਜ ਚੰਚਲ ਬਰਜ ਚੌਗੜਨਾ ਇਹ ਜੇ ਕ੍ਰਿਸ਼ਨ ਜਿ ਦਿਖਾਇਓ ਨੇ ਉਹ ਗਣ ਤਾਹੀਂ ਦਿਖਾਈ ਹੋਈ ਕਾਲਾ ਵੀ ਹੈ ਕਾਲਾ ਵੀ ਖਾਇਆ ਆਇਆ ਉਹ ਚੌਗੜਨ ਵਿੱਚ ਦਿਖਾਇਆ ਨੇ ਸ਼ਰਾਰਤੀ ਵੀ ਹੈ ਚੰਚਲ ਵੀ ਹੈ ਉਹ ਸਾਰੀਆਂ ਗੱਲਾਂ ਤਾਹੀਂ ਦਿਖਾਈ ਹੋਈ ਨੇ ਉਹ ਚ ਉਹ ਬਰਮ ਗਿਆਨ ਉਹ ਬਰਮ ਗਿਆਨ ਸੀ 부ਝਣ ਦੀ ਗੱਲ تھی ਹੁਣ ਸੱਤਾ ਨੂੰ ਪਤਾ ਹੈਗਾ ਨਹੀਂ ਇਹਨਾਂ ਨੂੰ ਉਹ ਵਿਚਾਰੇ ਹੋਰੇ ਪਾਸੇ ਉੜ ਹੋਏ ਤੇ ਉਹ ਤਾਂ ਬਰਮ ਗਿਆਨ ਸੀ ਸਾਰਾ ਅਰਥ ਨਹੀਂ ਕਰਨੇ ਆਏ ਉਹਨਾਂ ਨੂੰ ਅਰਥਾਂ ਦੇ ਅਨਾਰਥ ਕਰੀ ਬੈਠੇ ਨੇ ਕ੍ਰਿਸ਼ਨ ਖੁਦ ਕਹਿ ਰਿਹਾ ਗੋਪੀਆਂ ਨੂੰ ਵੀ ਜੇ ਉਹ ਮੈਂ ਤੁਹਾਨੂੰ ਦਿਖ ਰਿਹਾ ਹੋਵੇ ਨਹੀਂ ਜੋ ਮੈਂ ਆ ਤੁਹਾਨੂੰ ਦਿਖਦਾ ਨਹੀਂ ਫਿਰ ਪੂਜਾ ਕੀ ਦੀ ਕਰਦਾ ਯੋਗ ਗੋਪਿਆਂ ਨੂੰ ਦੀਦਾ ਸੀ ਉਹ ਮੂਰਤੀ ਦੀ ਉਹ ਕਹਿ ਰਿਹਾ ਮੈਂ ਹੋਣੀ ਹੈ ਜਿਹੜਾ ਰੁੱਦੀ ਨਾ ਅਰੇ ਮੰਨਦੇ ਵੀ ਨੇ ਉਸ ਗੱਲ ਨੂੰ ਵੀ ਕਿਹਨੇ ਸੱਦੇ ਕਹਿਦਾ ਤੁਸੀਂ ਜਿਹੜਾ ਨਹੀਂ ਹੈ ਉਹਦੀ ਪੂਜਾ ਕਰ ਰਹੇ ਹੋ ਉਹਦਾ ਕਹਿੰਦਾ ਜੇ ਤੁਹਾਨੂੰ ਮੈਂ ਦੀਨਾ ਹੈ ਦੀਦੀਆ ਬੋਲਤੀ ਬਸ ਐ ਤੋ ਖੁਜੀ ਗਏ ਜੇ ਇਤੋਂ ਇਤੋਂ ਗੁਰਬਾਣੀ ਨੇ ਸਾਨੂੰ ਇਤੋਂ ਖਜਣ ਤੋਂ ਹਟਾ ਲਿਆ ਵੀ ਇੱਧਰ ਆਜੋ ਪੂਰਤੀ ਵਾਲਾ ਨਾ ਜਾਓ ਆਤਮਾ ਵਾਲ ਦੇਖੋ ਕ੍ਰੇਲ ਘਾਇ ਰਿਆ ਜੋ ਮੇਰੇ ਸ਼ਰੀਰ ਚ ਮਾਨਾ ਉਹਨੂੰ ਖੋਜੋ ਉਹਨੂੰ ਦੇਖੋ ਤੂੰ ਆਪਣੇ ਸ਼ਰੀਰ ਚ ਮਾਨ ਨੂੰ ਦੇਖੋ ਆਤਮਾ ਦੇਖੀ ਦੇਖੋ ਜੋਤ ਨਾ ਪੁੱਛੋ ਜਾਣੋ ਜੋਤ ਨਾ ਪੁੱਛੋ ਜਤੀ ਇੱਥੇ ਰੁਕਿਆ ਸੀ ਇਹ ਕਹਿ ਕੇ ਉਹ ਕੋਈ ਵਖਰੀ ਮਤ ਨਹੀਂ ਇਹ ਜਿੱਥੋਂ ਸਲਿੱਪ ਹੋ ਗਏ ਸੀ ਨਾ ਇੱਥੋਂ ਤਰਕ ਕੇ ਤੂੰ ਖੜ ਚ ਜਾ ਡਿਗਰੇ ਸੀ ਡਿਗਰੀ ਚ ਫਿਰ ਤੂੰ ਉੱਟੇ ਗਿਆਆਂ ਦਾ ਨਾ ਹਿੱਦੂ ਆ ਜਿਹੜੇ ਬਚ ਗਏ ਹੋ ਸਿੱਖ ਨੇ ਜਿਹੜਾ ਇੱਥੋਂ ਸਲੇਪ ਹੋਣ ਦੇ ਬਚ ਗਿਆ ਮਲਤੀ ਪੂਜਕ ਨਹੀਂ ਰਹੂਗਾ ਉਹ ਸਿੱਖਾ ਬਸ ਬੱਤੇ ਕੋਈ ਇਹ ਮਤਾਦੋ ਨਹੀਂ ਹೇಳੋ ਦੋਨਾਂ ਮੂਰਤੀ ਦੇ ਆਪਣੇ ਯੋਜ ਜੋ ਜਿਹੜੇ ਮੂਰਤੀ ਪੂਜਾ ਲੈ ਉਹ ਵੀ ਮੂਰਖ ਨੇ ਜਿਹੜੇ ਧੂਏ ਨੇ ਵਿਰੋਧ ਕਰਨ ਵਾਲੇ ਉਹ ਵੀ ਮੂਰਖ ਨੇ ਵਿਰੋਧ ਕਰਨ ਵਾਲੇ ਨਹੀਂ ਸਮਝਾਈਦਾ ਹੁੰਦਾ ਵਿਰੋਧ ਕਰਨ ਦਾ ਕੀ ਫਾਇਦਾ ਉਹਨਾਂ ਦਾ ਸਭੀ ਮੂਰਤੀ ਪੂਜਾ ਜਾਂ ਕ੍ਰਿਸ਼ਨ ਖੁਦ ਕਹਿੰਦਾ ਵੀ ਜੋ ਮੈਂ ਦੀਨ ਉਹ ਹੈ ਨਹੀਂ ਫਿਰ ਕਮਰੇ ਉਹ ਤੁਸੀਂ ਇਦੀ ਪੂਜਾ ਕਰਦੇ ਹੋ ਪਾਗਲ ਹੋ ਤੁਸੀਂ ਤਾਂ ਤੁਸੀਂ ਉਹਦੀ ਗੱਲ ਤਾਂ ਬੋਲਦੇ ਨਹੀਂ ਫਿਰ ਕ੍ਰਿਸ਼ਨ ਕਹਿੰਦਾ ਵੀ ਆਤਮਾ ਵਰਦੀ ਨਹੀਂ ਅਵਰ ਫਿਰ ਤੁਸੀਂ ਕਹਿੰਦੇ ਆਤਮਾਤਿਆ ਹੋ ਜਾਂਦੀ ਹੈ ਫਿਰ ਤੁਸੀਂ ਕ੍ਰਿਸ਼ਨ ਦੀ ਗੱਲ ਨਹੀਂ ਬੋਲਦੇ ਫਿਰ ਪਟੂਪਾਪ ਕਹਦਾ ਨੇ ਕਿ ਆਤਮਾਤਿਆ ਹੋ ਜਾਂਦੀ ਹੁੰਦੀ ਉਹ ਆਤਮਾ ਵਰਦੀ ਦੀ ਤੁਸੀਂ ਕਹਿੰਦੇ ਆਤਮਾਤਿਆ ਹੁੰਦੀ ਹੈ ਇਹ ਤੋ ਹਿੰਦੂ ਵੱਤ ਬਣ ਜਾਂਦਾ ਜੇ ਕ੍ਰਿਸ਼ਨ ਦੀ ਗੱਲ ਲਾਵਣ ਨਹੀਂ ਹੈ ਤਾਂ ਹਿੰਦੂ ਆ ਜੇ ਕ੍ਰਿਸ਼ਨ ਦੀ ਮੰਨ ਲਈਏ ਤਾਂ ਸਿੱਖਾਂ ਇਹ ਦੋ ਗੱਲਾਂ ਨੇ ਕ੍ਰਿਸ਼ਨ ਦੀਆਂ ਜੇ ਮੰਨ ਲਈਏ ਤਾਂ ਸਿੱਖਾਂ ਨਾਵਣੀਆਂ ਤਾਂ ਹਿੰਦੂ ਅਸੀਂ ਮੰਨ ਕੇ ਇੱਕ ਪਾਸੇ ਰੋਗੇ ਆਤਮਾ ਵਾਲੇ ਪਾਸੇ ਆਗੇ ਉਹ ਜੋ ਆਏ ਨਹੀਂ ਆ ਜਾਣਗੇ ਉਹ ਵੀ ਕੋਈ ਨਹੀਂ ਸਮਝ ਜਾਣਗੇ ਆ ਜਾਣਗੇ ਹਾਲੇ ਮੈਨੂੰ ਸਮਝ ਨਹੀਂ ਆਈ ਗੱਲ ਹਾਲੇ ਬਰੋਦਰ ਸਮਝ ਆਇਆ ਹੈ ਬ੍ਰਹਮਾ ਅਰਿਸ਼ਣ ਕੇਤੇ 베ਦ ঔਪਰਾਨ ਕੇਤੇ ਬ੍ਰਹਮਾ ਔਰ ਵਿਸ਼ਨ ਕੇਤੇ ਇਸੇ ਕਰਕੇ ਕਹੇ ਕਿ ਸ਼ਿਵ ਗਾਇ ਇੱਕ ਭਾਏ ਰਾਮ ਔਰ ਕਿਸ਼ਕ ਦੇ ਉਤਾਰ ਵੀ ਰਹਿ ਸਾਰੇ ਸਾਰੇ ਸ਼ਿਵ ਦਾ ਉਤਾਰ ਹਾਂ ਸਮਝਿਆ ਨਹੀਂ ਸਾਰੇ ਕ੍ਰਿਸ਼ਨ ਦਾ ਉਤਾਰ ਹਾਂ ਸਾਰੇ ਰਾਮ ਦਾ ਉਤਾਰ ਹਾਂ ਆਪਣੇ ਆਪ ਨੂੰ ਪਛਾਣਨਾ ਮੰਨ ਤੂੰ ਜੋ ਆਪਣਾ ਮੂਲ ਪਛਾਣ ਆਤਮ ਗਿਆਨ ਹੈ ਕ੍ਰਿਸ਼ਨ ਦੇ ਵਿੱਚ ਰਾਮ ਬਨਵੇਂ ਆ ਆਵੇ ਹੋ ਰਾਮ ਆ ਆਵੇ ਬੰਦੇ ਵਿੱਚ ਪਹਿਲਾਂ ਕ੍ਰਿਸ਼ਨ ਨੂੰ ਲੱਭ ਲੋ ਸਰੀਰ ਚੋਂ ਫੇਰ ਰਾਮ ਨੂੰ ਲੱਭ ਲੋ ਉਹਦੇ ਵਿੱਚ ਐਦਾਂ ਬਿਲ ਜਾਣ ਕੇ ਦੋ ਜਾਣਗੇ ਪਹਿਲਾਂ ਕ੍ਰਿਸ਼ਨ ਨੂੰ ਲੱਭ ਲੋ ਸਰੀਰ ਚੋਂ ਫੇਰ ਮਨ ਵਿੱਚੋਂ ਆ ਰਾਮ ਲੱਭੀਊਗਾ ਦੋ ਹੀ ਬਿਲ ਜਾਣਗੇ ਜਾਤਮਾ ਜੋਤ ਸਰੀਰ ਵਿੱਚ ਜੋਤ ਹੈ ਜੋਤ ਕੌਣ ਹੈ ਕ੍ਰਿਸ਼ਨ ਬੰਤੂ ਜੋਤ ਸਰੂਪ ਹੈ ਜੋਤਮਾ ਜਾਤਾ ਕਹਿੰਦਾ ਜੇ ਆ ਰਾਮ ਨੂੰ ਜਾਣਾ ਜੋਤ ਵਿੱਚ ਸੀ ਉਹ ਕ੍ਰਿਜਿਤ ਦੇ ਵਿੱਚ ਸੀ ਕ੍ਰਿਸ਼ਨ ਦੇ ਵਿੱਚ ਰਾਮ ਹੁੰਦਾ ਹੈ ਕੋਈ ਨਾ ਦੋਏ ਦੋ ਨਹੀਂ ਹੜ ਬ੍ਰਹਮਾ আর ਵਿਸ਼ਨ ਕੇਤੇ ਬੇਦੋ ਪ੍ਰਾਨ ਕੇਤੇ ਬ੍ਰਹਮਾ ਵਿਸ਼ਨ ਕੇਤੇ ਬ੍ਰਹਮਾ ਵਿਸ਼ਨ ਵੀ ਕਿੰਨੇ ਹੀ ਕਰੀਏ ਬਰਮਾ ਬਿਛੇ ਨਿ ਸਰੇਤਾ ਅਗਣਤ ਆਣਗੜ ਤੇ ਬਣਾਏ ਨੇ ਤਿੰਨ ਕੋ ਮੋਹ ਪਿਆਉਣ ਨੂੰ ਮਤ ਕਹ ਇਹ ਤਾਂ ਬਣੀ ਗਰੀ ਬਾਣੀ ਨਾ ਕਾਰ ਨਹੀਂ ਕਰ ਰਹੀ ਕੁਛ ਵੀ ਬਾਣੀ ਜਿਹੜੀ ਗਲਤੀ ਹੋ ਗਈ ਉਹਨੂੰ ਸੁਧਾਰ ਰਹੀ ਹੈ ਜਿੱਤੋਂ ਸਲਿੱਪ ਹੋ ਕੇ ਡੇਗੇ ਨਾ ਤਲਕੇ ਪੈਰ ਘਾਂਟੀ ਤੇ ਜਾਂਦੇ ਜਾਂਦੇ ਪੈ ਤਲਕੇ ਖਾੜੇ ਜਾ ਡੇ ਹੁਣ ਖਾੜਜੋ ਨਿਕੜਦੇ ਨਹੀਂ ਕਹਿੰਦੇ ਵੀ ਮਕਾਨ ਵਧੀਆ ਮਿਲ ਗਿਆ ਇਦੜੇ ਭੈਟੋ ਵਿੱਚ ਕਹਿੰਦਾ ਯਾਰਾਂ ਨੂੰ ਬੁਕਾਨ ਦੇ ਇਹ ਕਹਿੰਦਾ ਇਹ ਮਤ ਵਧੀਆ ਇੱਥੇ ਖਾਣ ਵੀਰ ਨੂੰ ਬਹੁਤ ਹੈ ਇਹ ਮਤ ਤਾਂ ਨਹੀਂ ਛੱਡਦੇ ਉਹਦੇ ਸੁਖ ਬੜਾ ਚੜਾਵਾ ਬੜਾ ਚੜਦਾ ਕਰਨ ਨੂੰ ਖਾਣ ਨੂੰ ਤਾਂ ਬੰਦਾ ਬੋਲਣ ਨੂੰ ਫੁੱਲ ਸਾੜਿਆ ਬੂਹ ਉਹ ਦਾ ਚੜਾਵਾ ਖਾਣਾ ਉਹਨਾਂ ਨੂੰ ਹੀ ਝਟਕਣ ਵਨਾਂ ਨੂੰ ਡਰਣਾ ਉਹਨਾਂ ਦੇ ਹਕੂਦ ਕਰਨੀ ਇਹਨੂੰ ਕਹਿੰਦੇ ਚੰਗਾ ਖਾਣਾ ਤੇ ਸੱਚ ਬਣਾ ਸਭ ਬੰਦਾ ਸੱਚ ਬਣਾ ਜੋ ਬੋਲਣਾ ਸਿਮਰਤੀ ਸਮੂਹਣ ਹੋਏ ਹੋਏ ਬਤਾਏ ਹਨ ਸਿਮਰਤੀ ਸਮੂਹਣ ਕਾ ਹੋਏ ਹੋਏ ਬਤਾਏ ਹਨ ਪਤਾ ਤੇ ਸਮਰਤੀਆਂ ਲਿਖ ਲਿਖ ਕੇ ਲੋਕ ਚਲੇ ਗਏ ਯਾਦ ਰੱਖ ਰੱਖ ਕੇ ਚਲੇ ਗਏ ਹੋਈ ਜਾਂਦੇ ਨੇ ਬੀਤੀ ਜਾਂਦੇ ਨੇ ਹੋਈ ਬੀਤੀ ਜਾਂਦੇ ਨੇ ਚਾਰ ਚਾਰ ਯਾਦ ਰੱਖ ਕੇ ਸਿਮਰਤੀਆਂ ਨੂੰ ਯਾਦ ਰੱਖ ਕੇ ਬਥੇਰੇ ਆਏ ਬਥੇਰੇ ਚਲੇ ਗਏ ਹੋਏ ਹੋਏ ਬਤਾਏ ਹਨ ਦੀ ਮਦਾਰ ਕੇਤੇ ਅਸਨੀ ਕੁਮਾਰ ਕੇਤੇ ਮੋਹ ਨਹੀਂ ਮੋਣ ਦੀ ਲਿਖਿਆ ਅੱਛਾ ਮੋਣ ਦੀ ਮਦਾਰ ਕੇਤੇ ਅਸਨੀ ਕੁਮਾਰ ਕੇਤੇ ਬੋਖਲੀ ਉਕਤ ਚਲੋ ਬੋਲਦੀ ਮਦਾਰ ਕਹਤੇ ਬੋਹੜੀ ਉਹ ਹੈਗਾ ਸ਼ਾਇਦ ਬਿਸਪ੍ਰਿੰਟ ਦੀ ਮੋਨ ਦੀ ਮੋਨੀ ਨਾ ਹੋਵੇ ਬੋੜੀ ਲਗੇ ਹਾ ਬੋੜੀ ਮੋਨ ਦੀ ਬੋਰੀ ਤਨ ਬੋਹੜ ਤਾਲ ਕਰਨ ਵਾਲੇ ਮਦਾਰ ਕਹਤੇ ਮਦਾਰ ਕਹਤੇ ਅਸ਼ਨੀ ਕੁਮਾਰ ਕਹਤੇ ਅਸ਼ੋਨੀ ਕੁਮਾਰ ਕਹਤੇ ਕਿੰਨਾ ਅਸ਼ੋਨੀ ਕੁਮਾਰ ਹੋਏ ਅਨਸਾ ਅਵਤਾਰ ਕਿਤੇ ਕਾਲ ਵਸ ਪਾਏ ਹਨ ਅਨਸਾ ਅਵਤਾਰ ਕਿ ਤੇ ਅਨਸਾ ਅਵਤਾਰ ਕਹਿੰਦੇ ਜਿਹੜਾ ਆਦਮੀ ਅਨਸਾ ਅਵਤਾਰ ਹੁੰਦਾ ਰਾਮਕੀਰ ਸਨ ਨਾ ਕਹੋ ਖबीर ਤੂੰ ਰਾਮਕੀਰ ਆਦਮੀ ਅਨਸਾ ਉਤਾਰ ਆਪਣੇ ਆਪ ਨੂੰ ਮੰਨ ਕੇ ਪੁੱਤਰੀ ਬਲਦੀ ਕਾਰ ਹੋ ਜਾਂਦੇ ਤੇ ਬੜਾ ਤਾਂ ਤੂੰ ਦਾ ਅਨਸਾ ਅਵਤਾਰ ਹੈ ਫਿਰ ਬੜਾ ਕੌਣ ਬੂੜ ਕੀ ਹੈ ਟਾਣੀ ਹੈ ਟਾਣੀ ਦਾ ਬੂੜ ਤਾਂ ਕੁਛ ਹੈ ਤੂੰ ਆਪਣੇ ਆਪ ਨੂੰ ਬੜਾ ਜਨੂਨ ਲਾ ਕੇ ਅਵਤਾਰ ਮੰਨ ਲਿਆ ਨਾ ਆਪਣੇ ਆਪ ਨੂੰ ਅਵਤਾਰ ਕੀਤੇ ਕਾਲ ਵਾਸ ਭਏ ਹੈ ਉਹ ਕਾਲ ਵਾਸ ਭਏ ਹੈ ਕਾਲ ਵਾਸ ਦੇ ਸਾਰੇ ਕਾਲ ਵਾਸ ਨੇ ਜੇ ਕੋਈ ਆਪਣੇ ਆਪ ਨੂੰ ਅਵਤਾਰ ਵੀ ਨਾ ਵੱਡਾ ਸਮਝਦਾ ਜੇ ਕੋਈ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ ਕੀੜਾ ਆਵੇ ਜਿੱਤੇ ਜੁਗਧਣ ਪੀਰ ਉਹ ਪਕੰਬਰ ਕੇਤੇ ਗਾਣੇ ਨਾ ਪਰਤ ਇਤੇ ਰ ਪਕੰਬਰ ਵਥੇ ਹੋਏ ਨੇ ਮੁਸਲਮਾਨਾਂ ਦੇ ਵਿੱਚ ਕਿੱਡੀ ਗਿਣਤੀ ਆ ਬੈਤੇ ਗਿਣਾਇਆ ਜਾਂਦੇ ਕਿੰਨੇ ਕੁ ਹੋ ਚੁੱਕੇ ਨੇ ਕੌਣ ਗਣੇ ਇਹਨਾਂ ਨੂੰ ਭੂਮੀ ਹੀ ਤੇ ਹੋਏ ਕੇ ਫਿਰ ਭੂਮੀ ਹੀ ਮਲੇ ਹੈ ਆ ਧਰਤੀ ਚੋਂ ਪੈਦਾ ਹੋ ਕੇ ਧਰਤੀ 'ਚ ਮਿਲ ਗਏ ਸਰੀਰ ਕਰਕੇ ਹੀ ਸੀਗੇ ਆਤਮਾ ਦੀ ਤਾਂ ਗੱਲ ਹੀ ਨਹੀਂ ਉਹਨਾਂ ਨੇ ਕੀਤੀ ਉਹਨਾਂ ਜਿਹੜੇ ਕਹਿੰਦੇ ਤੇ ਅਸੀਂ ਜਿਨਾ ਚਿਰ ਸਰੀਰ ਸੀ ਉਹਨਾਂ ਚਿਰ ਮੈਂ ਆਏ ਸਰੀਰ ਤੇ ਬਾਅਦ ਤਾਂ ਮੈਂ ਖਤਮ ਹੋ ਜਾਂਦੀ ਹਾਂ ਉਹ ਮੈਂ ਜਿਹੜੀ ਸੀ ਸਰੀਰ ਭੂਮਿ ਤੋਂ ਪੈਦਾ ਹੋਈ ਦੀ ਭੂਮਿ 'ਚ ਮਿਲ ਗਈ ਤਾਂ ਇਹਦਾ ਦੁੱਲਦੂ ਕਰਦਾ ਤੂੰ ਪਿਆ ਗੁਜਮੇ ਰਹਣਾ ਉਹ ਜਿਹੜਾ ਹੰਕਾਰ ਸੀ ਖਤਮ ਹੋ ਗਿਆ ਅਸਰੀਰ ਆਲਾ ਖਤਮ ਹੋ ਗਿਆ ਸਰੀਰ ਤਾਂ ਮਿੱਟੀ ਸੀ ਮਿੱਟੀ ਨੂੰ ਮੈਂ ਗਈ ਜਾਂਦਾ ਜੇ ਆਹ ਸਰੀਰ ਅਡ ਕਰਦੀਆਂ ਫਿਰ ਮੈਂ ਕੌਣ ਫਿਰ ਦਸਮੇ ਕੌਣ ਉਹ ਇਹਨਾ ਮੈਂ ਬੋਲਦਾ ਕੌਣਾ ਦਿਖਾ ਦਿੱਥੇ ਜੁਰੂ ਕਹਿ ਵੀ ਜਿਹੜਾ ਮੈਂ ਬੋਲਦਾ ਦਿਖਾ ਦਿੱਥੇ ਫਿਰ ਕੁਝ ਵੀ ਨਹੀਂ ਦਿਖਾਉਣ ਰਹੇ ਦਾ ਇਹ ਦਿਖਾਉਣ ਨੂੰ ਕੁਝ ਨਹੀਂ ਆਪੇ ਹੈ ਜੀ ਮੈਂ ਦਾ ਵजूद ਕੁਛ ਨਹੀਂ ਹੈ ਤੇ ਕੋਈ ਕਹਿੰਦਾ ਮੈਂ ਦਿਖਾ ਕੀ ਹੈ ਸਰੀਰੇ ਦਿਖਾਉਆ ਖੜਾ ਇਹ ਤਾਂ ਮਿੱਟੀ ਹੈ ਤੂੰ ਮਾਇਆ ਦਿਖਾ ਕੀ ਹੈ ਤੇਰੀ ਤੇਰੀ ਮਾਇਆ ਦਿਖਾ ਕੀ ਹੈ ਉਹ ਕੁਛ ਨਹੀਂ ਹੈ ਫਿਰ ਕੁਛ ਨਹੀਂ ਤੇ ਮੈਂ ਹਾਂ ਜੋਗੀ ਜਤੀ ਬ੍ਰਹਮਚਾਰੀ ਕਹਿੰਦਾ ਮੈਂ ਨਹੀਂ ਕੁਛ ਨਹੀਂ ਉਹ ਵੀ ਕੁਛ ਨਹੀਂ ਹੈ ਮੈਂ ਵੀ ਕੁਛ ਨਹੀਂ ਹੈ ਇਹ ਭਰਮ ਤੋਂ ਪੈਦਾ ਹੋਏ ਹਨ ਦੋਏ ਤੋਂ ਪੈਦਾ ਹੋਏ ਮੈਂ ਵੀ ਹਾਂ ਵੀ ਫੇ ਦੋਏ ਚਲੇਗੇ ਫੇ ਦੋਏ ਕੋਏਗੇ ਮੈਂ ਮੈਂ ਹਾਂ ਦੋਏ ਵਿੱਚੋਂ ਕੋਏਗੇ ਹਾਂ ਜੀ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਜੋਗੀ ਜਤੀ ਬ੍ਰਹਮਚਾਰੀ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰਧਾਰੀ ਰਾਜੇ ਜਿਹਦੇ ਵੀ ਹੋਏ ਨੇ ਛਤਰੀ ਦੀ ਛਾਇਆ ਕਈ ਕੋਸ ਲੋ ਚਲਦਾ ਹੈ ਜਿਹੜੇ ਛਤਰੀਆਂ ਦੀ ਛਾਇਆ ਜੇ ਕਈ ਕਈ ਕੋਸ ਤੱਕ ਚਲਦੇ ਸੀ ਕਿਵੇਂ ਚਲਦੇ ਸੀ ਇਧਰ ਵੀ ਛਤਰੀਆਂ ਦੇ ਲਈ ਖੜੇ ਰਹਿੰਦੇ ਸੀ ਉਹ ਛਾਂ ਚੱਲੀ ਜਾਂਦੇ ਸੀ ਇਧਰਲੇ ਫਿਰ ਕਹਾਵੋ ਭੱਜ ਕੇ ਹੋ ਜਾਂਦੇ ਸੀ ਇਧਰੋਂ ਇਧਰਲੇ ਭੱਜ ਕੇ ਕਹਾ ਹੋ ਜਾਂਦੇ ਸੀ ਜਦੋਂ ਕੋਈ 100 ਕਾਦ ਮੈਂ ਇੱਧਰ 200 ਖੜਾ ਹੋਵੇ 60 ਨਹੀਂ 100 200 ਇੱਧਰ ਖੜਾ ਹੋਵੇ ਜਿਉ ਜੋ ਰਾਜੇ ਨੇ ਤੁਰੀ ਜਾਲੇ ਉਹਨਾਂ ਨੇ ਕਹਾਂ ਦੀ ਕਹਾਂ ਲੈਂਡ ਬਣਾਈ ਜਾਣੀ ਜਾਂ ਕਹਾਂ ਨੰਗੇ ਰਾਜਾ ਪਿਛਲੇ ਨੇ ਭੱਜ ਕੇ ਗਾਹ ਹੋ ਜਾਣ ਜਦੋਂ ਬਹਾਨਾਂ ਦੀ ਪਿਛਲੇ ਨੇ ਭੱਜ ਕੇ ਗਾਹ ਹੋ ਜਾਣ ਉਹਨੂੰ ਜਦ ਦੀ ਛਾਂ ਦੇ ਉਹ ਧੁੱਪ ਨਹੀਂ ਉੱਡ ਦੇਣੀ ਰਾਜੇ ਤੁਹਾਨੂੰ ਐਸੇ ਰਾਜੇ ਵੀ ਹੋਏ ਬੜੇ ਬੜੇ ਛਤਰਦਾਰੀ ਵੱਡੇ ਵੱਡੇ ਰਾਜਨ ਕੇ ਦਾਬ ਤੋ ਫਿਰਤ ਦੇਸ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਾਂ ਦੇਸ਼ ਜਿਹੜੇ ਦੱਬਣ ਵਾਲੇ ਦਬਾਉਣ ਵਾਲੇ ਸੀ ਰਾਜ ਤੇ ਕਬਜ਼ਾ ਕਰ ਲੈਣੇ ਜਾ ਕੇ ਰਾਜ ਤੇ ਵੱਡੇ ਵੱਡੇ ਰਾਜਨ ਕੇ ਦਲਤ ਹੈ ਦਰਬ ਗਰਵ ਦਰਬ ਦੱਦਾ ਦੱਦਾ ਹਾਂ ਦਰਬ ਕੋ ਦਲਤ ਹੈ ਵੱਡੇ ਵੱਡੇ ਰਾਜਾਂ ਤੋਂ ਜਿਹੜਾ ਦਿਮਾਗ ਸੀ ਨੂ ਉਹਨਾਂ ਚ ਹੰਕਾਰ ਸੀ ਯਾ ਉਹਨਾਂ ਦਾ ਜਨਮ ਗਾਂਸੀ 36 ਸੀ 36 ਸੀ ਉਹਨੂੰ ਦੜ ਲੈਣ ਵਾਲੇ ਸੀ ਭੈ ਭੀਤ ਦੇਣ ਵਾਲੇ ਸੀ ਹਾਂ ਜੀ ਮਾਨਸੇ ਦਲੀਪ ਕੈਸੇ ਨੇ ਦਿੱਲੀ ਬਸਾਈ ਹੈ ਤੁਸ ਪਾਸ਼ਾ ਦੀ ਕਥਾ ਹੁੰਦੀ ਹੈ ਉਹਦੇ ਵਿੱਚ ਦਿੱਲੀ ਦਲੀਪ ਦੇ ਨੋਤੇ ਸੁਝਾ ਜੀ ਦਲੀਪ ਰਾਜਾ ਬੜਾ ਤਖੜਾ ਪ੍ਰਤੱਪੀ ਰਾਜਾ ਹੈ ਦਲੀਪ ਜੈਸੇ ਛਤਰ ਧਾਰੀ ਮਾਨਸੇ ਮਹੀਪ ਉਹ ਦਲੀਪ ਕੈਸੇ ਛਤਰ ਧਾਰੀ ਵੱਡੋ ਅਭਮਾਨ ਜਿਹੜਾ ਉਹਨਾਂ ਦੀ ਪੂਜਾ ਬੜਾ ਮੌਰ ਸੀ ਰੂਰੂਕਾਰ ਸੀ ਵੱਡੋ ਅਭਮਾਨ ਸ਼ਕਤੀਆਂ ਦਾ ਆਪਣੀ ਸ਼ਕਤੀ ਦਾ ਬੜਾ ਹਮਕਾਰ ਦਾਰਾ ਸੇ ਦਿੱਲੀ ਸਰ ਦਰਯੋਜਨ ਸੇ ਮਾਨ ਧਾਰੀ ਦਾਰਾ ਸੇ ਦਿੱਲੀ ਸਰ ਜਿਹੜੇ ਦਿੱਲੀ ਨੂੰ ਸਹਾਰ ਕਰਨ ਵਾਲੇ ਸੀ ਦਾਰਾ ਵਰਗੇ ਤੇ ਦ੍ਰੋਜਨ ਸੇ ਮਾਨਤਾਰੀ ਮਾਨਤਾਰੀ ਹੰਕਾਰੀ ਸੀ ਦ੍ਰੋਜਨ ਨੂੰ ਬੜਾ ਮਾਨਸਿਕ ਕਿਹਦੇ ਤੇ ਮਾਨ ਸੀ ਕਾਰਲੋਂ ਦੇ ਨਾਲ ਸੀ ਬੜੇ ਬੜੇ ਉਹਦੇ ਕੋਲ ਸੈਨਾਪਤੀ ਸੀ ਉਹਨਾਂ ਦਾ ਦਾਦਾ ਸੀ ਸਮਝਿਆ ਜੀ ਤੇ ਉਹਦਾ ਵੀ ਬਹੁਤ ਬੜੀ ਆਪਣੀ ਜਿਹੜੀ ਸ਼ਕਤੀ ਸੀ ਉਹਦੇ ਤੇ ਮਾਨ ਸੀ ਉਹਨੂੰ ਘਰ ਸੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤਾ ਹੈ ਆ ਸਾਰਾ ਇੱਥੇ ਸਰੀਰ ਕਰਕੇ ਇੱਥੇ ਭੋਗ ਭੋਗ ਕੇ ਸਰੀਰ ਦੇ ਲੈਵਲ ਤੇ ਜੀਏ ਨੇ ਲੋਕ ਇਹ ਆਤਮਾ ਦੇ ਲੈਵਲ ਤੇ ਨਹੀਂ ਜੀਏ ਸਰੀਰ ਦੇ ਲੈਵਲ ਤੇ ਜਿਉਦੇ ਰਹੇ ਸਰੀਰ ਦੇ ਲੈਵਲ ਤੇ ਖਾਂਦੇ ਪੀਂਦੇ ਰਹੇ ਸਰੀਰ ਦੇ ਲੈਵਲ ਤੇ ਸ਼ਕਤੀ ਸੀ ਇਹਨਾਂ ਦੀ ਆਤਮਾ ਦੀ ਲੈਵਲ ਦੀ ਸ਼ਕਤੀ ਨਹੀਂ ਸੀ ਆਦਮ ਗਿਆਨੀ ਸੀ ਆਦਮ ਧਿਆਨੀ ਸੀ ਆਤਮਾ ਦਾ ਕੋਈ ਇਹਨਾਂ ਨੇ ਖੋਜ ਨਹੀਂ ਕੀਤੀ ਆਤਮਾ ਦਾ ਕੋਈ ਇਹਨੂੰ ਜਿਕਰ ਨਹੀਂ ਕਰਕੇ ਮਿੱਟੀ ਤੋਂ ਪੈਦਾ ਜੇ ਆਪਾਂ ਇਹ ਮੰਨਿਆ ਵੀ ਸਜਦਾ ਜਿਹੜਾ ਕਰਨਾ ਹੈ ਹੁੰਦਾ ਝੁਕਣਾ ਸਲਾਮ ਕਰਨਾ ਮੱਥਾ ਟੇਕਣਾ ਦਰਨਾウト ਕਰਨਾ ਜਿੱਦਾਂ ਜਿਹੜੇ ਤੋਪਚੀ ਨੇ ਤੋਪ ਚਲਾਉਂਦੇ ਹੁੰਦੇ ਨਾ ਅੱਗੇ ਹਰ ਵਾਰ ਉਹ ਐ ਥੱਲੇ ਦੀ ਝੋਕੇ ਪਲੀਤਾ ਲਾਉਂਦੇ ਜੇ ਪਲੀਤਾ ਲਾਉਣਾ ਹੁੰਦਾ ਨਾ ਉਹਦੇ ਥੱਲੇ ਹੁੰਦਾ ਨਾ ਤੋਪ ਦੇ ਸਰਾਖ ਐ ਦੇਖਣਾ ਵੀ ਉਹਦੇ ਚ ਬਰੂਦ ਪੈ ਗਿਆ ਹਰ ਵਾਰ ਤੋਪ ਨੂੰ ਨੀਵਾ ਹੋਣਾ ਪੈਂਦਾ ਜੇ ਆਇਆ ਪੱਕਾ ਲੀ ਵੀ ਤੋਪਚੀ ਇੰਨੀ ਵਾਰ ਨੀਵਾ ਹੁੰਦਾ ਤੋਪ ਚਲਾਉਂਦਾ ਜਿੰਨੀ ਵਾਰ ਸਜਦਾ ਕਰਦਾ ਪਰਮੇਸ਼ਰ ਨੂੰ ਇਹ ਭਗਤੀ ਆ ਜਿਹੜੇ ਲੋਕ ਸਜਦਾ ਕਰਦੇ ਨੇ ਉਹ ਉਹ ਤੋਪਚੀ ਵਰਗੇ ਨੇ ਸੀਸਨ ਬਾਈਏ ਕਾਥੀਏ ਜਮ ਰੱਦੇ ਕੋ ਸੁੱਧਾ ਜਾਏ ਕਪਟ ਫੇਸ ਉਹ ਲੋਕਾਂ ਨੇ ਤਾਂ ਤੋਪ ਚਲਾ ਰਹੇ ਨੇ ਉਹ ਜੋ ਕਰ ਸਜਦਾ ਕਰ ਰਹੇ ਨੇ ਇਹ ਵੀ ਕਹਿ ਰਹੇ ਨੇ ਵੀ ਮੇਰੀ ਤੋਪ ਨਿਸ਼ਾਨੇ ਤੇ ਲੱਗੇ ਸੀ ਨੂੰ ਯਾਦ ਕਰਾਂ ਵੀ ਮੇਰਾ ਨਿਸ਼ਾਨਾ ਸਹੀ ਲਗੇ ਚਲਾਦਾ ਤੋਪ ਰਹਾ ਤੂੰ ਕੰਨਾ ਵਸੇ ਉਹ ਤਾਂ ਉਹਦੀ ਮਰਜ਼ੀ ਹੈ ਨਿਸ਼ਾਨਾ ਜਿਹਨੂੰ ਮਾਰਨਾ ਜੇ ਕਿਸੇ ਨੂੰ ਮਾਰਨ ਦਾ ਵਾਧੂ ਨਹੀਂ ਨਾ ਸੀ ਐਸੇ ਹੀ ਇਹ ਨਹੀਂ ਜਿਹੜੇ ਸਜਦਾ ਕਰਨ ਵਾਲੇ ਨੇ ਚਲਾਉਂਦੇ ਨੇ ਕਰਦੇ ਨੇ ਸਜਦੇ ਕਰਦੇ ਨੇ ਵੀ ਪੜਦੇ ਨੇ ਕਹਿਰ ਵੀ ਕਰਦੇ ਰਹੇ ਨੇ ਹਮਲੇ ਵੀ ਕਰਦੇ ਰਹੇ ਨੇ ਲੁੱਟਕੇ ਵੀ ਲ ਰਹੇ ਨੇ ਉਹ ਇਸ਼ਾਰਾ ਹੋਰ ਤਰ੍ਹਾਂ ਦਾ ਹੈ ਗੱਲ ਢੁੰਗੀ ਹੈ ਰਾਜ ਸੈਦੇ ਕਰਦੇ ਉਹਨਾਂ ਨੇ ਚੜਾਈ ਹਿੰਦੁਸਤਾਨ ਨੂੰ ਰੂਤੇ ਨੂੰ ਕੀਤੀ ਹੋਈ ਹੈ ਸਜਿਦੇ ਜ਼ੁਲਮ ਆ ਰਹੇ ਨੇ ਮੈ ਤਾਂ ਲੜਕੀਆਂ ਲੈ ਜਾਣੇ ਗੁਲਾਮ ਬੱਚੇ ਲੈ ਜਾਣੇ ਲੋਕਾਂ ਨੂੰ ਲੁੱਟ ਲੈਣਾ ਮਾਰ ਦੇਣਾ ਵੜ ਦੇਣਾ ਜ਼ਬਰ ਕਰਨਾ ਤੇਰੀ ਨਮਾਜ਼ ਕੀ ਕਰੂਗੀ ਨਮਾਜ਼ ਕੀ ਕਰੂ ਤੇਰੀ ਪੰਜ ਵੜੇ ਨਮਾਜ਼ ਪੜ੍ਹਨੀ ਸਿੱਜਦੇ ਕਰਿਆ ਨਵਾਜ ਵੀ ਪੜਣੀ ਕੰਮ ਤੋਂ ਉਪਚੀ ਆਲਾ ਕਰਨਾ ਐ ਘੈਰ ਨੇ ਅਸਲ ਵਿੱਚ ਲੁੱਕੀ ਗੱਲ ਆਏ ਥੋੜੀ ਕੱਪੜੇ ਫੇਸ ਪੇੜ ਉਹੋ ਅੰਦਰ ਤਾਂ ਕੱਪੜਾ ਹੈ ਭਈ ਜੋ ਉਹ ਪਾੜਿਆਂ ਦੇ ਵਿੱਚ ਤਾਂ ਹੈ ਨਹੀਂ ਹੁਕਮ ਤਾਂ ਫੜਾ ਕੱਪੜੀ ਕਰਦਾ ਕੱਪੜੀ ਨਹੀਂ ਹੈ ਜੇ ਬਾਣੀ ਚ ਚਲਦਾ ਸਿੱਧਾ ਕਰੇ ਨਾ ਬਾਣੀ ਚ ਕੀ ਲਖੇ ਉਹ ਕਰੇ ਜਾਂ ਨਾ ਕਰੇ ਸਜਦਾ ਹੀ ਆ ਉਹਦਾ ਜਿਹੜਾ ਆਪਣੀ ਹਕੂਮਤ ਕਾਇਮ ਕਰਨੀ ਚਾਹੁੰਦਾ ਹੈ ਤਾਂ ਕਾ ਕਰਦਾ ਹੈ ਉਹਦਾ ਸਜਦਾ ਕਦੇ ਕਬੂਲ ਹੋ ਜੂਗਾ ਸਜਦਾ ਕਰਿਆ ਨੇਕ ਧੋਪਜੀ ਕਪੜਪੇਸ ਹੈ ਕੀ ਧੋਪਜੀ ਕਪੜਪੇਖੀ ਰਿਦੇ ਤੋਂ ਸਦਾ ਹੂੰ ਪੋਸਤੀ ਅਨੇਕ ਦਾ ਨਿਬਾਵਤ ਹੈ ਸੀਸ ਕੋ ਕਹਿੰਦਾ ਪੋਸਤੀ ਹੈ ਪੋਸਤੀ ਕਿਉਂ ਐ ਜੋ ਲਿਜਾਂਦਾ ਥੱਲੇ ਨੂੰ ਉਹ ਵੀ ਸਿਰ ਥੱਲੇ ਨੂੰ ਲਿਖਿਆ ਨੂੰ ਦੇਖੋ ਅਪਰਾਧੀ ਨਹੀਂ ਲਿਖਿਆ ਪੋਸਤੀ ਪਰ ਪੋਸਤੀ ਦਾ ਹੋਈ ਆਪਣਾ ਝੋਲ ਦਾ ਵਜੇ ਛੇ ਪਰ ਅਪਰਾਧੀ ਨਹੀਂ ਹੈ ਉਹ ਅਪਰਾਧੀ ਨਹੀਂ ਕਿਹਾ ਇਹਨੂੰ ਕਪੜੇ ਪਹਿਰ ਸੀ ਕਿਹਾ ਇਹਨੂੰ ਦੇਖੋ ਉਹ ਬਲੀਅ ਮੋਤੀ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਲੋਕ ਨੇ ਨਸ਼ਿਆਂ ਤੇ ਕਿਤੇ ਵੀ ਗੁਰਬਾਨੀ ਖਿਲਾਫ ਸੀ ਕਫੜ ਪੈਸ ਨਹੀਂ ਲਿਖਿਆ ਇਹਨੂੰ ਕਫੜ ਪੈਸ ਉਹਦਾ ਧੂਏ ਦਾ ਉਹ ਮੜਾ ਜਿਹੜਾ ਨਸ਼ਿਆਂ ਦੇ ਖਿਲਾਫ ਨੇ ਕਪਟੀਆਂ ਨੇ ਸਾਰੇ ਹੀ ਨੇ ਇਹ ਬਲਾਕੇ ਦੇਖਣ ਵੀ ਅਸੀਂ ਜਾਦਾ ਕਪਟੀਆਂ ਘੱਟ ਕਪਟੀਆਂ ਆਪਣੇ ਨਹੀਂ ਨਾਲ ਦਰਚਾਖਦਾ ਅਸਲ ਜਿਹੜਾ ਧੂਏ ਵੱਲ ਚਾਖਦਾ ਉਹ ਆਪਣੇ ਅੰਦਰ ਨਹੀਂ ਕਰੇ ਚਾਖਦਾ ਹੁੰਦਾ ਗੁਰਮਤ ਨੂੰ ਨਸ਼ਾ ਕਰੇ ਦੁਰਮਤ ਤੇ ਛੜਤੀ ਇਹਨਾਂ ਦੇ ਦੁਰਮਤ ਲਈ ਬੈਠੇ ਨਾ ਜਿਹਨੂੰ ਗੁਰਮਤ ਕਹਿੰਦੀ ਹੈ ਨਾ ਦੁਰਮਤ ਵੱਧ ਜੇਪੀ ਉਤੇ ਉਹ ਸਾਡੀ ਦੁਰਮਤ ਵੱਲ ਕੋਈ ਝਾਕ ਨਾ ਲਵੇ ਰੌਲਾ ਹੋਰੇ ਪਾਤਾ ਜਦ ਨਸ਼ੇ ਮੁੰਡੇ ਰੌਲਾ ਪਾਤਾ ਆਪਣੇ ਆਪ ਨਾ ਜਿਆ ਜਿਹਨੂੰ ਗੁਰਮਤ ਉਂਗਲੀ ਕਰਦੀ ਹੈ ਜਿਹੜੇ ਨਸ਼ੇ ਵੱਲ ਉਹ ਨਸ਼ੇ ਵੱਲ ਧਿਆਨ ਨਾ ਚਲਿਆ ਜਾਵੇ ਕਿਸੇ ਦਾ ਗੁਰਬਾਣੀ ਵਿੱਚ ਜਿਹੜੇ ਨਸ਼ੇਵਲ ਉਂਗਲੀ ਉੱਠੀ ਹੈ ਨਾ ਦੁਰਮਤ ਮਦ ਦੁਰਮਤ ਬੰਦੀ ਐ ਪੀ ਬਤੇ ਇਹ ਮਾਇਆ ਮਦ ਇਹ ਮਾਇਆ ਮਦ ਬਾਤਾ ਇਧਰ ਉਂਗਲੀ ਨਾਲ ਜਿਵੇਂ ਹੋਰ ਰੌਲਾ ਪਾਤਾ ਬਾਕੀ ਨਸ਼ੇ ਦਾ ਤਾਂ ਅger ਰੌਲੇ ਦੀ ਗੱਲ ਪਾ ਛਾਤਰ ਆਦਮੀ ਨੇ ਹੈ ਜਿੱਦਣ ਦੂਜਿਆਂ ਨੂੰ ਬਦਲਾ ਗਿਆ ਨਾ ਇਹਨਾਂ ਤੇ ਦੇਖੋ ਕੀ ਬੰਦੀ ਹੈ ਹਾਲਤ ਜਿਹੜੀ ਅੱਜ ਜਿਹੜੀ ਸੰਤਾਂ ਦੀ ਹਾਲਤ ਹੈ ਨਾ ਪਤਲੀ ਹਾਲ ਤੋਂ ਇਹ ਲੋਕ ਮਗਰ ਪੈ ਗਏ ਹੁਣ ਪੈਣਾ ਸੀ ਕੂੜ ਸੀ ਕੋਲ ਕੋਲ ਕੋਈ ਸ਼ੈ ਨਹੀਂ ਸੀ ਇਹ ਦੋਿਆਂ ਦੇ ਹੋਰ ਵੀ ਇਹਨਾਂ ਦੇ ਹਸੰਤਾ ਦੇ ਮਗਰ ਇਹ ਵੀ ਪੈਣ ਵਾਲੇ ਨੇ ਰੂਏ ਪੋਜ਼ਿਟਿਵ ਵੀ ਆਪਣਾ ਆਵੇ ਬਗਾੜਦੇ ਸੀ ਉਰੂ ਦਾ ਬਨਮੁਖ ਆਪਣਾ ਬਗਾੜਦਾ ਹੁੰਦਾ ਏ ਕਿਸੇ ਦਾ ਬਗਾੜਦੇ ਨਹੀਂ ਬਨਮੁਖ ਆਪਣਾ ਬਗਾੜਦਾ ਹੈ ਜਿਹੜਾ ਬੰਦੇ ਮੁਕਾ ਆਪਣਾ ਬਗੜਦਾ ਜਿਹੜਾ ਸਾਖਾ ਦਾ ਲੋਕਾਂ ਦਾ ਬਗੜਦਾ ਆਪਣਾ ਦਾ ਬਗੜੇ ਲਿਆ ਲੋਕ ਗਿਓ ਪਰ ਲੋਕ ਗਵਾਇਓ ਆਪਣਾ ਰਗਿਆ ਹੀ ਗਿਆ ਉਹ ਹੋਰ ਨਾਲ ਦਾ ਬਗੜਦਾ ਹੁੰਦਾ ਪੇਗ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਨ ਉਹਨੇ ਲੋਕਾਂ ਨਾਲ ਬਗੜਿਆ ਕਰ ਬਹੁਤੇ ਗੱਲ ਹੈ ਹਾਂ ਬਹੁਤੇ ਘਰ ਗਾਲ ਤੇ ਕਹਾਂ ਪਈ ਉਹ ਮੱਲ ਜੋ ਪੈ ਕਾਢਦ ਅਨੇਕ ਡੰਡ ਉਹ ਦੇਖ ਲੋ ਡੰਡ ਕਾਢਣ ਵਾਲਾ ਉਹ ਵੀ ਸਿੱਧਾ ਹੀ ਕਰਦੇ ਨੇ ਡੰਡੋਦ ਕਰਦੇ ਨੇ ਕਹੋ ਉਹ ਡੰਡ ਡੰਡੋਦ ਉਹ ਵੀ ਡੋਲ ਕਰਦਾ ਮੱਲ ਪਹਿਲਵਾਨ ਜਿਹੜਾ ਸਿੱਧਾ ਪਿਆ ਡੰਡੀ ਕਾਢਦਾ ਉਹ ਵੀ ਡੰਡੋਦ ਕਰਦਾ ਫਿਰ ਜੋ ਕੱਲ ਮੈਂ ਕਰਦਾ ਫਿਰ ਇਹਨਾਂ ਜ਼ਿਆਦਾ ਉਹ ਕਰਦਾ ਉਪਰ ਦੀ ਆਦੇ ਸੋਤੋਂ ਨਾਲ ਡੰਡਾਓ ਤਾਂ ਅਸ਼ਟਾਂਗ 38 ਹੈ 38 ਕੋ ਫਿਰ ਉਹ ਡਣਾਉਦੋਗੀ ਸੋਤੋਂ ਨਾਲ ਡਣਾਉ ਤਾਂ ਉਹ ਤਾਂ ਡਣਾਉਦ ਨਹੀਂ ਆਇਆ ਫਿਰ ਅਸ਼ਟਾਂਗ 38 ਕੋ ਅੱਠ ਅੰਗ ਨੇ ਉਹਦੇ ਚਾਹੇ ਸਿੱਧੇ ਕੀਤੇ ਹੋਏ ਦੋੇ ਹੱਥ ਪੈਰ ਸਮਝੇ ਨਹੀਂ ਸਾਰੇ ਬਿਲਕੁਲ ਸਿੱਧਾ ਹੋ ਅਸ਼ਟਾਂਗ ਉਹ ਨੂੰ ਦਸੀ ਬੰਦੇ ਬਾਹਨ ਵੀ ਨੇ ਪੈਰ ਵੀ ਨੇ ਹੱਥ ਵੀ ਨੇ ਲੱਤਾਂ ਵੀ ਨੇ ਸਾਰਾ ਕੁਝ ਉਹਦਾ ਸਰੀਰ ਢੜ ਵੀ ਐ ਸਰ ਵੀ ਐ ਕਹਾਂ ਪયો ਰੋਗੀ ਜੋ ਪੈ ਡਾਰੇ ਹੋ ਰਹੋ ਉਰਦ ਮੁਖ ਹਣ ਕੋਈ ਰੋਗੀ ਐ ਉਹ ਅਸਵਾਨ ਕੰਨੇ ਨੂੰ ਮੂੰਹ ਕਰਕੇ ਉਹਨੂੰ ਲੰਮਾ ਬਾੰਦ ਨੇ ਡਾਕਟਰ ਕੰਨੇ ਪਾਸੇ ਤੇ ਨਹੀਂ ਪਾਉਂਦੇ ਇਹ ਰੋ ਭਗਤੀ ਕਰਦਾ ਜੇ ਤੁਸੀਂ ਸਿੱਧੇ ਪੈ ਗਏ ਕਹਿੰਦਾ ਭਗਤੀ ਐ ਉੱਤੇ ਦੇ ਹੱਤਾਂ ਨੇ ਰੋਗੀ ਪੈਨ ਨੂੰ ਦਿੱਤੇ ਉਰਦਮੁਖ ਉਰਦਮੁਖ ਜਨ ਉੱਤੇ ਰੂ ਰਹਿਣਾ ਆਕਾਸ਼ ਵੱਲੋਂ ਦੇਖੋ ਉਰਦਮੁਖ ਆ ਰਿਹਾ ਆਕਾਸ਼ ਵੱਲੋਂ ਉਰਦ ਨੂੰ ਪੁੱਠਾ ਕਰ ਰਹੇ ਨੇ ਉੱਤੇ ਹੱਥ ਆਕਾਸ਼ ਵੱਲੋਂ ਭੁਰੜਾ ਉੱਪਰੋਂ ਐਂਜਾ ਸਿੱਧੇ ਪੈ ਰਹੇ ਆਪਾਂ ਉਹ ਆਕਾਸ਼ ਵੱਲੋਂ ਇਹ ਉਰਦਮੁਖ ਹੈ ਕਿ ਉਹ ਉਰਦਮੁਖ ਆਕਾਸ਼ ਵੱਲ ਆਕਾਚੋ ਬੂ ਦੇ ਵਿੱਚ ਕੁਝ ਪੈਣ ਨੂੰ ਹੈ ਦੀ ਖਾਣ ਨੂੰ ਖਾਣ ਨੂੰ ਧਰਤੀ ਤੇ ਜੋ ਮੂਜ ਪੈਣੋ ਕੋ ਜਾ ਧਰਤੀ ਚੋਂ ਆਂ ਆਕਾਸ਼ ਚੋਂ ਕੀ ਪੈਣੋ ਮੂਜ ਇਸ ਕਰਕੇ ਸਾਰੀ ਖਰਾਲ ਸਾਡੀ ਧਰਤੀ ਚ ਔਰਦਮੁਖ ਤਾਂ ਕਹਿੰਦੇ ਨੇ ਇਹ ਹੀ ਕਹਿੰਦੇ ਨੇ ਔਰਦਮੁਖ ਗੁਰਬਾਣੀ ਦੇ ਤਾ ਭਾਸ਼ਾ ਇਹ ਨਾਲੀ ਵਰਤੀ ਹੈ ਸਿਰਫ ਅਸੀਂ ਔਰਦਮੁਖ ਨਹੀਂ ਮੰਨਦੇ ਪਰ ਉਹ ਕਹਿੰਦੇ ਨੇ ਔਰਦਮੁਖ ਉਹਨਾਂ ਵਾਲੀ ਭਾਸ਼ਾ ਜੇ ਹੁਣ ਸਮਝੌਣੀ ਪਊ ਗੱਲ ਮਾਨਤੇ ਨਾ ਮੂਢ ਨਿਹਾਰਿਓ ਆਦ ਈਸ ਕੋ ਵਰਤੇ ਨਾ ਮੂਢ ਨਿਹਾਰਿਓ ਵਰਦਾ ਮੂਢਿਆ ਜੀ ਕਬੀਰ万 ਮੂਢਿਆ ਨਹੀਂ ਕੇਸ ਮੂਢਾ ਜੇ ਮਾਨੂ ਮੋਲੈਂਦੇ ਫੇਰ ਤਾਂ ਹਰ ਜਿਹੜਾ ਈਸ਼ਰ ਆਪਣਾ ਮੂਢ ਹੈ ਫੇਰ ਉਹਨੂੰ ਦੇਖ ਲੈਦੇ ਤੁਸੀਂ ਮਨਤੇ ਨਾ ਮੂੜ ਦੇਵਾ ਦੀਸ ਮਨਤੇ ਨਾ ਬੂੜ ਦੇ ਨਿਹਾਰਿਓ ਹਰ ਈਸ਼ ਕੋ ਈਸ਼ ਕੋ ਆ ਦੀਸ ਕੋ ਆ ਦੀਸ ਕੋ ਜਿਹੜਾ ਆ ਦੀਸ ਆ ਦੀਸ ਕਰਦੇ ਨੇ ਜੀਤੋ ਬੁੱਲਦਾ ਜਨਮ ਹੋਇਆ ਹੈ ਇਹਦਾ ਆਦਰ ਆਪਣੇ ਮੋਲ ਨੂੰ ਨਿਹਾਰ ਦੀ ਸੋਚ ਇਹ ਮੰਨ ਲੂ ਬੁੱਲਣਾ ਕੀ ਹੁੰਦਾ ਬਲਦੀ ਹੈ ਜਿਹੜੀ ਮਿੱਥੋਂ ਇੱਛਾ ਉੱਠਦੀਆਂ ਨੇ ਇਹਨਾਂ ਨੂੰ ਖਤਮ ਕਰ ਦੇਣਾ ਇਹਨਾਂ ਨੂੰ ਉੱਠਣੇ ਨਾ ਦੇਣਾ ਉਹ ਤਾਂ ਹੀ ਜੜਾਂ ਤੋਂ ਵੱਢਦੇ ਨਾ ਸਕਦੇ ਬਾਹਰ ਵੀ ਉੱਠਣੇ ਦਾ ਦਵਾਰਾ ਪੈ ਪੈਦਾ ਇਹ ਲੋੜ ਉਹ ਕੰਨਾ ਜੋ ਆਉਂਦੀ ਹੈ ਕੱਢ ਦੋ ਜੋ ਕਲਪਨਾ ਪੈਦਾ ਹੁੰਦੀ ਕੱਟੀ ਜਾਓ ਕੱਟੀ ਜਾਓ ਪਹਿਲਾਂ ਹੀ ਹਟ ਦੇ ਦੀ ਜੇ ਇਦਾਂ ਕਰੀ ਜਾਵੇ ਕੋਈ ਤਾਂ ਆਪਣਾ ਗੋਲ ਨੂੰ ਲੈਂਦਾ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਕਾਮਨਾ ਅਧੀਨ ਸਦਾ ਸਦਾ ਹੀ ਕਾਮਨਾ ਅਧੀਨ ਔਰ ਧੰਦੇ ਅਧੀਨ ਦਾਮਨਾ ਹੁੰਦਾ ਤੁਲ ਦਾਮਨਾ ਪ੍ਰਵੀਨ ਏਕ ਦੌਮਨਾ ਪਰਵੀਨ ਇੱਕ ਪਾਮਨਾ ਬਹੀਨ ਕੈਸੇ ਜਗਦੀਸ਼ ਕੋ ਦੌਮਨਾ ਤਾਂ ਪਰਵੀਨ ਹੈ ਤਾਂ ਦੌਲਤ ਦੀ ਕੋਈ ਕਮੀ ਨਹੀਂ ਤੇਰੇ ਕੋਲ ਇਹਦੀ ਕਮਾਈ ਦੇ ਵਿੱਚ ਵੀ ਬੜਾ ਖੂਬ ਸਾਰੇ ਤਰੀਕੇ ਤੈਨੂੰ ਬਹੁਤ ਵਧੀਆ ਹੁੰਦੇ ਨੇ ਇਹ ਚ ਨਹੀਂ ਕੋਈ ਕਮੀ ਹੈ ਵੀ ਸਭ ਦੌਲਤ ਦੀ ਕਮਾਈ ਚਾਹੇ ਲੋਕਾਂ ਨੂੰ ਪ੍ਰੇਰ ਕੇ ਧਰਮ ਦੇ ਰੋਹ ਤੇ ਕਰਦਾ ਹੁੰਦੇ ਚਾਹੇ ਆਪਣੀ ਬੁੱਧੀ ਨਾਲ ਕਰਦਾ ਹੁੰਦੇ ਚਾਹੇ ਹੋਰ ਕੋਈ ਕਿਸੇ ਵੀ ਤਰੀਕੇ ਨਾਲ ਕਰਦਾ ਇਹ ਤਾਂ ਪ੍ਰਵੀਰ ਹੈ ਤੂੰ ਭਾਵਨਾ ਬਹੀਨ ਕੈਸੇ ਦੀ ਭੁੱਖ ਨਹੀਂ ਦੀ ਭਾਵਨਾ ਜਿਹੜੀ ਉਹ ਸਹੀ ਨਹੀਂ ਮਾਇਆ ਦੀ ਭਾਵਨਾ ਮਾਇਆ ਦੀ ਭਾਵਨਾ ਵਾਸਤੇ ਭਾਵਨਾ ਭਾਵੇਂ ਜਗਦੀਸ਼ੂ ਫਿਰ ਜਗਦੀਸ਼ ਨੂੰ ਕਿਵੇਂ ਪ੍ਰਾਪਤ ਕਰੇ ਜਗਦੀਸ਼ ਤੇ ਪਾਉਣ ਦੀ ਭੁੱਖ ਹੀ ਨਹੀਂ ਤੇਰੇ ਅੰਦਰ ਜਗਦੀਸ਼ ਦੀ ਪ੍ਰਾਪਤੀ ਦੀ ਜਗਦੀਸ਼ ਨੂੰ ਮੇਲ ਦੀ ਜਗਦੀਸ਼ ਦੀ ਉਹ ਤਾਂ ਫਿਰ ਪਾਵੇਂਗਾ ਕਿ ਪਾਵੇਂਗਾ ਉਹ ਚੀਜ਼ ਜਿਹੜੀ ਚੀਜ਼ ਦੀ ਇੱਛਾ ਇੱਛਾ ਕਾਦੀ ਹੈ ਦੀ ਹੈ ਦੌਲਤ ਤੇ ਧਨੀ ਵਾਲੀ ਤੂੰ ਬਰਵੀਰ ਕਿਉਂਕਿ ਨਾ ਕੱਲ ਕੱਲ ਬੁਰ ਕੱਲ ਕੱਲ ਕੁਝ ਬਣਾਇਆ ਸੱਤਾਂ ਕਰੋੜਾਂ ਰੁਪਏ ਅਰਬਾਂ ਰੁਪਏ ਨੇ ਉਹ ਜੇ ਮਹਾਰਸੀ ਇਕੱਠੇ ਹੋ ਗਏ ਅਰ ਉਸੇ ਦੀ ਭੁੱਖ తీਰਾਂ ਨੂੰ ਮਾਇਆ ਦਿਓ ਜੇ ਨਹੀਂ ਭੁੱਖ ਨਹੀਂ ਹੁੰਦੀ ਮਾਇਆ ਇਕੱਠੀ ਕਿਵੇਂ ਹੋ ਜਾਂਦੀ ਜੇ ਦੀ ਮਾਇਆ ਜਿਹੜਾ ਮਾਇਆ ਦੀ ਭੁੱਖ ਰੱਖਦਾ ਉਹਨੂੰ ਮਾਇਆ ਮਿਲ ਜਾਂਦੀ ਹੈ ਕੁਕਰਦੇ ਸਦ ਨੂੰ ਮਾਇਆ ਕੀ ਦੱਸਿਆ ਨੂੰ ਰੱਦ ਸਿੱਧਾ ਮਾਇਆ ਇਹ ਰਾਹ ਰੋਕ ਦਿਆ ਆਡੀ ਪਰਵਲ ਮਾਇਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਾਇਆ ਨੇ ਸਾਡਾ ਰਾਹ ਰੋਕ ਲਿਆ ਇਹਦੀ ਸਮਝਦੇ ਮਾਇਆ ਆਗੀ ਰਾਹ ਰੋਕ ਲਿਆ ਉਹਨਾਂ ਨੇ ਮਾਇਆ ਬਰਲਦੇ ਸੀ ਆਪਣੇ ਅੰਦਰ ਬੋਲਦੇ ਵਿੱਚ ਲੋਕ ਉਹਨਾਂ ਨੂੰ ਬੋਲਦੇ ਸੀ ਸੰਤ ਮਾਇਆ ਆਵੜੀ ਰਾਹ ਰੋਕ ਜਗਦੀਸ਼ ਵਾਲਾ ਰਾਹ ਰੁਕ ਗਿਆ ਮਾਇਆ ਵਾਲੇ ਪੈਗੇ ਮਾਇਆ ਵਾਲੇ ਪੈਗੇ ਜੰਮਦੇ ਮਾਰਗ ਪੈਗੇ ਬਾਇਆਲਾ ਮਾਰਗ ਜਾਂਦਾ ਵਾਰਗ ਕਿੱਡਾ ਇਹ ਸੰਤ ਕੋਈ ਅਮੀਰ ਹੋਵੇ ਜਾਂਦੇ ਜਾਲਜ ਫਸਿਆ ਹੋਇਆ ਭਲੇਖਾ ਆਪਣੀ ਬੁਨਚੀ ਜਾਹਿ ਰੱਖੀ ਬੈਠਾ ਪਿਆ ਰੱਖੀ ਬੈਠਾ ਰਹੇ ਆਪਣੇ ਰੱਖੀ ਬੈਠਾ ਰਹੇ ਕੌਣ ਪੁੱਛਦਾ ਇਸ ਗੱਲ ਨੂੰ ਜਾਲ ਦੇ ਫਸਿਆ ਹੋਇਆ ਸੀਸ ਪਟਕਤ ਜਾ ਕੇ ਕਾਨ ਮੇ ਖਜੂਰਾ ਧਸਾ ਕੰਨ ਸੀਸ ਢਟਕਾਉਂਦਾ ਹੁੰਦਾ ਜੇ ਕੰਨ ਖਜੂਰਾ ਪੈ ਜਾਏ ਕਿਸੇ ਦੇ ਕੰਨ ਚ ਸੀਸ ਢਟਕੂਏ ਵਜਾ ਨਾਲ ਕੀ ਕਰੂਗਾ ਕਿਉਂ ਕੰਨ ਖਜੂਰਾ ਪੈ ਜਾਏ ਛੋਟਾ ਜਾਂ ਕੰਨ ਖਜੂਰਾ ਜਾਂ ਵੱਡ ਜਾਏ ਜਾਂ ਕੋਈ ਚੀਜ਼ ਹੋਰ ਜਾਨਵਰ ਪੜ ਜਾਏ ਤੇ ਫੇਰ ਉਹ ਸਿਰ ਤੋਂ ਢਟਕੜਾਏਗਾ ਕੀ ਕਰੂਗਾ ਹੂੰ ਮੂੰਡ ਨੇ ਜਿਹੜੇ ਵਗਰੂ ਵਗਰੂ ਕਰਦੇ ਨੇ ਹੋਰ ਨੇ ਬੋਲ ਨੂੰ ਨਿਕਲਦਾ ਉਹਨੂੰ ਕਿਹਾ ਹੋਇਆ ਸਿੱਧਾ ਵੇਚਿਆ ਨ ਹੋਇਆ ਪਟਕਦਾ ਹੁੰਦਾ ਜਦ ਬੇ ਉਹ ਤਾਂ ਹੁੰਦਾ ਜਿਹਦੇ ਕੰਮ ਚ ਖਜੂਰਾ ਤਾਂ ਸੇ ਜਾਂਦਾ ਮੂੜ ਛੱਟ ਕਰਤਾ ਮਿੱਤਰ ਪੁੱਤਰ ਹੋਂ ਕੋ ਜਿਹੜੇ ਸਰੂ ਬਹੁਤ ਜਿਆਦਾ ਮਾਰਦੇ ਨੇ ਥੱਲੇ ਦੇ ਦੇ ਕੇ ਉਹ ਗੌਣ ਮਾਰਦੇ ਨੇ ਉਹ ਗੌਣ ਵਾਲੇ ਕਵਾਲੀਆਂ ਵਾਲੇ ਉਹਨੇ ਇੱਕ ਹੋਰ ਹੁੰਦੇ ਨੇ ਇਹਨਾਂ ਦੇ ਗਾਣ ਜਿਹੜੇ ਬਣਾਉਂਦੇ ਸੀ ਇਹਨਾਂ ਦੇ ਵਿੱਚ ਆਪ ਪਛਾੜਿਆ ਧਰਤੀ ਨਾਲ ਉਹ ਵੀ ਧਰਮਕ ਬੰਦੇ ਸੀ ਕਹਿੰਦੇ ਉਹ ਪਿਛાડਦੇ ਹੁੰਦੇ ਨੇ ਐਸੇ ਪਟਪਟੂਆ ਤਾਂ ਜਿਨ੍ਹਾਂ ਦਾ ਕੋਈ ਸੰਬੰਧੀ ਮਰ ਜਾਇਆ ਕੋਈ ਘਰ ਦਾ ਮਰ ਜੇ ਮਿੱਤਰ ਪੁੱਤਰ ਹੂ ਆ ਤੇ ਇਹ ਚੱਗੀ ਭੱਤੀ ਹੈ ਤੁਹਾਡੀ ਪਟਪਟੂਆ ਵਾਲੀ ਆਖ ਕੋਚ ਰਈਆ ਫੂਲ ਕੋ ਸਦਾ ਕਨੇ ਅੱਖ ਖਾਣ ਵਾਲੇ ਨੇ ਜਿਹੜੇ ਅੱਜ ਜੋਗੀ ਨੇ ਗੁਰਦਾਰਨ ਨੂੰ ਵੀ ਅੱਖ ਕਾ ਪਛਾਈਆ ਲਿਖਿਆ ਹੋਇਆ ਉਹਨਾਂ ਨੇ ਰੇਤ ਆਕਾ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਉਹ ਜਿਹਨੂੰ ਕਹਿੰਦੇ ਨੇ ਗੁਰਦਾਸ ਦੀ ਪਾਈ ਜਾਣ ਬੁੱਝ ਕੇ ਲਿਖੀ ਹੈ ਗੁਰਦਾਰਨ ਦੇ ਨੂੰ ਖਿਲਾਫ ਵਾਲੇ ਉਹਨਾਂ ਨੇ ਸ੍ਰੀ ਗੰਦ ਚੇਲਿਆਂ ਨਾਲ ਲਿਖਾਈ ਹੋਈ ਹੈ ਬਾਅਦ ਅੰਦਰੋਂ ਲੱਗਦਾ ਸੀ ਨਾ ਆਪ ਜੋ ਖਾਂਦੇ ਸੀ ਜੋਗੀ ਜੋਗੀਆਂ ਦਾ ਛੇਲ ਸ੍ਰੀ ਚੰਦ ਯੋਗਿਆਂ ਨੇ ਕਿਹਾ ਸੀ ਵੀ ਤੈਨੂੰ ਦਿੰਦੇ ਸਾਰਿਆਂ ਦਾ ਗੁਰੂ ਬਣ ਲੈਣੇ ਤ੍ਰੇਤ ਅਕਾ ਹਾਰ ਦਾ ਰੋੜਾ ਵੀ ਖਾਣ ਵਾਲੇ ਜਿਹੜੇ ਨੇ ਆਖ ਕੋ ਚਰੀਆ ਫਲ ਫੁੱਲ ਖਾਣੇ ਵਾਲੇ ਨੇ ਸਦਾ ਸਦਾ ਹੀ ਫਲ ਫੁੱਲ ਖਾਣੇ ਨੇ ਰੋਟੀ ਨਹੀਂ ਖਾਣੀ ਬਾਣੇ ਕੋ ਉਪਰ ਲਈਆ ਔਰ ਦੂਸਰੋਂ ਨੇ ਨਾ ਬੱਕਰੀਆਂ ਦੇ ਉਦੇ ਬਿਨਾ ਹੋਰ ਕੋਈ ਨਹੀਂ ਹੋ ਸਕਦਾ ਜਿਹੜੇ ਇਦਾਂ ਨੇ ਨੇ ਫਲ ਫੁੱਲ ਖਾਂਦੇ ਨੇ ਹੋਰ ਕੁਝ ਮਿਲ ਜਾ ਖਾ ਲੈਂਦੇ ਨੇ ਭੁੱਖ ਸੋ ਭੁੱਖ ਦੇ ਨੀ ਕੁਝ ਨਹੀਂ ਹੁੰਦਾ ਉਹਨੂੰ ਸੱਗਿਆ ਬੰਦੇ ਸਕਦਾ ਮੈਂ ਉਹਨੂੰ ਭੋਕ ਕਹੂੰਗਾ ਹੋਰ ਕੁਝ ਨਹੀਂ ਮੈਨੂੰ ਸਮਝ ਆਉਂਦੀ ਕੀ ਕਹਾਂ ਉਹ ਹੈ ਭੋਕਾ ਖਾ ਲਿਆ ਹਰ ਖਾਲੀ ਹੋ ਗਿਆ ਵੋਕਰ ਵਾਪਰ ਦਿੰਦੇ ਖਾਲੀ ਹੋ ਜਾਂਦਾ ਸਮਝ ਨਹੀਂ ਕਹਾਂ ਪਈਓ ਭੇਡ ਜੋ ਕਸਤ ਸੀਸ ਵਿਸ਼ਰਣ ਸੋ ਬੇਚਿਬ ਸੋ ਬੇਚਿਨ ਸੋ ਬੇਚਿਬ ਤਾਂ ਕੀ ਹੋ ਗਿਆ ਜੇ ਆ ਰਹੀ ਹੈ ਇਹ ਬੇਚਨ ਉਹ ਜਿਹੜੇ ਆਏ ਨੇ ਨਾ ਸਰੇਵੜੇ ਇਹ ਇਕੱਠੇ ਹੋ ਕੇ ਕਦੂਏ ਦਾ ਸਰਕਸ ਆਉਂਦੇ ਹੁੰਦੇ ਨੇ ਬੜਾ ਰੋਂਦੇ ਨੇ ਜਿਵੇਂ ਭੇਡ ਸਰਕਸ ਆਉਂਦੀ ਨਾ ਜੇ ਬਲਚਣਾ ਰਗੜਦੀ ਹੈ ਉਹ ਤਾਂ ਉਹਦੇ ਖਾਜ ਹੁੰਦੀ ਹੁੰਦੀ ਹੈ ਤਾਂ ਰਗੜਦੀ ਹੈ ਸਰ ਕੀ ਹੋ ਗਿਆ ਜੇ ਭੇਡ ਬੇਸ਼ਰਮ ਕਿਸੇ ਨੇ ਸਰਕਸ ਹੁੰਦੀ ਹੈ ਫਿਰ ਆਪਣਾ ਬਾਟੀ ਕੁੱਪਛਈਆ ਬੋਲ ਪੁੱਛ ਲਈ ਜੇ ਜੋਕਸੋ ਜੇ ਨਾ ਮੱਟੀ ਮੱਟੀ ਖਾਦ ਨੇ ਸਿਰਫ ਕਹਿੰਦੇ ਹੋਰ ਕੁਝ ਖਾਣੇ ਉਹਨੇ ਬਾਅਦ ਕੀ ਲਿਖਿਆ ਹੋਇਆ ਇਹਦੇ ਖਿਲਾਫ ਲਿਖਿਆ ਹੋਇਆ ਕਹਦੇ ਜੇ ਮਿੱਟੀ ਦੀ ਖਾਣ ਵਾਲੀ ਦੀ ਗੱਲ ਤੁਸੀਂ ਪੁੱਛਣੀ ਮਿੱਟੀ ਖਾਣ ਦੀ ਜੋਗ ਨਾਲ ਗੱਲ ਕਰਕੇ ਦੇਖ ਲਓ ਜੋਗ ਦਾ ਕੀ ਹਾਲ ਪੁੱਛੀ ਜੀ ਜੋਗ ਜੋਗ ਨਹੀਂ ਦੇ ਵਿੱਚ ਉਹ ਮਿੱਟੀ ਉਹ ਖਾਦੀ ਹੈ ਉਹਨੂੰ ਕਿੰਨਾ ਕੰਮਦਾ ਹੁੰਦਾ ਹੁੰਦਾ ਜੋਗ ਨੂੰ ਕਿੱਦਾਂ ਉਹਨੂੰ ਗਿਆਨ ਹੋ ਗਿਆ ਉਹ ਮਿੱਟੀ ਖਾ ਕੇ ਉਹ ਪੁੱਛ ਲਓ ਉਹਦੀ ਜ਼ਿੰਦਗੀ ਕਹੇ ਜੀ ਹੈ ਜੋ ਕੀ ਕਰਦੀ ਆ ਤਾਂ ਮਿੱਟੀ ਖਾਂਦੀ ਆ ਫਿਰ ਕਹਿੰਦਾ ਫੁੱਟੀ ਹੁੰਦੀ ਹੈ ਜੇ ਕੋਈ ਲੱਕ ਆ ਜਾਏ ਫਿਰ ਉਹ ਖੂਨ ਚੂਸਦੀ ਹੈ ਹੋਰ ਤਾਂ ਕੋਈ ਨਹੀਂ ਕਰਦੀ ਚੱਪੜੀ ਕੋਈ ਜਾਨਵਰ ਵੱਢ ਜਾ ਉਹਦੇ ਲੱਗ ਜਾਂਦੀ ਹੈ ਖੂਨ ਪੀ ਲੈਂਦੀ ਇਹ ਆ ਫਿਰ ਦਾ ਹਾਂ ਹਰ ਗੱਲ ਦੇ ਪਿੱਛੇ ਕੁਝ ਨਾ ਕੁਝ ਹੁੰਦਾ ਹੈ ਕਿਤੇ ਜੋਗ ਦਾ ਹੋਈ ਨਹੀਂ ਵੀ ਜੋਗ ਕਹਤਾ ਜੋ ਖੂਨ ਵੀ ਪੀ ਲੈਂਦੀ ਹੈ ਕਾਮਨਾ ਅਧੀਨ ਕਾਮ ਕਰੋਧ ਮੈਂ ਪ੍ਰਵੀਨ ਕਾਮਨਾ ਅਧੀਨ ਮਨ ਦੇ ਵਿੱਚ ਹਰ ਵਤ ਕਾਮਨਾ ਕੁਛ ਨਾ ਵਾਇਦੀ ਇਹਦੇ ਤੋਂ ਅਧੀਨ ਆਪਣੀ ਕਾਮਨਾ ਦੇ ਅਧੀਨ ਚੱਲਦਾ ਪਰਮੇਸ਼ਰ ਦੇ ਹੁਕਮ ਦੇ ਪ੍ਰਵੀਨ ਇੱਕ ਭਾਵਨਾ ਬਹੀਨ ਕੈਸੇ ਭੇਟਾਂ ਸੋ ਭਾਵਨਾ ਬਹੀਨ ਕੈਸੇ ਭੇਟਾਂ ਪਰਲੋਕ ਸੋ ਪਰਲੋਕ ਸੋ ਭਾਵਨਾ ਹੈ ਜੀ ਤੇਰੇ ਵਿੱਚ ਪਰਲੋਕ ਦੀ ਪਰ ਲੋਗ ਦਿੱਤਾ ਭੁੱਖੇ ਹੀ ਉਧਰ ਹੈ ਫਿਰ ਉਹਦੇ ਨਾਲ ਤੂੰ ਪਹੁੰਚੇਗਾ ਕਿਵੇਂ ਉੱਥੇ ਪਹੁੰਚ ਜਾਏਗਾ ਕਿਵੇਂ ਪਰ ਲੋਗ ਜਾਏਗਾ ਕਿਵੇਂ ਪਰ ਲੋਗ ਤੇ ਤੈਨੂੰ ਪ੍ਰਾਪਤ ਹੀ ਹੈ ਉਸੇ ਚੀਜ਼ ਮਗਰ ਫਿਰਦਾ ਭਜੇ ਨਾਚਿਓਈ ਕਰਤ ਮੋਰ ਦਾਦਰ ਕਰਤ ਸ਼ੋਰ ਬੋਰ ਦਾ ਕੰਮੇ ਨਾ ਚਲੋ ਡੱਡੂਆਂ ਦਾ ਕੰਮੇ ਉਹੀ ਬੋਲੀ ਜਾਣਾ ਝੋਰ ਕਰ ਲੋ ਡੱਡੂ ਕੜੈਂਕੜਾਂ ਕਰੀ ਜਾਂਦੇ ਨੇ ਮੈਂ ਮਤਲਬ ਬੋਰ ਨੱਚਿਆ ਕਰਦਾ ਸਦਾ ਕਣਕੋਰ ਕਣ ਕਰਿਓ ਜਿਹੜਾ ਜਿਹੜਾ ਬਦਲ ਹਮੇਸ਼ਾ ਕਰਦਾ ਰਹਿੰਦਾ ਗਰਮੂ ਕ ਬਦਲਾ ਕਰਦਾ ਰਹਿੰਦਾ ਉਹਦੀ ਗਰਜਣ ਨੂੰ ਸੁਣ ਕੇ ਜਿਹੜੇ ਗੁਰਬਖਨੇ ਹੋਰ ਨੇ ਦੂਏ ਗੁਰਸਿੱਖ ਨੇ ਉਹ ਖੁਸ਼ ਹੁੰਦੇ ਨੇ ਨੱਚਦੇ ਨੇ ਸਾਜ ਪ੍ਰਗਟ ਹੁੰਦਾ ਹੈ ਜਾਂ ਸੱਚ ਪ੍ਰਗਟ ਹੁੰਦਾ ਹੈ ਤਾਂ ਕਰਕੋਰ ਹੁੰਦੀ ਹੈ ਜਿਹਨਾਂ ਨੂੰ ਸੱਚ ਮਿੱਠਾ ਲੱਗਦਾ ਉਹਨਾਂ ਨੂੰ ਚੋ ਚੜਦਾ ਬੋਲ ਰਹਾ ਕਰਤ ਸ਼ੋਰ ਡੱਡੂ ਕੀ ਹੈ ਡੱਡੂ ਜਦ ਬਦਲ ਉਹ ਵਿਰੋਧ ਦਾ ਉਹ ਕੜਾ ਕੜਾ ਕਰੀ ਆਪਣੀ ਕੜਾ ਕੜਾ ਕਰਨ ਵਾਲੇ ਵੀ ਉਹ ਨੇ ਸੱਚ ਦੇ ਖਿਲਾਫ ਉਹਨੇ ਸੱਚ ਦੇ ਖਿਲਾਫ ਬੋਲਣ ਵਾਲੇ ਨੇ ਕੜਾ ਕੜਾ ਆ ਐਵੇਂ ਹੀ ਬੇਮਤਲਬ ਦੀ ਗੱਲ ਸੋ ਰੇੜੀ ਇੱਕ ਪਾਏ ਠੰਡੇ ਸਦਾ ਬਣਮੈ ਰਹਿਤ ਬ੍ਰਿਛ ਜਿਹੜੇ ਬ੍ਰਿਛ ਨੇ ਇੱਕ ਲੰਤ ਪਾ ਰੇ ساری ਜ਼ਿੰਦਗੀ ਖੜੇ ਰਹਿੰਦੇ ਨੇ ਜੰਗਲ ਚ ਇੱਕ ਲੰਤ ਪਾਰ ਖੜਨ ਵਾਲੇ ਵੀ ਤੇ ਲੋਕ ਤਪਸਵੀ ਹੈਗੇ ਨੇ ਉਹ ਕਹਿੰਦੇ ਤੁਸੀਂ ਤਾਂ ਘੰਟਾ ਦੋ ਘੰਟੇ ਚਾਰ ਘੰਟੇ ਖੜਜੋਗੇ ਪਰ ਇਹ ਜਨ ਨਾਲ ਜੰਮਿਆ ਉਦੋਂ ਦਾ ਇੱਕ ਲੰਤ ਪਾ ਰਿਆ ਉਹਨੂੰ ਹੈ ਹੀ ਦੀ ਵਿਚਾਰੇ ਦੀ ਹਾਏ ਇੱਕ ਉਹ ਵੀ ਖੜਾ ਹੋ ਹੂਕ ਭੂਕ ਭਾਮ ਭੂਮ ਸ਼ਰਾਵਕ ਧਰਤ ਹੈ ਜਿਹੜੇ ਸ਼ਰਾਵਕ ਨੇ ਨੇ ਉਹ ਵਿਚਾਰੇ ਪਾ ਨੇ ਕੋਈ ਕੀੜਾ ਕੋਈ ਚੀਜ਼ ਨਾ ਆ ਜਾਏ ਤੇ ਪਾਪ ਨਾ ਹੋ ਜਵੇ ਉਹ ਐ ਧਰਦੇ ਨੇ ਪੈਰ ਬਹੁਤ ਧਿਆਨ ਨਾਲ ਪਾਣ ਅਨੇਕ ਜੁਗ ਏਕ ਠਾਉਰ ਬਾਸ ਕਰਾ ਇੱਕ ਠੋਰ ਬਾਸਕਰ ਹੈ। ਜੁਗ ਇੱਕ ਠੋਰ ਬਾਸਕਰ ਹੈ। ਪਹਨ ਅਨੇਕ ਜੁਗ ਇੱਕ ਠੋਰ ਬਾਸਕਰ ਹੈ। ਹਾਂ ਪੱਥਰ ਜਿਹੜਾ ਹੈਗਾ ਜਿੱਥੇ ਰੱਖਦਾ ਕਿੰਨਾ ਤੱਕ ਉੱਥੇ ਹੀ ਹੀ ਨਹੀਂ। ਪੱਥਰ ਜਿੱਥੇ ਰੱਖਦਾ ਉਹ ਕੋਈ ਹਲਾਉ ਤਾਂ ਹਿਲੇਗਾ। ਜਿਹੜੇ ਕਿਥੋਂ ਸਵਾਲ ਦੀ ਬੈਠਣ ਵਾਲੇ ਨੇ ਉਹ ਪੱਥਰ ਨੇ। ਉਹਨਾਂ ਪੱਥਰਾਂ ਦੇ ਬਰਾਬਰ ਨੇ ਉਹ ਜਿਵੇਂ ਪੱਥਰ ਜਿੱਥੇ ਪਏ ਪਏ ਵਿਚਾਰਾ ਪਹਾੜ ਜਿੱਥੇ ਖੜਾ ਖੜਾ ਇੱਕੇ ਥਾਂ ਬਾਹਨਵਾਸ ਰੱਖਦਾ ਉਹ ਕਾਂ ਔਰ ਚੀਲ ਦੇਸ਼ ਦੇਸ਼ ਵਿਚਰਤ ਇਲ ਚੀਲ ਜਿਹੜੀ ਹੈ ਉਹ ਇੱਕ ਦੂਰੇ ਦੇਸ਼ ਜਾਂਦੀ ਹੈ ਇਹ ਆਦਾ ਜੋਗੀ ਦੇਸ਼ਾਂ ਪਰਦੇਸਾਂ 'ਚ ਘੁੰਮਦੇ ਨੇ ਜਾਂ ਫਿਰ ਇੱਕੋ ਥਾਂ ਬੈਠੇ ਰਹਿੰਦੇ ਨੇ ਇੱਕੋ ਥਾਂ ਬੈਠੇ ਰਹਿੰਦੇ ਨੇ ਪੱਥਰ ਵਰਗੇ ਨੇ ਜੇ ਕੋ ਬੁਧੇ ਨੇ ਜਿਆਦਾ ਵਚੀਲ ਰਹੋ ਆਪਣਾ ਕੌਣ ਦੀ ਗੱਲ ਐ ਕੋਈ ਨਾ ਦੀ ਉੱਥੇ ਜਿਵੇਂ ਕੌਂ ਫਿਰਦੇ ਨੇ ਚੀਲ ਫਿਰਦੀ ਐ ਚੀਲ ਆਪਣੇ ਖੁਰਾਕ ਵਾਸਤੇ ਗਿਆਨ ਕੇ ਬਿਹੀਨ ਮਹਾਂਦਾਨ ਮੈਂ ਨਾ ਹੋਜੋਏ ਹੋਜੇ ਲੀਨ ਗਿਆਨ ਕੇ ਬਿਹੀਨ ਗਿਆਨ ਤੋਂ ਸਖੜੇ ਨੇ ਜਿਹੜੇ ਲੋਕ ਦੇਖੋ ਗੱਲ ਗਿਆਨ ਤੇ ਆ ਕੇ ਮੁੱਕਦੀ ਐ ਗੱਲ ਗਿਆਨ ਤੇ ਆ ਕੇ ਮੁੱਕਦੀ ਐ ਗਾਂਦੇ ਗੁਰ ਬੋਲ ਕਾ ਦੀਏ ਗਾਂਦੇ ਕਬੀਰ ਕੰਨ ਕਬੀਰ ਨੇ ਕਹਤਾ ਰਹੀ ਬਲਾਂ ਜੈ ਗੱਲ ਤਰਮ ਜੇ ਧਰਮ ਗਿਆਨ ਨਹੀਂ ਉਹਦੇ ਧਰਮ ਹੋਈ ਇਹ ਇਹਨਾਂ ਦੇ ਵਿੱਚ ਗਿਆਨ ਕੁਛ ਨਹੀਂ ਲੋਕਾਂ ਦੇ ਵਿੱਚ ਇਸ ਕਰਕੇ ਨੂੰ ਧਰਮ ਨਹੀਂ ਬਣਿਆ ਗਿਆ ਕਬੀਰ ਨੇ ਜੋ ਕਿਹਾ ਸੀ ਉਹੀ ਕਹਿ ਰਹੇ ਨੇ ਤੁਸੀਂ ਪਾਚਾ ਉਲਟਰੀ ਕੋਈ ਕਹਿ ਰਹੇ ਸਾਵਧਾਨ ਕਰ ਰਹੇ ਜੀ ਉਹਨੇ ਤਾਂ ਗੱਲ ਸੁਮੱਚੀ ਕਹਿਤੀ ਸੀ ਜੇ ਗਿਆਨ ਨਹੀਂ ਧਰਮ ਨਹੀਂ ਇਹਨਾਂ ਨੇ ਉਹਦਾ ਵਿਆਖਿਆ ਕਰਕੇ ਦਸਤੀ ਦਰਸ਼ਣ ਕਰਾਤਾ ਸਾਰਿਆਂ ਦਾ ਜਿਹੜੇ ਨਾ ਕੈਟਾਗਰੀਆਂ ਨੇ ਨਾ ਧਰਮਦਿਓ ਇੱਥੇ ਗਿਆਨ ਹੈ ਨਹੀਂ ਉਹਨੂੰ ਧਰਮ ਨਾ ਮੰਨਿਓ ਤੁਸੀਂ ਉਹ ਖੋਲ ਕੇ ਖੁਲਾਸਾ ਕਰਕੇ ਦਿਖਾਤਾ ਦਰਸ਼ਣ ਕਰਾਤਾ ਸਾਰਾ ਗਿਆਨ ਕੇ ਬਹੀਨ ਮਹਾਦਾਨ ਮੈਨਾ ਹੋ ਜਾਏ ਲੀਨ ਗਿਆਨ ਕੇ ਜਿਹੜਾ ਹੈ ਆਤਮ ਜੀ ਦੇ ਵਿੱਚ ਜਲੀਨ ਕੇ ਹੋ ਵਹਾਦਾਨ ਕੀ ਵਦਾਨ ਗਲਦਦਾਨ ਰੋਦਦਾਨ ਮਹਾਦਾਨ ਵਹਾਦਾਨ ਤੇ ਵੀ ਜਲੀ ਨਹੀਂ ਕਿਵੇਂ ਹੋ ਜੂਗਾ ਜਿਹੜਾ ਦਾਨ ਹੈ ਖਾ ਸਿਖਾਂ ਦਾ ਗੁਰੂ ਖਾਨ ਦਾ ਗੁਰਮੁਖ ਦਾ ਨਾਮ ਦਾਨ ਇਸਰਦ ਨਾਮ ਲੈਣਾ ਆ ਦੇਣਾ ਦਾਨ ਨਾਲ ਦੇਣਾ ਇਹ ਦੇ ਵਿੱਚ ਜੀਰਨ ਕਰਨਾ ਇਹੀ ਉਹਨਾਂ ਦਾ ਕੰਮ ਹੈ ਹੋਟੋ ਕੰਮ ਨਹੀਂ ਹੈ ਵਹਾਦਾਨ ਗਿਆਨ ਦਾ ਦਾਨ ਬਿਦਿਆ ਦਾ ਮਹਾਨ ਦਾਨ ਕਹਨ ਲਗਦਾ ਹੈ ਜਿਹੜੇ ਲੋਕ ਵਿਦਿਆ ਦਾ ਦਾਨ ਕਰਨ ਮਹਾਨ ਦਾਨ ਉਹ ਵਿਦਵਾਨ ਹੋ ਸਕਦੇ ਨੇ ਸੰਸਾਰੀ ਆਦਮੀ ਉਹ ਸੰਸਾਰੀ ਨੇ ਭਗਤ ਨਹੀਂ ਹੋ ਭਗਤਾ ਦਾ ਸੰਸਾਰੀਆਂ ਜੋੜ ਕਦੇ ਆਇਆ ਜਿਹੜੇ ਵਿਦਿਆ ਦਾ ਦਾਨ ਕਰਿਆ ਨੇ ਉਹ ਸੰਸਾਰੀ ਨੇ ਸਾਰੇ ਭਗਤ ਨਹੀਂ ਹੋ ਸਕਦੇ ਉਹ ਮਾਇਆ ਧਾਰੀ ਨੇ ਸਾਰੇ ਵਿਦਿਆ ਦਾ ਦਾਨ ਕਰਨ ਵਾਲੇ ਸਾਡੇ ਵਿਦਵਾਨ ਜਿੰਦੇ ਨੇ ਸਰਕਾਰੀ ਬੰਦੇ ਨੇ ਹੋਰ ਨੇ ਉਬਿਜਾ ਦੇ ਅਰਕ ਦੇ ਬਿਜਾ ਦੇ ਮੰਦਰ ਕੈ ਨਦੇ ਬਿਜਾ ਦੇ ਮੰਦਰ ਦੀ ਹੈਗੇ ਹੋਂ ਬਿਜਾ ਦਾ ਛੱਲਾ ਮੰਦਰ ਬੁੱਧਰਗਾ ਦੇ ਮੰਦਰ ਛੱਲਾ ਹੀ ਦੀ ਇਹ ਵੀ ਇਹ ਜੇ ਮੰਦਰ ਨੇ ਛੱਲਾ ਹੋਣ ਵਾਲੇ ਉਹਨਾਂ ਤੇ ਉਹ ਬਿਜਾ ਦੇ ਬੰਦਾ ਦਾ ਛੱਲਾ ਹੀ ਜਾਂਦਾ ਨੇ ਗਰੀਬ ਉੱਥੇ ਪੜਾਇ ਨਹੀਂ ਸਕਦਾ ਬੁੱਧਰ ਦਾ ਫ੍ਰੀ ਚੀਜ਼ ਮਿਲਦੀ ਹੈ ਆਪਣੇ ਮਰ ਜੀ ਬੰਦਾ ਕੋਈ ਦੇ ਦਵੇ ਜਾ ਕੇ ਕੋਈ ਉਹ ਵੀ ਕਿਹੜੇ ਜਾਲ ਮੰਦਰ ਨੇ ਜੇ ਮੰਦਰ ਕੋਈ ਦਿੰਦਾ ਆਪਣੀ ਮਰਜ਼ੀ ਨਾਲ ਦਿੰਦਾ ਜਾ ਕੇ ਕੋਈ ਜ਼ਰੂਰੀ ਦਾ ਹੈ ਨਹੀਂ ਉਥੇ ਕੋਈ ਦੇ ਤੂੰ ਜਾ ਕੇ ਤੇਰੇ ਜੋ ਗੱਲ ਜਿਹੇ ਦੇ ਇੰਨਾ ਸਟੇਟ ਦਾ ਮੁਦਰਾ ਦਾ ਹੈਗਾ ਵਿਦਿਆ ਦਾ ਮੰਦਰ ਤੁਸੀਂ ਹਜ਼ਾਰਾਂ ਰੁਪਏ ਲੈ ਲਾਹਣ ਦੇ ਵਿਦਿਆ ਦੇ ਮੰਦਰ ਕਹਿੰਦਾ ਤੁਸੀਂ ਵਿਦਿਆ ਦੇ ਮੰਦਰ ਦਾ ਤਾਂ ਨਹੀਂ ਜੇ ਤੁਸੀਂ ਕੋਈ ਡੋਨੇਸ਼ਨ ਹੋਵੇ ਹੀ ਰਿਹਾ ਤੁਸੀਂ ਕੋਈ ਲਵ ਨਹੀਂ ਰਿਹਾ ਤੁਸੀਂ ਕੁਝ ਹੋਈ பாவਨਾ 비힌 দীন کیسے کے ترت ہیں பாவਨਾ 비힌 பாவਨਾ تے 비힌 দীন کیسے کے ترت ہیں دین کیسے کے ترت ہیں کیڑا ธรรม ہے جڑا ترجوں گا کیڑا کیڑا کو ترہ ہے گا دین تربو کوئی ธรรม بھی باوਨਾ تے 비힌 تر ترداری ترداری فے جے اچھا نہیں ਉਦੈ ਇੱਛਾ ਜੇ ਤੁਹਾਡੀ ਹੈਗੀ ਤਰਨ ਦੀ ਤਾਂ ਤਰੂਗਾ ਜੇ ਇੱਛਾ ਹੀ ਨਹੀਂ ਹੈ ਤਰਨ ਦੀ ਫੇਰ ਹੀ ਤਾ ਜੈਸੇ ਇੱਕ ਸਵੰਗੀ ਕਉ ਜੋਗੀਆ ਬੈਰਾਗੀ ਬਣ ਜੈਸੇ ਇੱਕ ਸੁੰਗੀ ਸਵੰਗੀ ਕਉ ਜੋਗੀਆ ਬੈਰਾਗੀ ਬਣ ਜਿਵੇਂ ਕੋਈ ਸੰਗੀ ਹੁੰਦਾ ਸੰਗੀ ਹੁੰਦਾ ਸੰਗ ਧਾਰਦਾ ਯਾਨੀ ਜਿਵੇਂ ਆਪਣਾ ਬਹੁ ਰੁਪਿਆ ਬਹੁ ਰੂ ਬਹਿ ਰੁਪਿਆ ਹੁੰਦਾ ਕਦੇ ਜੋਗੀ ਹੋ ਜਾਂਦਾ ਕਹੂੰ ਬੈਰਾਗੀ ਬਣ ਕਦੇ ਬਰਾਗੀ ਹੋ ਜਾਂਦਾ ਉਹਦਾ ਵਿਚਾਰਾ ਬੁਗਦਾ ਕੋਈ ਰੂਪ ਤੇ ਕਦੇ ਪੁਰਸਾਲਾ ਵੱਡ ਜਾਂਦਾ ਸਮਝਿਆ ਨਹੀਂ ਕਬੂ ਹੂੰ ਭੇਸ ਬਣ ਕੇ ਦਿਖਾ ਲਈ ਕਦੇ ਉਸਨਿਆਸੀ ਬਣ ਕੇ ਫਿਰਦਾ ਰਹਿੰਦਾ ਬੁਗਦਾ ਸੰਨਿਆਸੀ ਦਾ ਭੇਸ ਬਣਾ ਕੇ ਦਿਖਾ ਦਿੰਦਾ ਉਹਦਾ ਵੈਸੇ ਕਰਦਾ ਵਿਚਾਰਾ ਕਹੂੰ ਪੌਣ ਹਾਰੀ ਕਹੂੰ ਬੈਠੇ ਲਾਇ ਤਾਰੀ ਕਿਤੇ ਪੌਣ ਹਾਰੀ ਬਣ ਕੇ ਬਹਿ ਜਾਂਦਾ ਕਿਤੇ ਟਾੜੀ ਲਾ ਕੇ ਬਹਿ ਜਾਂਦਾ ਟਾੜੀ ਸੁਬਦੀ ਲਾ ਕੇ ਕਹੂੰ ਲੋਭੀ ਖਮਾਰੀ ਸੋ ਅਨੇਕ ਗੁਣ ਗਾਵਈ ਕਿਤੇ ਲੋਭ ਦੀ ਖਮਾਰੀ ਚੁੰਦਾ ਲੋਭ ਦੀ ਖਮਾਰੀ ਸੋ ਅਨੇਕ ਗੁਣ ਗਵਾਈ ਹਾਂ ਅਨੇਕਾਂ ਜਿਹੜੇ ਗੋਲ ਗੁਣ ਗਾਇਨ ਕਰਦਾ ਹੋ ਜਿਵੇਂ ਲੋਭ ਕਰਕੇ ਰੱਬ ਨੂੰ ਬੜਾ ਤੂੰ ਬੜਾ ਦਿਆਲੂ ਆਂ ਕਰਫਾ ਲੋ ਆਂ ਆ ਫਲਾਣਾ ਲੋਕਾਂ ਦੇ ਕੋਲ ਗੈਰ ਕਾਣੇ ਮਗ ਤੇ ਫਿਰਦੇ ਨਹੀਂ ਹੁੰਦੇ ਹਾਂਜੀ ਮਗ ਤੇ ਫਿਰਦੇ ਹੁੰਦੇ ਜਿਹੜੇ ਲੋਕਾਂ ਦੇ ਉੱਚੇ ਚਵਾਰੇ ਵਾਲੇ ਉਹ ਫਲਾੜਿਓ ਦਾਤਾਰਾ ਇਹ ਕਰੋ ਮਹਿਲ ਚਵਾਰੇ ਬਣੇ ਰਹਿਣ ਉਹ ਕਰਦੇ ਤੂੰ ਉਹ ਥੋੜੇ ਗੌਂਦੇ ਨੇ ਕੋਲੋਂ ਕਹੂੰ ਬ੍ਰਹਮਚਾਰੀ ਕਉ ਹੱਥ ਪੈ ਲਗਾਵੇ ਵਾਰੀ ਕਹੂੰ ਬ੍ਰਹਮਚਾਰੀ ਕਿਤੇ ਬਣਿਆ ਹੋਇਆ ਆਦਮੀ ਕਿਤੇ ਹੱਥ 'ਤੇ ਲਗਾਵੇ ਵਾਰੀ ਹੱਥ ਬੀਜਿਆ ਹੋਇਆ ਕਹੂੰ ਡੰਡ ਧਾਰੀ ਹੋ ਕੇ ਕਿਤੇ ਡੰਡ ਧਾਰੀ ਹੋ ਕੇ ਡੰਡੋਤ ਕਰ ਕਰਕੇ ਉਹ ਜਾਂਦੇ ਨਹੀਂ ਨਾਨਾ ਦੇਵ ਨੂੰ ਡੰਡੋਤ ਕਰਦੇ ਜਾਂਦੇ ਨੇ ਕੋਈ ਕਿਤੇ ਡੰਡੋਤ ਕਰਦੇ ਜਾਂਦੇ ਨੇ ਲੈ ਜੀ ਇਹ ਹਰ ਸਾਲ ਜਾਂਦਾ ਜੀ ਡੈਨੌਂਸ ਕਰਦਾ ਫਰਾਂਦੇ ਤੋਂ ਉਹਨੂੰ ਇਹ ਬਹੁਤ ਵੱਡ ਭਾਸ ਹੁੰਦੇ ਜਾਂਦਾ ਫਰਾਂਦੇ ਦੇ ਜਾਂਦਾ ਉਤਾਰਾ ਸਾਲ ਆਪਣਾ ਫਿਰ ਉਹ ਪੂਜਾ ਕਰਾਉਂਦਾ ਆਪਣੇ ਨਾਲ ਬੰਦੇ ਜੋੜੇ ਹੋਏ ਨੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਆਪਣੇ ਕਰਦਾ ਜਾਂਦਾ ਕਹਿੰਦਾ ਇਹ ਤਾਂ ਬਸ ਹੁੰਦੇ ਨੇ ਗੋਡੇ ਰਗੜੇਗੇ ਕੋਡੀਆਂ ਰਗੜੀਆਂ ਦੀਆਂ ਨਖ ਰਗੜਿਆ ਗਿਆ ਉਹਨੂੰ ਪਤਾ ਵੀ ਇੱਕ ਸਾਲ ਜਿੱਕ ਵਾਰ ਕਰਨਾ ਸਾਲ ਬਾਰ ਮੌਜਾ ਫਿਰ ਇਹ 5 ਸਾਲ ਚ ਇੱਕ ਵਾਰ ਕਰਨਾ ਫਿਰ ਮੌਜਾ ਕਾਮਨਾ ਅਧੀਨ ਪਰਿਓ ਨੱਚਤ ਹੈ ਨਾਚਨ ਸੋ ਉਹਦੇ ਪਿੱਛੇ ਜੋ ਵੀ ਹੈ ਪਰਿਓ ਨੱਚਤ ਹੈ ਨਾਚਨ ਕਾਮਨਾ ਅਧੀਨ ਰਚਦਾ ਹੋਇਓ ਕਰਤ ਨਾ ਕੇ ਸਭ ਕੋ ਇਹ ਤਾਂ ਕਰਦਾ ਉਹਦੀ ਸਾਲ ਬਾਰ ਰੋਟੀਆਂ ਵੰਦੂ ਨੇ ਫਿਰ ਆਪਣੇ ਕੋਲ ਸਮਝਿਆ ਨਹੀਂ ਇੱਕ ਵਾਰ ਕਰ ਲੋ ਕਹਿੰਦਿਆ ਤੋੜਨੇ ਦਾ ਆਪਰੇ ਜੇੜਦੇ ਵੀ ਨੇ ਸਾਰਾ ਸਾਲ ਫਿਰ ਬਹੁਤ ਜਿਆਦਾ ਦੁੱਧ ਲੋਕਾਂ ਦਾ ਭਗਦਾ ਸਾਡੀ ਵੀਰ ਤੇ ਸਮਝਿਆ ਨਹੀਂ ਤੋੜਨੇ ਬ੍ਰਹਮ ਲੋਕ ਪਾਵੇਈ ਕੇ ਬਹੀਨ ਬ੍ਰਹਮ ਲੋਕ ਤਾਂ ਨਹੀਂ ਤੈਨੂੰ ਮਿਲਣਾ ਆ ਤੇਰਾ ਜਿਹੜਾ ਤੂੰ ਕਰਦਾ ਜਿਹੜੀ ਤੈਨੂੰ ਇੱਛਾ ਹੋਵੇ ਮਿਲ ਜੂਗੀ ਦੰਦਰ ਵੀ ਚੱਲ ਜੂਗਾ ਤੇਰਾ ਜੇ ਖੀਰ ਦਾ ਚਲਾਇ ਜਾਇ ਜਾਂ ਇਹ ਪੂੜਿਆਂ ਦਾ ਦੁੱਧ ਚਲਾਇ ਜਾਇ ਜਾਂ ਹੋਰ ਸਭ ਕੁਝ ਹੋ ਜਾਊਗਾ ਸੰਸਾਰ ਦਾ ਆਕਾਰ ਸੇਵਾ ਜੇ ਨਹੀਂ ਵਰਤੀ ਲਈ ਇਹ ਵੀ ਹੋ ਬ੍ਰਹਮ ਲੋਗ ਨਹੀਂ ਪਹੁੰਚਦਾ ਬ੍ਰਹਮ ਲੋਗ ਨਹੀਂ ਪਹੁੰਚਿਆ ਚਲ ਬ੍ਰਹਮ ਲੋਗ ਪਹੁੰਚਣ ਵਾਸਤੇ ਹੋਰ ਕੁਝ ਇਹ ਸਭ ਕੁਝ ਛੱਡਣਾ ਪਊਗਾ ਇਹ ਸਭ ਕੁਝ ਤਿਆਗਣਾ ਪਊਗਾ ਜਿਹੜਾ ਕੁਝ ਕਰ ਰਹੇ ਹੋ ਤੁਸੀਂ ਬ੍ਰਹਮ ਲੋਗ ਦੀ ਭੁੱਖਾ ਲਈ ਕੰਮ ਨਹੀਂ ਕਰਦੇ ਭਗਤਾਂ ਨੇ ਕੰਮ ਨਹੀਂ ਕੀਤਾ ਕਿਸੇ ਇਹੜੇ ਬ੍ਰੋ ਲੋਕ ਗਾਇਨੇਵਨਾ ਨੇ ਕੰਮ ਕੀਤਾ ਹੀ ਨਹੀਂ। ਕੌਣ ਨੇ ਕਾਰ ਸੇਵਾ ਕੀਤੀ ਹੈ? ਕਾਰ ਸੇਵਾ ਨੂੰ ਪਿੱਛੇ ਵੀ ਤਾਂ ਮੰਦਰ ਸੀਗੇ। ਮੰਦਰ ਮੰਦਰੇ ਬਣਾਉਂਦੇ ਹੋ ਲੋਕ। ਵਧੀਆ ਮੰਦਰ ਬਣਾਉਂਦੇ, ਪੁਰਾਣੇ ਸੀ ਜਿਹੜੇ। ਗੋਦਾਨ 'ਚ ਕਿਹੜੀ ਭਗਤੀ ਹੁੰਦੀ ਹੈ? ਇਹੜੇ ਗੋਦਾਰੇ ਬਣਾ ਜਾਂਦੇ ਤਾਂ ਹੁੰਦਾ ਕੀ ਹੈ? ਜਿਹੜੇ ਕਹਿੰਦੇ ਨੇ ਗੋਦਾਨ ਅਸੀਂ ਸੇਵਾ ਕਰਦੇ ਆਂ, ਉੱਥੇ ਤਾਂ ਪਰਮਾਤਮਾ ਬਰੋਧ ਹੋ ਰਿਹਾ ਗੋਦ ਤੁਸੀਂ ਗੋਦਾਰੇ ਨੂੰ 10 ਕਰੋੜ ਰੁਪਇਆ ਲਾਈ ਜਾਂਦੇ। ਉਹ ਗੋਡਾਰਾਂ ਜੋ ਵੜਦਾ ਕੀ ਲੋਕਾਂ ਨੂੰ ਇਹ ਤਾਂ ਦੱਸੋ ਤੇ ਹੋ ਕੀ ਰਿਹਾ ਕਬਜ਼ਾ ਕੀਦਾ ਵਰਮਾ ਤੋਂ ਬਰੋੜ ਵਾਲਿਆਂ ਦਾ ਕਬਜ਼ਾ ਕਰਦਾਰੇ ਚ ਇਹ ਤਾਂ ਤੁਸੀਂ ਵੀ ਬਰੋਧੀ ਉਹਨਾਂ ਨੇ ਵੜ ਲਈਓ ਪਰ ਪੈਸੇ ਦੇ ਦੇ ਤੁਸੀਂ ਰਿਸ਼ਤਦਾਨ ਦੇ ਦੇ ਤੁਸੀਂ ਕਰ ਸੇ ਵਾ ਲੈ ਲਿਓ ਇਹਦੇ ਪਿੱਛੇ ਬਰੇ ਬਲੋ ਗਾਲੀ ਗਰਤ ਨਹੀਂ ਤੁਹਾਨੂੰ ਬਿਲਦੀ ਹਾਂ ਦੁਨੀਆਂ ਪੀ ਚਤ ਮਿਲ ਜਾਊ ਬਿਲਦੀ ਹੋਈ ਇਹ 2 4 ਦੁੱਧ ਜਤ ਦੁੱਧੀਆਂ ਕੁਛ ਨਹੀਂ ਹੁੰਦਾ ਇਹਦੇ ਵਿੱਚ ਇਹ ਕੋਈ ਬਹੁਤੀ ਲੰਬੀ ਚੌੜੀ ਸਮਝਦੇ ਨੇ ਉਹਨਾਂ ਦੀ ਨਗਾ ਤੁਸੀਂ ਕੁਛ ਨਹੀਂ 하게 ਉਹ ਤੁਹਾਨੂੰ ਹਲ ਵੀ ਨਹੀਂ ਕੋਈ ਸਮਝਦੇ ਤੁਸੀਂ ਆਪਣੇ ਆਪ ਜਿਹੜੇ ਤੁਹਾਡ ਸਮਝਦੇ ਨੇ ਪਾਗਲ ਨੇ ਮੂਰਖੰਦ ਕੋਰ ਨੇ ਜਿਹੜੇ ਸਮਝਦੇ ਨੇ ਮੂਰਖੰਦ ਕੋਰ ਕਹੇ ਹੈ ਮੂਰਖੰਦ ਕੋਰ ਬੁਰਖਾਨ ਕੋਲ ਨੇ ਸਭੀ ਉਹਨਾਂ ਨੂੰ ਕੀ ਪਤਾ ਹੈ ਇਸੇ ਕਰਕੇ ਛੋੜ ਦਿਆਂ ਗਾਨਾ ਸਾਰੀਆਂ ਚਲੀ ਜਲਦੀ ਹੈ ਪਾਣਾ ਗੁਰਬਾਨੀ ਨੂੰ ਅੱਗੇ ਹੋਇਆ ਕਿਹੜੀ ਜੋੜ ਜਿਹੜੀ ਫੇਲ ਹੈ ਸਾਰੀਆਂ ਚਲੀ ਜਲਦੀ ਹੈ ਕਿਉਂ ਚਲਦੀਆਂ ਬੁਰਖਾਨ ਕੋਲ ਦੇ ਲੋਕ ਅਰ ਚਲਦੀਆਂ ਵੀ ਰਹਣ ਕਿਉਂ ਹੈ ਬੰਦ ਬੰਦੀ ਹੋ ਗਈਓ ਉਹਨਾਂ ਦਾ ਜਿਵੇਂ ਰੋਟੀ ਬਦਲ ਨਹੀਂ ਜਾ ਰਿਹਾ ਉਹ ਤੁਹਾਨੂੰ ਦੇ ਰਿਹਾ ਨਹੀਂ ਕੁਝ ਉਹ ਤੁਹਾਨੂੰ ਦੇ ਰਿਹਾ ਹੈ ਨਾ ਉਹਨਾਂ ਨੂੰ ਬੈਨੀਫਿਟ ਤੁਸੀਂ ਸਮਝਦੇ ਹੋ ਗੱਲ ਕੁਛ ਉਹ ਤਾਂ ਸਮਝਦੇ ਨਹੀਂ ਹਣ ਪੰਚਵਾਰ ਪਰੇ ਸੀਤ ਕਾਲ ਜਦੋ ਜਦੋਂ ਠੰਡ ਆਉਂਦੀ ਆ ਗੱਦੜ ਕਹਿੰਦੇ ਬੋਲਦੇ ਹੁੰਦੇ ਨੇ ਠੰਡ ਜੀ ਬੋਲਦੇ ਨੇ ਛਣ ਲੱਗਦੀ ਆ ਨਾ ਤਾਂ ਬੋਲਦੇ ਨੇ ਉਹ ਇੱਕ ਗੱਦੜ ਬੋਲਿਆ ਦੋ ਚਾਰ ਕੇ ਬੋਲਣ ਲੱਗ ਜਾਂਦੇ ਨੇ ਪੰਜ ਚਾਰ ਬਾਰ ਗਿੱਧਰ ਪੁਕਾਰੇ ਪਰੇ শীতਕਾਲ শীতਕਾਲ ਹੁੰਦਾ ਸਰਦੀ ਦਾ ਮੌਸਮ শীতਕਾਲ ਪੈਂਦਾ ਪੰਜ ਚਾਰ ਬਾਰ ਗੱਦੜ ਬੋਲਦਾ ਫਿਰ ਪੁੰਚਰ ਉਹ ਗਦਾ ਅਨੇਕ ਦਾ ਪੁਕਾਰਹੀ ਆ ਕੋਈ ਚੇਰ ਗਦਾ ਸਾਰਾ ਸਾਲੇ ਬੋਲਦੇ ਨੇ ਗਦਾ ਵੀ تقریبا ਜਿਆਦਾ ਗਰਮੀ ਆਉਂਦੀ ਹੈ ਜਦ ਬੋਲਦਾ ਹਾਥੀ ਵੀ ਬੋਲਦਾ ਹਾਥੀ ਤਾਂ ਸਾਰਾ ਸਾਲੇ ਬੋਲਦਾ ਕਹਾਂ ਪਏ ਹੋ ਜੋ ਪਏ ਕਲਵੱਤਰ ਲਿਓ ਕਾਂਸੀ ਵਿਚ ਗਦਾ ਜਿਆਦਾ ਗਰਮੀ ਚ ਬੋਲਦਾ ਠਕ ਜਿਗਾ ਨਹੀਂ ਬੋਲਦਾ ਘਟ ਬੋਲਦਾ ਕਹਾਂ ਜੋ ਪਏ ਕਲਵੱਤਰ ਲਿਓ ਕਾਸੀ ਵਿਚ ਕੰਨ ਕੀ ਹੋ ਗਿਆ ਜੇ ਕਾਸ਼ੀ ਤੂੰ ਚਲਾ ਗਿਆ ਜਾ ਕੇ ਆਰੇ ਨਾਲ ਆਪਣਾ ਲਿਆ। ਕੁਲਵੱਤਰ ਉਹ ਨੇ ਖਾ ਲਿਆ ਫਿਰ ਕੀ ਹੋ ਗਿਆ? ਇਹ ਕੋਈ ਤੈਨੂੰ ਪ੍ਰਾਪਤੀ ਨਹੀਂ ਆਏ ਦੇ ਵਿੱਚ ਕੁਝ ਵੀ। ਉਹ ਕਠਾਰ ਨੂੰ ਸੋ ਮਾਰੀ ਜਿਹੜੇ ਚੋਰ ਹੁੰਦੇ ਲੋਕ ਚੋਰਾ ਨੂੰ ਫੜ ਫੜ ਕੇ ਕੋਹਾੜਿਆਂ ਨੂੰ ਵੜ ਵੜ ਮਾਰੇ ਜਾਂਦੇ ਨੇ। ਕੀ ਤੂੰ ਚੋਰ ਐ? ਆਪਣੇ ਆਪ ਨੂੰ ਚੋਰ ਸਮਝਦਾ ਕਿ ਤੂੰ ਅਪਰਾਧੀ ਆ ਤੈਨੂੰ ਕੀ ਲੋੜ ਪਈ ਜਦ ਤੂੰ ਅਪਰਾਧੀ ਆ ਫਿਰ ਅਪਰਾਧੀਆਂ ਨੂੰ ਮਾਰਿਆ ਜਾਂਦਾ ਭਗਤਾਂ ਨੂੰ ਨਹੀਂ ਮਾਰਿਆ ਜਾਂਦਾ ਭਗਤ ਨੇ ਜਬਰਦਸਤ ਉਹਨਾਂ ਨੂੰ ਨਹੀਂ ਲੋੜ ਹੈ ਕਰਨ ਦੀ ਕਰਦਾ ਭਗਤੀ ਕੰਮ ਚੋਰਾ ਵਾਲੇ ਬਹੁਤ ਚੋਰਾ ਨਹੀਂ ਮਰਦਾ ਕਿਉਂ ਮਰਦਾ ਕਹਾਂ ਪਇਓ ਫਾਸੀ ਢਾਰ ਬੁੱਢਿਓ ਜੜ ਗੰਗ ਧਾਰ ਕਹਾਂ ਪਇਓ ਕਹਾਂ ਨਹੀਂ ਤਾ ਕਹਾ ਕੀ ਹੋ ਗਿਆ ਕੀ ਹੋ ਗਿਆ ਜੇ ਤੂੰ ਗਲ ਚ ਫਾਸੀ ਪਾ ਕੇ ਗੰਗਾ ਦੀ ਧਾਰ ਚ ਡੁੱਬ ਗਿਆ ਜਾਣ ਕੇ ਆਪੇ ਸੀ ਡਾਰ ਡਾਰ ਫਾਸਟ ਠੱਗ ਮਾਰ ਮਾਰ ਡਾਰ ਹੀ ਲੋਕ ਠੱਗਾਂ ਨੂੰ ਵੜ ਵੜ ਕੇ ਫਾਸੀ ਦੇ ਮਾਰੇ ਰਹੇ ਨੇ ਉਹ ਜਵਾਨਾਂ ਨੂੰ ਮਾਰ ਦਿੰਦੇ ਸੀ ਸਰਕਾਰਾਂ ਵੀ ਮਾਰਦੀਆਂ ਸੀ ਜਿਵੇਂ ਰਾਜਸਥਾਨ ਚ ਇਹਨਾਂ ਨੇ ਆਪਰੀ ਬਾਰੇ ਜਾਲੇ ਉਹ ਜਿਹੜੇ ਸੀ ਤੇਲ ਚ ਸਾੜੇ ਨੇ ਤੇਲ ਪਾ ਕੇ ਇਹ ਜਾ ਕੁਝ ਕੀਤਾ ਜਾਂਦਾ ਸੀ ਜੇ ਇਹ ਨਾ ਕਦੇ ਨਾ ਲੋਕਾਂ ਨਾਲ ਠੀਕ ਨਹੀਂ ਹੁੰਦੇ ਹੁਣ ਜਿੱਦੇ ਸ਼ਕਤੀ ਘਟਾ ਹੈ ਨਾ ਉਹਦਾ ਕ੍ਰਾਈਮ ਜ਼ਿਆਦਾ ਹੈ ਕ੍ਰਾਈਮ ਕਦ ਵੱਧਦਾ ਹੈ ਜਾਂ ਸ਼ਕਤੀ ਘਟ ਜਾਂਦੀ ਹੈ ਇਹ ਜਿਹੜੇ ਲੋਕ ਕਰਦੇ ਨੇ ਨਾ ਬਹੁਤ ਦੀ ਸਜ਼ਾ ਫਲਾਣਾ ਵਿਦਵਾਨ ਤੇ ਪਾਗਲ ਨਹੀਂ ਸਜ਼ਾਈਦੇ ਇਹਨਾਂ ਦੀ ਦਿਮਾਗ ਦੀ ਉਪਜ ਹੈ ਇਹ ਜਿਹੜਾ ਕ੍ਰਾਈਮ ਵੱਧਦਾ ਨਾ ਤਾਂ ਹੀ ਵੱਧਦਾ ਜਦੋਂ ਸ਼ਕਤੀ ਘਟ ਜਾਂਦੀ ਹੈ ਇਹਨਾਂ ਲੋਕਾਂ ਦੇ ਖਰਾਬ ਜਿਹੇ ਜਦੋਂ ਵੱਜਣ ਦਿੰਦੇ ਸ਼ਕਤੀ ਰਖੜੀ ਚਾਹੀਦੀ ਹੈ ਅਪਰਾਧ ਤੇ ਖਰਾਬ ਸ਼ਕਤੀ ਜਿੱਦੀ ਹੋ ਜਾ ਉਹਦੀ ਅਪਰਾਧ ਨੂੰ ਘਟਾਉਣਾ ਤਾਂ ਸ਼ਕਤੀ ਕਰਨੀ ਪਊਗੀ ਬੇਦਬਰਾਦ ਯਾਦ ਹੋ ਜੂਗਾ ਜਿੰਨਾ ਆਜ਼ਾਦ ਹੋਊਗਾ ਲੋਕ ਜਾਂਦਾ ਅਪਰਾਧ ਕਰਨ ਲੱਗ ਜਾਣਗੇ ਬੂਬੇ ਨਰਕਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਗਿਆਨ ਦੇ ਵਿਚਾਰ ਤੋਂ ਬਿਨਾ ਲੋਕ ਨਰਕਧਾਰ ਵਿੱਚ ਡੁੱਬਦੇ ਚਲੇ ਜਾਂਦੇ ਰਹੇ ਇਸ ਕਰਕੇ ਗਿਆਨ ਵਿਚਾਰ ਗਿਆਨ ਵਿਚਾਰ ਸ਼ਬਦ ਵਿਚਾਰ ਸ਼ਬਦ ਵਿਚਾਰ ਹਰ ਪੰਨੇ ਤੇ ਕਈ ਕਈ ਵਾਰ ਲਿਖਿਆ ਬੰਦਾ ਸਾਨੂੰ ਗਿਆਨ ਵਿਚਾਰ ਤੋਂ ਬਿਨਾ ਦਰਕਤਾਰ ਦੇ ਵਿੱਚ ਮੂਰਖ ਲੋਕ ਡੁੱਬੀ ਜਾਂਦੇ ਨੇ ਕਹਿੰਦੇ ਨੇ ਅਸੀਂ ਧਾਰਬੂਰ ਧਾਰਬੂਖਾਂ ਆਪਣੇ ਆਪ ਨੂੰ ਧਾਰਬੂਖ ਕਹਿੰਦੇ ਹੋ ਜਵੇਂ ਸੰਤਰੇ ਸਾਰੇ ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨ ਬਗਵਾਇਆ ਕਬੀਰ ਕਹਿੰਦੇ ਇਹਨਾਂ ਲੋਕਾਂ ਨੇ ਬਿਰਥਾ ਹੀ ਜਨ ਬਗਵਾਇਆ ਸਾਰਾ ਦਿਨ ਲੱਕ ਬੜੀ ਫਰਦੇ ਨੇ ਸਾਸ ਚ ਉਹ ਜੀ ਕੈਲੰਡਰ ਫਲਾਣਾ ਤੇ ਸਤਾਰੇ ਕੀ ਲੈਣਾ ਕੈਲੰਡਰ ਕੋਈ ਬਣਾਵੇ ਕੋਈ ਨਾ ਬਣਾਵੇ ਬੜੀ ਜਾਣ ਲੋ ਤੁਸੀਂ ਗਿਆਨ ਵਿਚਾਰ ਦੱਸੋ ਗੁਰਬਾਣੀ ਕੀ ਕਹਿੰਦੀ ਆਪੇ ਕਲੰਡਰ ਛੁੱਟ ਜੂਗਾ ਕਲੰਡਰ ਆਪੇ ਛੁੱਟ ਜੂ ਜਿੱਦਨ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਕੁਝ ਇਹ ਦੱਸਿਆ ਨਾ ਆਵੇ ਭੁੱਲ ਜਾਣਗੇ ਸਾਰੇ ਜੋ ਤੁਹਾਡੀ ਡਿਊਟੀ ਦੀ ਉਹਦਾ ਤੁਸੀਂ ਕੀਤੀ ਨਹੀਂ ਤੁਸੀਂ ਲਗਾ ਉਹਨਾਂ ਦੇ ਨਾਲ ਹੋੜ ਜਗੇ ਮੂਰਖਾਂ ਦੇ ਨਾਲ ਵਿਦਵਾਨ ਤਾਂ ਮੂਰਖ ਨੇ ਤੁਸੀਂ ਕੀ ਲਾਣਾ ਦੀ ਮੂਰਖਾਂ ਨਾਲ ਉੱਜੜਦੇ ਆ ਸਾਰੇ ਜਿਹੜੇ ਨੇ ਤਦੋਂ ਪਾਸ਼ਾ ਨੇ ਇੱਥੇ ਤਾਂ ਲਿਖੀ ਹੋਈ ਏ ਨੇ ਇਸ ਇਹਦੇ ਵਿੱਚ ਜਦ ਪੂਰਾ ਕੀਤਾ ਜਿਹੜੇ ਜਿਹੜਾ ਜਿਹੜੀ ਜਿਹੜੀ ਤਰੀਕ ਨੂੰ ਪੂਰਾ ਕੀਤਾ ਕੋਈ ਗ੍ਰੰਥ ਕੋਈ ਪੋਥੀ ਕੋਈ ਪਾਠ ਉਹਦੇ ਤਰੀਕਾ ਜਿਹੜੀ ਦਿੱਤੀਆਂ ਹੋਈਆਂ ਨੇ ਬਹੁਤਾ ਦਿੱਤੀ ਹੋਈ ਹੈ ਬਸਾ ਕੀ ਨੂੰ ਬਹੁਤਾ ਦਿੱਤੀ ਹੋਈ ਹੈ 12 ਵਾਂ ਲਿਖਿਆ ਹੋਇਆ ਥਿੱਤੀ ਗੌੜੀ ਲਿਖੀ ਹੋਈ ਹੈ ਕਿੱਤਾ ਨਹੀਂ ਆਉਂਦੀਆਂ ਨੇ ਇਹਦੇ ਨਾਲ ਕੀ ਨਹਿਰਾਪਣ ਹੋ ਜੂ ਬਈ ਅਸਲ 'ਚ ਜਿਹੜੇ ਵਿਦਵਾਨ ਨੇ ਨਾ ਉਹਨਾਂ ਨੂੰ ਧਾਰਮਿਕ ਵੱੱਡੇ ਹੀ ਨਹੀਂ ਹੁੰਦੇ ਨੇ ਬੋੜੀ ਹੁੰਦੇ ਬੱਟਾ ਨੁਬੀਆਂ ਗੁਰਬਾਣੀ ਬੱਟਾ ਨੁਬੀਆਂ ਨਹੀਂ ਬੋਲਦੀ ਟੌੜਦੀ ਹੈ ਜਿਹੜੀਆਂ ਪਈਆਂ ਹੋਈਆਂ ਬੱਟਾ ਨੇ ਟੌੜੀਆਂ ਦੇਸੀ ਉਹਨਾਂ ਦਾ ਮਕਾਅ ਤਾਂ ਦਰਬਾਰ ਨਾਲ ਜੋਗੀ ਜਣੇ ਰਤਬਾ ਨਾ ਕੋਈ ਜਗਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋ ਇਹ ਉਹ ਨਾਨਕ ਦੇ ਰੌਂ ਦੇ ਕਲੰਡਰ ਬਣਾਉਂਦੇ ਜਿਹੜਾ ਆ ਕਹਿੰਦੇ ਉਹਦੇ ਨੂੰ ਮੰਨਦਾ ਹੀ ਨਹੀਂ ਤੁਸੀਂ ਇਹਨੂੰ ਬੋਲਤਾ ਦੇ ਰਹੇ ਗੁਰਬਾਣੀ ਦੇ ਖਿਲਾਫ ਇਹਨੂੰ ਬੋਲਤਾ ਦੇ ਦੀ ਜੋ ਚੱਲੀ ਜਾਣ ਦੋ ਸਵਾਲ ਹੈ ਗੁਰਬਾਣੀ ਕੀ ਕਹਿੰਦੀ ਹੈ ਦੱਸਣਾ ਆਪਾਂ ਲੋਕਾਂ ਨੂੰ ਇਹ ਗੱਲਾਂ ਮਗਰ ਧਿਆਨ ਦੇ ਕੇ ਕੀ ਫਰਕ ਪੂ ਕੀ ਧਾਰਾ ਪੜਾ ਸਾਡਾ ਹੋ ਜੂਗਾ ਇਹਨੂੰ ਕੁਝ ਵੀ ਧਾਰਾ ਪੜ ਨਹੀਂ ਗੁਰਬਾਣੀ ਦਾ ਪਾਵਨਾ ਬਹੀਨ ਕਹਿੰਦੇ ਇਹ ਗੱਲ ਨੂੰ ਮੁੱਦਾ ਬਣਾ ਕੇ ਅਸੀਂ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਇਸ ਗੱਲ ਨੂੰ ਮੁੱਦਾ ਬਣਾ ਕੇ ਵੱਖਰੇ ਹੋਈਏ ਅਸੀਂ ਮੂਰਖ ਜਾਓ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵਿਚਾਰ ਬਦਲੋ ਦੀ ਪਾਵਨਾ ਬਹੀਨ ਕੈਸੇ ਗਿਆਨ ਕੋ ਵਿਚਾਰ ਰਹੀ ਜਿਉ ਇਹ ਹਾਂ ਪਾਵਨਾ ਬਹੀਨ ਕੈਸੇ ਗਿਆਨ ਕੋ ਵਿਚਾਰ ਗਿਆਨ ਵਿਚਾਰ ਜੇ ਅੰਦਰ ਭੁੱਖ ਨਹੀਂ ਹੈ ਅਡੀ ਕਰਦਾ ਕੋਈ ਵੀ ਭੁੱਖ ਨਾਲ ਗਿਆਨ ਵਿਚਾਰ ਕਰ ਲਈਏ ਅਸੀਂ ਕਰਨੀ ਹੈ ਗਿਆਨ ਵਿਚਾਰ ਗਿਆਨ ਵਿਚਾਰ ਕਰਕੇ ਜੇ ਲੋਕਾਂ ਨੂੰ ਸਮਝਾ ਲੋਕਾਂ ਨੂੰ ਗਿਆਨ ਦੇ ਦੋ ਆਪੇ ਛੱਡ ਦੇਣਗੇ ਸਭ ਕੁਝ ਦਿੰਦਾ ਕੀ ਹੈ ਕੋਈ ਬੰਦੀ ਜਾਓ ਫਿਰ ਜਿਹੜੇ ਸਾਡੇ ਉੱਤੇ ਦਿਨ ਬਿਲੋਰ ਦਾ ਮਤਲਬ ਹੈ ਕੋਈ ਸਾਡੇ ਨਾਲ ਜਨਮ ਦਾ ਮਰਨੇ ਨੂੰ ਬਣੀ ਨਹੀਂ ਵਰਦੀ ਸੁਬਰੀਲੀ ਜਨਮ ਮਰਨ ਤਾਂ ਹੁੰਦਾ ਹੀ ਨਹੀਂ ਜਨਮ ਮਰਨ ਦਾ ਭਰਮ ਗਿਆ ਕੋ ਜਾਗੀ ਜਿਹੜੇ ਜਨਮ ਵਾਲ ਨੂੰ ਸੰਸਾਰੀਆ ਇਹਨੂੰ ਅਸੀਂ ਬੰਦੇ ਹੀ ਨਹੀਂ ਜਦ ਅਸੀਂ ਸਾ ਅਸੀਂ ਕਿਹਨਾਂ ਤੇ ਕੀ ਲੈਣ ਜਿਹਨਾਂ ਮਨ ਨੂੰ ਦੋਹੂ ਮੈਨ ਨਹੀਂ ਜਨਪਰ ਬੁਗਾਰੀ ਆਇਆ